ਆਰਪੀਏ 1550 ਐਮ ਤੇ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ 11:13 ਹੋਏ ਨੇ 21 ਫਰਵਰੀ ਦਾ ਦਿਨ ਹੈ ਜੀ ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਕਿਸਾਨਾਂ ਗੱਲਾਂ ਬਾਤਾਂ ਗੀਤ ਸੰਗੀਤ ਸੋਗ ਦੇ ਮਸਲੇ ਤੇ ਗੱਲਬਾਤ ਹੋਏਗੀ ਪਹਿਲੇ ਹਿੱਸੇ ਦੇ ਤੁਹਾਨੂੰ ਖਬਰਾਂ ਸੁਣਾਉਣਾ ਹੈ ਖਬਰਾਂ ਦੇ ਨਾਲ ਨਾਲ ਖੁੱਲੀ ਵਿਚਾਰ ਚਰਚਾ ਦੋ ਹਿੱਸਿਆਂ ਦੇ ਵਿੱਚ ਹੋਣੀ ਹੈ ਟੋਰਾਂਟੋ ਦੇ ਇੱਕ ਸਕੂਲ ਨੇ ਸਕੂਲ ਦੇ ਵਿੱਚ ਬੱਚਿਆਂ ਨੂੰ ਸੈਲ ਫੋਨ ਵਰਤਣ ਤੇ ਪਾਬੰਦੀ ਲਾਈ ਹੈ ਨਾ ਕਲਾਸ ਦੇ ਵਿੱਚ ਨਾ ਵਾਕਵੇ ਵਿੱਚ ਤੁਰਦੇ ਫਿਰਦੇ ਸਿਰਫ ਲੰਚ ਵੇਲੇ 1 ਘੰਟਾ 7ਵੀਂ ਤੋਂ 8ਵੀਂ ਇਹ ਕਿਉਂ じゃ ਜਿਸ ਤਰ੍ਹਾਂ ਤੁਸੀਂ ਇਸ ਬਾਰੇ ਸੋਚਦੇ ਹੋ ਕਿ ਬੱਚਿਆਂ ਦਾ ਸਕੂਲ ਨੂੰ ਜਾਂ ਛੋਟਿਆਂ ਨੂੰ 6ਵੀਂ 7ਵੀਂ ਦੇ ਵਿੱਚ ਅਸੀਂ ਉਹਨਾਂ ਨੂੰ ਫੋਨ ਦਿੰਨੇ ਆ ਉਹਦੀ ਮੁਸ਼ਕਲ ਕਿੰਨੀ ਆ ਉਸ ਦੀ ਤੋਂ ਬੰਦ ਖਲਾਸੀ ਕਿਵੇਂ ਹੋ ਸਕਦੀ ਹੈ ਇਸ ਦੀ ਗੱਲ ਤੇ ਨਾਲ ਨਮਰਤ ਗਿੱਲ ਦੀ ਜਿਹੜਾ ਸਦੀਵੀ ਵਿਛੋੜਾ ਛੋਟੀ ਬੱਚੀ ਦਾ 3 ਸਾਲਾਂ ਦੀ ਦਾ ਉਸ ਦੀਆਂ ਗੱਲਾਂ ਮੇਨਸਟ੍ਰੀਮ ਸੁਸਾਇਟੀ ਦੇ ਵਿੱਚ ਮੇਨਸਟ੍ਰੀਮ ਰੇਡੀਓ ਤੇ ਹੋ ਰਹੀਆਂ ਸੂਬਾ ਹੁਣ ਇਹਦੇ ਤੇ ਹਲੇ ਕਿ ਸੁਲਕੰਨਾ ਹੋਇਆ ਬੈਠਾ ਹਲੇ ਗੱਲ ਨਹੀਂ ਕਰ ਰਹਾ ਪਰ ਅੱਜ ਦੀ ਫੰਡਿੰਗ ਜਿਹੜੀ ਬਜਟ ਹੈ ਉਹਦੇ ਵਿੱਚ ਗੱਲਬਾਤ ਚੱਲ ਰਹੀ ਹੈ ਮੈਡੀਕਲ ਦੇ ਸੰਬੰਧੀ ਸਿਹਤ ਸਵਾਮਾਂ ਦੇ ਸੰਬੰਧੀ ਹੋਰ ਵੱਧ ਬਜਟ ਦੀ ਪਰ ਬਹੁਤ ਵੱਡੀ ਗੱਲ ਹੋਈ ਤੇ ਇਸ ਦੇ ਵਿੱਚੋਂ ਜਿੰਨੀਆਂ ਵੀ ਮੇਨਸਟ੍ਰੀਮ ਤੇ ਗੱਲਾਂਬੱਤਾਂ ਸੁਣੀਆਂ ਸਾਰੇ ਇਸ ਗੱਲ ਦੇ ਅੰਕੜੇ ਤੇ ਆਉਂਦੇ ਆ ਕਿ ਬੱਚੇ ਨੂੰ ਸਿੱਧਾ ਚਿਲਡਰਨ ਹਸਪੀਟਲ ਲੈ ਕੇ ਜਾਓ ਚਿਲਡਰਨ ਹਸਪੀਟਲ ਬੱਚਿਆਂ ਦੇ ਹਸਪਤਲ ਲੈ ਕੇ ਜਾਓ ਪਰ ਜਿਹੜੇ ਦੂਜੇ ਹਸਪਤਲ ਖੜੇ ਨੇ ਇਹ ਕੰਕਰੀਟ ਦੇ ਜੰਗਲ ਹੈ ਇਹਦੇ ਵਿੱਚ ਚਿੱਟਾ ਖੁੱਟ ਮੋਢੇ ਤੇ ਸਥੈਥੋਸਕੋਪ ਲਈ ਫਿਰਦੇ ਡਾਕਟਰ ਕਿ ਉਹ ਡਾਕਟਰ ਤੇ ਬੱਚਿਆਂ ਦੇ ਹਸਪਤਲ ਦੇ ਡਾਕਟਰ ਹੋਰ ਨੇ ਡਾਕਟਰ ਡਾਕਟਰ ਪਰ ਉੱਥੇ ਜਿੱਥੇ ਕਮੀ ਰਹੀ ਹੈ ਉਹ ਕਮੀ ਦੀ ਗੱਲ ਨਹੀਂ ਕੋਈ ਕਰ ਰਿਹਾ ਇਸ ਦੀ ਵੀ ਗੱਲ ਬਾਤ ਦੁਆਰਾ ਜ਼ਿਕਰਨੀ ਹੈ 1842471550 ਉਹ ਨੰਬਰ ਰਹੇਗਾ krpi radio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ ਹੈ ਹੁਣ ਐਪ ਡਾਊਨਲੋਡ ਕਰਿਓ ਤੇ ਐਪ ਡਾਊਨਲੋਡ ਕਰਨ ਤੋਂ ਬਾਅਦ ਨਾਲ ਨਾਲ ਸੁਣ ਸਕਦੇ ਜੇ ਨਾ ਗੱਲ ਬਣੇ ਤਾਂ ਖਬਰ ਤੇ ਪ੍ਰੋਗਰਾਮ ਪਿਆ ਹੁੰਦਾ ਉੱਥੇ ਸੁਣ ਸਕਦੇ ਹੋ ਨਿਮੀ ਡੌੜਾ ਜੀ ਦਾ ਨੰਬਰ ਲਿਖ ਲਿਓ 604440646 info@krpiaradio.com ਉਹਨਾਂ ਦੀ ਈਮੇਲ ਹੈ ਹਰਜੀਤ ਸਿੰਘਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਜਿੱਥੇ ਤੁਸੀਂ ਨਾਲ ਨਾਲ ਚੱਲਦੇ ਹੋ ਜਿੱਥੇ ਸੁਖ ਸੁਨੇਹਾ ਕੱਲ ਦੇ ਤੋਂ ਕੁਝ ਮਸਲੇ ਵੀ ਕੱਲਦੇ ਸਿਰ ਮੱਥੇ ਹਰਜੀਤ.g@krpiaradio.com ਈਮੇਲ ਹੈ ਤੇਰਾ ਸਾਥ ਜਿਵੇਂ ਕੱਚੀ ਕੰਧ ਤੋਂ ਕੋਈ ਤੇਰਾ ਸਾਥ ਜਿਵੇਂ ਕੱਚੀ ਕੰਧ ਤੋਂ ਕੋਈ ਚਿੱਟਾ ਕੁੱਕੜ ਉੱਡਿਆ ਹੋਵੇ ਜਿਵੇਂ ਕਰੀਜ਼ ਦੀਆਂ ਚਿੰਗਾਂ ਤੇ ਸੇਵੀਆਂ ਸੁੱਕਣੀਆਂ ਪਾਈਆਂ ਹੋਣ ਜਿਵੇਂ ਫੁੱਲਾਂ ਵਾਲੇ ਪਾਣੀ 'ਚ ਸੁਪਨਿਆਂ ਵਰਗੀਆਂ ਬਤਕਾਂ ਤਰਦੀਆਂ ਹੋਣ ਜਿਵੇਂ ਛਟੀਆਂ ਦੀ ਅੱਗ ਤੇ ਸ਼ੋਲਿਆਂ ਦੀ ਟਟ ਸ਼ੋਲਿਆਂ ਦੀਆਂ ਟਾਟਾਂ ਭੁੱਜ ਰਹੀਆਂ ਹੋਣ ਬੁੱਢੀ ਮਸਜਿਦ 'ਚ ਤੋਤੇ ਕਬੂਤਰ ਖੇਡ ਰਹੇ ਹੋਣ ਸਿਆੜਾਂ 'ਚ ਪੰਛੀ ਉੱtre ਹੋਣ ਜਿਵੇਂ ਪੱਕਦੀਆਂ ਰੋਟੀਆਂ ਦੀ ਮਹਿਕ ਉੱਡ ਰਹੀ ਹੋਵੇ ਜਾਂ ਜਿਵੇਂ ਕਿਸੇ ਰੁਕਾਨਜੀ ਜੱਤੀ ਨੇ ਥੋੜਾ ਜਿਹਾ ਸਿਰ ਹਿਲਾਇਆ ਹੋਵੇ ਤੇ ਬਾਹਲੀਆਂ ਦੇ ਕੁੰਡਿਆਂ ਵਿੱਚ ਪਾਈਆਂ ਪਿੱਪਲ ਪੱਤੀਆਂ ਆਪਸ 'ਚ ਹਲਕਾ ਹਲਕਾ ਵੱਜ ਰਹੀਆਂ ਹੋਣ ਤੇਰਾ ਸਾਥ ਬਿਆਨਣ ਲਈ ਜਿਵੇਂ ਹਾਲੇ ਵੀ ਮਾੜੀ ਜੀ ਕੱਚ ਬਾਕੀ ਐ ਇਹ ਸ਼ਾਹੀ ਸ਼ਬਦ ਨਰਾਲੇ ਅੱਖਰ ਸੰਦਲੀ 70 ਸੰਦਲੀ 70 ਕਥਾਵਾਂ ਫੇਰ ਮਾਰ ਖਾ ਗਏ ਭਲਾ ਕਿਵੇਂ ਕੋਈ ਬੰਨੇ ਹਰਮਨਜੀਤ ਲਿਖਦਾ ਧੰਨਵਾਦ ਜਿੱਥੇ ਵੀ ਬੈਠੇ ਹੋ ਬਜਟ ਬੀਸੀ ਦਾ ਅੱਜ ਪੇਸ਼ ਹੋਣਾ ਦੁਪਹਿਰ ਤੋਂ ਬਾਅਦ ਪਿਛਲੇ ਬਜਟ ਦੇ ਵਿੱਚ ਸਵਾ ਦੋ ਅਰਬ ਡਾਲਰਾਂ ਦੇ ਵਾਧੇ ਦਾ ਬਜਟ ਸੀ ਇਹਦਾ ਮਤਲਬ ਇਸ ਵਾਰ ਵੰਗ ਹੁਣ ਕੋਈ ਸ਼ਨਕੂਦ ਲਿਆਏ ਹੋਏ ਸਾਡੇ ਤੋਂ ਪੈਸੇ ਕੁਝ ਵਾਪਸ ਹੋਣਗੇ ਮੈਡੀਕਲ ਸਰਵਿਸ ਪਲਾਨ ਜਿਹੜਾ ਉਹਦੇ ਉਹਦਾ ਜਿਹੜਾ ਪ੍ਰੀਮੀਅਮ ਹੈ ਉਹਦੇ 'ਚ ਕੁਝ ਬਦਲਾਅ ਆ ਰਿਹਾ ਹੈ ਹਜ਼ਾਰ ਬਣਾਉਣ ਵਾਲੇ ਜੋੜਿਆਂ ਦੇ ਪੈਸੇ ਘੱਟ ਹੋਣਗੇ ਚਿਲਡਰਨਸ ਮਿਨਿਸਟਰੀ ਆ ਜਿਹੜੀ ਉਹਦੇ 'ਚ ਵੀ ਪੈਸੇ ਖਰਚੇ ਜਾ ਰਹੇ ਨੇ ਉਸ ਤੋਂ ਬਾਅਦ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਪੜ੍ਹਾਈ ਦੇ ਖੇਤਰ ਦੀ ਫੰਡਿੰਗ ਦੀ 29 ਮਿਲੀਅਨ ਡਾਲਰ ਦੀ ਗੱਲ ਚੱਲਦੀ ਹੈ ਡਿਸੇਬਿਲਟੀ ਅਸਿਸਟੈਂਟ ਚ ਵੀ ਵਾਧਾ ਹੋ ਰਿਹਾ ਹੈ ਦੀ ਸਰਕਾਰਾਂ ਅਖੀਰਲਾ ਜਿਹੜਾ ਬਜਟ ਹੁੰਦਾ ਹੈ ਚੌਥੇ ਸਾਲ ਦਾ ਜਦ ਜਾਂ ਜਿਹੜੇ ਸਾਲ ਵੀ ਇਲੈਕਸ਼ਨ ਹੁੰਣ ਉਸ ਸਮੇਂ ਫਿਰ ਪੱਲਾ ਛਾੜਦੀ ਜਿਵੇਂ ਨਵੀਂ ਫੈਰੀ ਨੇਚਰਲ ਗੈਸ ਤੇ ਚੱਲਣ ਵਾਲੀ ਫਲੀਟ ਦੇ ਵਿੱਚ ਬੀਸੀ ਫੈਰੀ ਦੇ ਜਿਹੜੀ ਆ ਉਹ ਐਡ ਹੋਈ ਆ ਹੋਰ ਇੱਕ ਆ ਜਾਣੀ ਐ ਜਦ ਤੱਕ ਵੋਟਾਂ ਪੈਣੀਆਂ ਐ 9 ਮਈ ਨੂੰ ਵੋਟਾਂ ਪੈਣੀਆਂ। ਸੋ ਅੱਜ ਦੇ ਬਜਟ ਦੀ ਜਿਹੜੀ ਐ ਉਹ ਜਿਉਂ ਹੀ ਦੁਪਹਿਰ ਤੋਂ ਬਾਅਦ ਹੋਣਾ ਹੈ ਮੂਹਰੇ ਤਿਆਰ ਬੈਠੇ ਆ ਉਹਨਾਂ ਨੇ ਮੂਹਰਿਓਂ ਘੇਰਨਾ ਜੁੱਤੀ ਦਾ ਜੁੱਤੀਆਂ ਦਾ ਜੋੜਾ ਜਿਹੜਾ ਨਵਾਂ ਮਾਈਕਲ ਡੀਅੰਗ ਨੇ ਲੈ ਲਿਆ ਤੇ ਅੱਜ ਬਜਟ ਦੇ ਵਿੱਚ ਬੜੀ ਗੱਲ ਅੱਜ ਗੁਲਸ਼ਰੇ ਉੱਡਣੇ ਪਰ ਇੱਥੇ ਹੀ ਸੂਈ ਦੇ ਨੱਕੇ થી ਜਿਹੜੀਆਂ ਗੱਲਾਂ ਨਿਕਲ ਰਹੀਆਂ ਬਜਟ ਤਾਂ ਆਜੂ ਨਸ਼ੇ ਦੀ ਬਾਦ ਕਰਕੇ ਬੰਦੇ ਬਹੁਤ ਮਰਿਆ ਪਿਛਲੇ ਸਾਲ ਇੱਕ ਗੱਲ ਦੋ ਗੱਲ ਨੰਬਰ 2 3 ਸਾਲ ਦੀ ਸਾਡੀ ਰਾਣੀ ਧੀ ਇੱਕ ਹਸਪਤਾਲ ਦੇ ਵਿੱਚ ਮਾਰੀ ਗਈ ਉਹਦਾ ਜ਼ਿੰਮੇਵਾਰ ਕੌਣ ਹੈ ਜਿਹੜਾ ਵੀ ਫ੍ਰੀਜ਼ਰ ਹੈਲਥ ਹੈ ਉਹ ਆਪਣੀ ਜ਼ਿੰਮੇਵਾਰੀ ਲਏ ਫ੍ਰੀਜ਼ਰ ਹੈਲਥ ਕਹਿੰਦੀ ਅਸੀਂ ਇਨਵੈਸਟੀਗੇਸ਼ਨ ਕਰਨੀ ਹੈ ਕਾਦੀ ਇਨਵੈਸਟੀਗੇਸ਼ਨ ਕਰੋਗੇ ਸਾਣਾ ਉੱਪਰਲਾ ਐਸਐਚਓ ਆਪਣੇ ਮੁਰਸ਼ਿਦੀ ਹੈ ਈਰ ਇਨਵੈਸਟੀਗੇਸ਼ਨ ਕਰੂ ਜਾਂ ਤਾਂ ਕੋਈ ਬਾਹਰਲੇ ਬੰਦੇ ਦਿੱਤੇ ਜਾਣ ਫੇਰ ਤਾਂ ਪਤਾ ਲੱਗੇ ਇਹ ਵੱਡਿਆਂ ਵੱਡਿਆਂ ਦਫ਼ਤਰਾਂ ਚ ਘੁੰਮਣ ਵਾਲੀਆਂ ਕੁਰਸੀਆਂ ਦੇ ਵਿੱਚ ਫਿਰਦਾ ਸਟਾਫ ਜਾਂ ਡਾਕਟਰ ਵੱਧ ਨੇ ਘੱਟ ਨੇ ਸੂਬੇ ਦਾ ਤਾਂ ਸਾਡਾ ਕੰਮ ਨਹੀਂ ਸੀ ਉਸ ਦੀ ਐਮਐਸਪੀ ਦਿੰਨੇ ਆ 5 ਘੰਟੇ ਉਸ ਬੱਚੀ ਦਾ ਖਿਆਲ ਨਹੀਂ ਰੱਖਿਆ ਜਦੋਂ ਪੂਰੀ ਹੋ ਗਈ ਤਾਂ ਡਾਕਟਰਾਂ ਵਿੱਚ ਨਰਸ ਵੱਜਦੀਆਂ ਫਰੀਆਂ ਸੀ ਫਿਰ ਫੇਰ ਅਸੀਂ ਈਦ ਤੋਂ ਬਾਅਦ ਤੁੰਬਾ ਕੀ ਕਰਨਾ ਅਸੀਂ ਤੰਬਾ ਕੀ ਕਰਨਾ ਫੂਕਣਾ ਫਿਰ ਤੇ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਕੋਈ ਨਾ ਕੋਈ ਕਰਾਈਸਿਸ ਰਹੇ ਨੇ ਲੋਕਾਂ ਦੇ ਇਨਫੋਰਮੇਸ਼ਨਸ ਲਿਬਰਲ ਦੀ ਵੈਬਸਾਈਟ ਤੋਂ ਬ੍ਰੀਚ ਹੋਈਆਂ ਖੋ ਗਈਆਂ ਤੇ ਈਮੇਲ ਜਿਹੜੀਆਂ ਡਿਲੀਟ ਹੋਈਆਂ ਈਮੇਲ ਤੇੀਆਂ ਡਲੀਪ ਹੋ ਗਈਆਂ ਸੰਤਾਰ ਦਾ ਗੀਤ ਉਹ ਈਮੇਲ ਜਿਹੜੀਆਂ ਸਰਵਰ ਤੋਂ ਵੀ ਪੁੰਜਤੀਆਂ ਜਾ ਕੇ ਇਹਦਾ ਹਸਾ ਗੁਤਾਬ ਅਪ੍ਰੈਲ ਮਈ ਚ ਹੋਣਾ ਚਾਰ ਛਲਣਾ ਕਰਕੇ ਮਤਾ ਖਿਆਲ ਕਰਿਓ ਬੇ ਇਸ ਵਾਰ ਜਿਹੜਾ ਦੇ ਦੇਓਂਗੇ ਲੋਕਾਂ ਦੀ ਕਚਹਿਰੀ ਚ ਗੱਲਾਂ ਹੋਣਗੀਆਂ ਮੂੰਹ ਤੇ ਵਪਾਰਕ ਸੰਦੇਸ਼ ਸਤਿ ਆਰਦਾਤ ਸਿੰਘ ਲਾਈਨ ਨੰਬਰ 2 ਤੁਸੀਂ ਏਅਰ ਤੇ ਜੀ ਸਤਿ ਸ੍ਰੀ ਅਕਾਲ ਜੀ ਸਤਿ ਜੀ ਭਾਈ ਤੁਹਾਨੂੰ ਆ ਜਿਹੜੀ ਐਮਫੋਰਡ ਵਾਲੀ ਗੱਲ ਹੀ ਦੱਸਣੀ ਸੀਗੀ ਜੀ ਮੇਰੀ ਵਾਈਫ ਦੇ ਨਾ ਮਤਲਬ ਆਂ ਜੀ ਦਾ ਮੁੰਡਾ ਸੀਗਾ ਉਹਨੂੰ ਪਹਿਲਾਂ ਲੈ ਗਏ ਐਂਬੂਲੈਂਸ ਤੇ ਲੈ ਗਏ ਉਹਨਾਂ ਨੇ ਮੋਰ ਦਵਾਈ ਦੇ ਕੇ ਅੱਛਾ ਜੀ ਦਵਾਈ ਦੇ ਕੇ ਮੋੜਦਾ ਤੇ ਉਹਦੇ ਦਰਦ ਨਹੀਂ ਜਵਾਕ ਦੇ ਫੇਰ ਉਹ ਡਾਕਟਰ ਗਿੱਲ ਦੇ ਲੈ ਕੇ ਗਈ ਸਪੈਸ਼ਲਿਸਟ ਤੇ ਫੇਰ ਉਹਨੇ ਲਿਖ ਕੇ ਦੇ ਉਹਨੂੰ ਦੇ ਅੰਦਰ ਪੈਂਡਿਕਸ ਫਾਟੀ ਹੋਈ ਸੀ ਜੀ ਉਹ ਦੋ ਦਿਨ ਉਵੇਂ ਹੀ ਦੋ ਦਿਨ ਉਹਨੂੰ ਮੋੜਤਾ ਉਹਨਾਂ ਨੇ ਉੱਥੋਂ ਐਂਬੂਲੈਂਸ ਦੇ ਗਏ ਉਹਨੂੰ ਜਵਾਕ ਉਹਨੂੰ ਮੋੜਤਾ ਚੈੱਕ ਨਹੀਂ ਕੀਤਾ ਗੱਲ ਆ ਮੋੜ ਕੇ ਡਾਕਟਰ ਗਿੱਲ ਨੇ ਲਿਖਿਆ ਫਿਰ ਉਹਨਾਂ ਨੇ ਚੈੱਕ ਕੀਤਾ ਫਿਰ ਕਹਿੰਦੇ ਇਹਦੇ ਤਾਂ ਪੈਂਡਿਕ ਫੱਟੀ ਵੀ ਅੰਦਰ ਬਾਜਵਾਕ ਬੱਜ ਗਿਆ ਜਰਾ 4 ਸਾਲਾਂ ਦਾ ਜਵਾਕ ਸੀਗਾ ਉਹ ਦਿਨ ਤੜਪਿਆ ਨੂੰ ਦੂਸਰਾ ਕੇਸ ਹੈ ਨਾਲ ਪਹਿਲਾਂ ਨਿਮਰਤ ਗਿੱਲ ਤੇ ਆਹ ਵੇਖੋ ਦੁਬਾਰਾ ਫਿਰ ਐਮਰਜੈਂਸੀ 'ਚ ਭੇਜਿਆ ਬੱਚਾ ਉਹਨਾਂ ਨੇ ਮੌੜਤਾ ਇਹ ਤਾਂ ਉਦੋਂ ਪਹਿਲਾਂ ਦੀ ਗੱਲ ਹੈ ਇਹ ਤਾਂ ਪਹਿਲਾਂ ਦੀ ਗੱਲ ਹੈ ਜਵਾਬ ਦੀ ਮੰਨ ਤੋਂ ਪਹਿਲਾਂ ਦੀ ਗੱਲ ਹੈ ਮੁੰਡੇ ਦੀ ਸਰਜਰੀ ਹੋਈ ਆ ਮੁੰਡੇ ਕੋ ਪੈਂਡਿਕ ਛੱਡੀ ਨੇ ਇਲਾਜ ਕੀਤਾ ਉਹਦਾ ਹੀ ਠੀਕ ਆ ਸਰ ਸਾਹਿਬ ਧੰਨਵਾਦ ਉਹ ਪੂਰੀ ਨਾਲਾ ਟਰੱਕ ਤੇ ਸੀਗਾ ਉਹ ਵਿਚਾਰੀ ਰਾਤ ਨੂੰ ਨੇ ਐਂਬੂਲੈਂਸ ਕੀਤੀ ਉਥੋਂ ਜਵਾਕ ਨੂੰ ਗੋਲੀਆਂ ਦੇ ਕੇ ਟੈਨਲ ਦੀਆਂ ਪੇਨ ਕਿਲਰ ਦੇ ਕੇ ਮੋੜਤਾ ਜਵਾਕ ਕਿੱਥੇ ਟੱਟ ਅੰਦਰ ਪੈਂਡੇ ਅਗਲੇ ਦਿਨ ਗੈਡਨਾ ਲੈ ਕੇ ਜਾਂਦਾ ਤੇ ਜਵਾਕ ਖਤਮ ਹੋ ਜਾਣਾ ਕਿਉਂਕਿ ਉਹ ਬਹੁਤ ਆ ਬਿਲਕੁਲ ਜੀ ਸਰ ਬਿਲਕੁਲ ਠੀਕ ਆ ਤੁਹਾਡਾ ਬਹੁਤ ਬਹੁਤ ਥੈਂਕ ਯੂ ਮੈਂ ਪਹਿਲਾਂ ਹਲੇ ਨਿਰਤ ਗਿੱਲ ਦੀ ਗੱਲ ਅੱਜ ਸਨੇਹਾ ਮੈਂ ਸੀਕੇ ਐਂਡ ਡਬਲ ਜਾਂ ਸਨਰੇਅਸ ਸਹਿਰਾ ਨੇ ਗੱਲ ਤੋਰੀ ਮੈਂ ਉਹਨਾਂ ਨੂੰ ਈਮੇਲ ਕਰੀ ਮੈਂ ਕਿਹਾ ਇਹ ਮੁਸ਼ਕਲ ਹੈ ਸਹਿਰਾ ਉਹਨਾਂ ਨੇ ਵੀ ਇਹ ਗੱਲ ਦੀ ਸਾਂਝ ਪਾਉਂਦਿਆਂ ਕਿਹਾ ਵੀ ਬੱਚਿਆਂ ਦੇ ਹਸਪਤਾਲ ਜਿਸ ਤਰ੍ਹਾਂ ਦੂਸਰਾ ਗਗਨ ਸਿੰਘ ਉਹਨਾਂ ਨੇ ਦੱਸਿਆ ਹੋਰ ਵੀ ਦੱਸਦੇ ਕਿ ਲੈ ਜਾਓ ਬੱਚਿਆਂ ਨੂੰ ਸਿੱਧੇ ਉੱਥੇ ਚਿਲਡਰਨ ਹਸਪੀਟਲ ਪਰ ਹੁਣ 750 ਕਿਲੋਮੀਟਰ ਆਇਬਸ ਤੋਂ ਕਈ ਵਾਰ ਆਪਾਂ ਗੋਲਦੇ ਨਹੀਂ ਵੀ ਬੱਚੀ ਨੂੰ ਖੰਗ ਜੁਕਾਮ ਹੈ ਜਾਂ ਜਿਸ ਤਰ੍ਹਾਂ ਸਰਾਜ ਜੀ ਦੱਸ ਕੇ ਗਏ ਦਰਦ ਹੈ ਜਿਹੜਾ ਚਿਲड्रन ਹਸਪੀਟਲ ਨੂੰ ਤੁਰਿਆ ਰਹੂ ਜੇ ਉੱਥੇ ਜਾਣਾ ਖੜਾ ਉੱਥੇ ਹੀ ਜਾਣ ਲੱਗਿਆ ਉੱਥੇ ਵੀ ਆਹੀ ਕੁਛ ਹੋ ਉੱਥੇ ਵੀ 3-3 4-4 ਘੰਟੇ ਦੀ ਵੇਟ ਆ ਉੱਥੇ ਵੀ ਜਾਂਦੇ ਓ ਨਹੀਂ ਵੀ ਜਾਂਦੇ ਬੱਚਾ ਸਾਂਭ ਲੈਂਦੇ ਪਰ ਗੱਲ ਇਹ ਆ ਚੀਜ਼ਾਂ ਕਿਉਂ ਨੇ ਅਕ੍ਰੋਸ ਦਾ ਬਾਰਡਰ ਜੇ ਉਹ 5-700 ਮਹੀਨੇ ਦਾ ਦਿੰਦੇ ਆ ਉੱਥੇ 15 ਤੋਂ 10 ਮਿੰਟ ਦੀ ਵੇਟ ਆ ਇੱਕ ਨਹੀਂ ਉਸ ਦਿਨ ਘੱਟੋ-ਘੱਟ 20 ਮੈਸੇਜ ਆਏ ਟੈਕਸਸ ਤੋਂ ਇੱਕ ਫਲੋਡ ਤੋਂ ਵੀ ਕਨੇ ਇਹ ਮੁਸ਼ਕਲੇ ਹੈ ਨਹੀਂ ਇਹ ਸਾਡਾ ਸਟਾਫ ਹੈ ਇੱਥੇ ਫੰਡ ਰੇਲ ਉਹ ਵੀ ਦੱਸਦਾ ਜਿਹੜੇ ਅਮਰੀਕਨ ਨੇ ਉਹ ਕਹਿੰਦੇ ਸਾਡੇ ਇਸ ਤਰ੍ਹਾਂ ਨਹੀਂ ਹੈ ਵੀ ਤੁਹਾਡੇ ਵਾਂਗੂ ਵੀ ਦਾ ਮਤਲਬ ਕੀ ਜਾਨੂ ਤਾਂ ਜਵਾਨ ਦੀ ਫੱਕੀ ਦੇ ਨਾਲ ਢੱਡ ਹੱਟ ਜੂ ਦੁਖਣ ਜਾਨੂ ਤਾਂ ਬੰਦੇ ਨੂੰ ਅੰਦਰ ਲੈ ਕੇ ਨਹੀਂ ਜਾਂਦੇ ਤੁਸੀਂ 5 ਘੰਟੇ ਇਹ ਇੱਕ ਸ਼ਹਿਰ ਦੀ ਮੁਸ਼ਕਲ ਨਹੀਂ ਇਹ ਸਾਰੇ ਸ਼ਹਿਰਾਂ ਦੀ ਮੁਸ਼ਕਲ ਹੈ ਸਰੀ ਦੇ ਐਮਰਜੈਂਸੀ ਚਲੇ ਜਾਓ ਤੁਸੀਂ ਹੁਣ ਉਹ ਟਾਪਰ ਬਣਾਤਾ ਜੀ ਉੱਪਰ ਚੌਪਰ ਉਤਰਿਆ ਕਰੋ ਉਹ ਇਧਰੋਂ ਗੱਡੀ ਵਾੜ ਲੋ ਤੇ ਕੱਢ ਲੋ ਦੇ ਦਿਓ ਫੋਟੋ ਲਵਾ ਲੋ ਕੇ ਵੇਖਿਓ ਜਾ ਕੇ ਉੱਥੇ ਪਤਾ ਕਰਿਓ ਕਿ ਸਮਾਂ ਕਿੰਨਾ ਬੰਦੇ ਸਰੀ ਦੇ ਭੱਜਦੇ ਆ ਪੀ ਸਰਚ ਨੂੰ ਪੀ ਸਰਚ ਦੇ ਵਿੱਚ ਐਮਰਜੈਂਸੀ ਲਈ ਜਗ੍ਹਾ ਹੀ ਪੂਰਾ ਕਹ ਕਿਉਂਕਿ ਉਹਨਾਂ ਨੇ 16 ਐਵ ਨਹੀਂ ਤੋਂ ਪਰਲੇ ਬਣੇ ਉਹਨਾਂ ਦੀ ਜਿੰਨੀ ਕਿ ਉਹਨਾਂ ਹਿਸਾਬ ਨਾਲ ਹਸਪਤਾਲ ਬਹੁਤ ਵਧੀਆ ਪਰ ਹੁਣ ਜਦ ਅਸੀਂ ਇੱਧਰੋਂ ਗੇੜਾ ਦੇ ਕੇ ਉੱਥੇ ਜਾਣੇ ਆ ਉੱਥੇ ਤਾਂ ਕੁਰਸੀਆਂ ਵੀ ਢੱਤੀਆਂ ਉੱਥੇ ਬਹਿਣ ਨੂੰ ਜਗ੍ਹਾ ਹੈ ਨਹੀਂ ਕੋਈ ਬਾਹਰ ਖੜਦਾ ਕੋਈ ਖੱਬੇ ਖੜਦਾ ਕੋਈ ਸੱਜੇ ਖੜਦਾ ਇਹ ਇੱਕ ਮੁਸ਼ਕਲ ਨਹੀਂ ਹੈ ਇਹ ਮੁਸ਼ਕਲਾਂ ਜਿਹੜੀਆਂ ਮੁਸ਼ਕਲ ਤੇ ਮੁਸ਼ਕਲ ਹੈ ਪਰ ਇਹ ਜੇ ਐਡਰੈਸ ਨਹੀਂ ਹੁੰਦੀ ਤੇ ਫਕੀਰ ਸਰਪਲਸ ਅਸੀਂ ਕੀ ਕਰਨਾ ਸਰਪਲਸ ਮੈਂ ਸੰਦੂਕ ਭਰ ਕੇ ਸਿਰ ਤੇ ਚੱਕੀ ਫਿਰਨਾ ਮੈਂ ਸਰਪਲਸ ਨੂੰ ਕੀ ਕਰਨਾ ਜਾਂ ਧੀ ਪੁੱਤ ਸਾਡੇ ਇਸ ਤਰ੍ਹਾਂ ਐਮਰਜੈਂਸੀ ਦੇ ਵਿੱਚ ਐਂਬੂਲੈਂਸ ਜਿੱਤ ਤੁਰੇ ਫਿਰਦੇ ਐਂਬੂ ਆਪਣਾ ਆਪਣੇ ਨਾ ਪੰਜਾਬੀਆਂ ਦੀ ਐਂਬੂਲੈਂਸ ਜਾਓ ਤਾਂ ਸਾਹਮਣੇ ਆ ਵੇਖੋ ਐਂਬੂਲੈਂਸ ਕਿ ਆ ਵਰ ਉਹ ਕਹਿੰਦੇ ਕੁਛ ਨਹੀਂ ਹੋਇਆ ਦਰਦਾ ਦੇ ਦਿਓ ਟੈਨਲ ਤਾਂ ਇਓਂ ਲੱਗਦਾ ਜਿਵੇਂ ਸਾਹ ਹੁੰਦੀ ਆ ਹਰੇਕ ਦੀ ਹਰੇਕ ਨੂੰ ਟੈਨਲ ਨਾਲ ਦੇ ਦਿਓ ਇਹਨੂੰ ਐਡਵਲ ਦੇ ਦਿਓ ਇਹਨੂੰ ਠੀਕ ਐ ਅਲਾਮਤਾਂ ਨੇ ਪਰ ਇਸ ਬੱਚੀ ਦਾ ਜਿਹੜਾ ਨਿਮਰਤਾ ਹੋਇਆ ਉਹਨੂੰ ਨਮੂਨੀਆ ਹੋਇਆ ਉਸ ਨਮੂਨੀਆ ਤੋਂ ਬਾਅਦ ਅੱਗੇ ਉਹਦੀ ਮਤਲ ਵੱਧਦੀ ਵੱਧਦੀ ਉਸ ਦੀ ਮੌਤ ਹੋ ਗਈ ਤੋ ਇਹ ਇਹ ਇਹ ਮੁਸ਼ਕਲ ਹੈ ਜਿਸ ਨੂੰ ਸੋਲਵ ਕਰਨਾ ਪੈਣਾ ਔਰ ਇਹ ਹੁਣ ਤੁਹਾਡੇ ਕੋਲ ਲੋਕੋ ਸਮਾਂ ਮੂਰਲੇ ਦੋ ਮਹੀਨੇ ਜਿਹੜਾ ਵੀ ਤੁਹਾਡਾ ਲੋਕਲ ਐਮਐਲਏ ਤੁਹਾਨੂੰ ਕੱਠਿਆਂ ਕਰਕੇ ਜਾਂ ਤੁਹਾਡੇ ਦਰ ਤੇ ਆ ਕੇ ਇਹ ਬਹੁਤ ਕਰਦੇ ਡੋਰ ਟੂ ਡੋਰ ਬਹੁਤ ਜਾਣਾ ਇਹਨਾਂ ਨੇ ਉਹਨੂੰ ਖੜਾ ਕੇ ਪੁੱਛਿਓ ਤੇ ਨਾਲ ਕਹੋ ਰਕੜਦੇ ਸਾਰੇ ਬੱਚੇ ਮਰ ਨੇ ਤੈਨੂੰ ਦੱਸ ਅਸੀਂ ਕਿੱਥੇ ਗੋਡੇ ਤੇ ਲਾਈਏ ਰਗੜ ਕੇ ਸਾਨੂੰ ਦੱਸ ਤੇਰੀ ਕੀ ਉਸ ਸਮੇਂ ਜਵਾਬ ਦੇ ਸੀ ਤੂੰ ਸਾਡੀ ਇਹ ਬੱਚੀ ਦੀ ਮੌਤ ਹੋਈ ਆਹ ਇੱਕ ਲੜਕੇ ਦੀ ਮੁਸ਼ਕਲ ਹੋਈ ਉੱਥੇ ਜਾਂ ਸਰੀ ਦੇ ਵਿੱਚ ਕਿਤੇ ਵੀ ਇਹਨਾਂ ਨੂੰ ਪੁੱਛਿਓ ਜੇ ਤੁਹਾਡੇ ਕੋਲ ਆਉਣ ਜਿਹੜੇ ਪਹਿਲਾਂ ਜਿੱਤੇ ਹੋਇਆ ਉਹ ਤੇ ਜਿਹੜੇ ਜਿੱਤਣ ਵਾਲੇ ਚੱਕਰ ਚ ਉਹਨਾਂ ਨੂੰ ਵੀ ਪੁੱਛੋ ਵੀ ਤੂੰ ਐਂਉਂ ਦੱਸ ਕੇ ਜਾ ਬਾਈ ਸਿਆ ਵੀ ਗਾਹ ਨੂੰ ਕੀ ਕਰੇ ਜੇ ਤੁਸੀਂ ਕਹੋ ਵੀ ਲਿਬਰਲ ਆ ਕੇ ਐਨਡੀਪੀ ਬਾਲੀ ਚੰਗੀਆਂ ਐਨਡੀਪੀ ਵਾਲੇ ਵੀ ਇਹੋ ਜਿਹਾ ਕੁਝ ਕਰਦੇ ਆ ਕੱਲ ਦੱਸ ਕੇ ਹਟਿਆ ਤੁਹਾਨੂੰ ਗ੍ਰੀਨ ਚ ਕੀ ਕਰਦੇ ਆ ਇੱਕ ਦੂਜੇ ਦੀ ਹੋੜ ਦੇ ਵਿੱਚ ਜਿਵੇਂ ਪਹਿਲਾ ਪਿਛਲੀ ਵਾਰ ਜਿਹਨਾਂ ਦੇ ਚੱਕਰ 'ਚ ਟਕਸੀਡੋ ਸਮਾਈ ਬੈਠੇ ਸੀ ਹੁਣ ਵੀ ਸੀਨੀਅਰ ਮਿਨਿਸਟਰੀ 'ਚ ਮੈਨੂੰ ਕਿਉਂ ਮੈਂ ਕਿਵੇਂ ਜਾਵਾਂ ਇਹ ਕਿਵੇਂ ਨਹੀਂ ਰਹਿ ਜੂ ਆਹੀ ਗੱਲ ਹੋਈ ਜਦ ਤੱਕ ਜਿੰਨੀ ਸਿਮਜ਼ ਉਹਨਾਂ ਨੇ ਪੈਨਰੋਮਾ ਨੂੰ ਆਪਣਾ ਡਿਕਲੇਅਰ ਨਹੀਂ ਕੀਤਾ ਸੂਹਮਲ ਸਟੈਪ ਡਾਊਨ ਨਹੀਂ ਹੋਈ ਸੂਹਮਲ ਨੂੰ ਪਿੱਛੋਂ ਕੋਈ ਹੋਰ ਸੀਨੀਅਰ ਜਗ੍ਹਾ ਤੇ ਜਾਣ ਵਾਲਾ ਬੰਦਾ ਉਹਨੂੰ ਉਹਨੇ ਚੂੜੀ ਚਾੜੀ ਹੋਈ ਸੀ ਤੇ ਇਹਨੂੰ ਜਾਣਦੇ ਪੈਨਰੋਮਾ 'ਚ ਸ਼ੋਰ ਸ਼ਾਟ ਸੀਟ ਤੇ ਇੱਥੇ ਜਾਵਾਂਗੇ ਤੇ ਇਹ ਜੇ ਜਿੱਤੇ ਨਾ ਜਿੱਤੇ ਤੇ ਮੈਂ ਸੀਨੀਅਰ ਮਿਨਿਸਟਰ ਬਣ ਇੱਕ ਚੱਕਰ ਨਹੀਂ ਇਹ ਬਹੁਤ ਕਿ ਜਿਹੜੇ ਗੁੰਗੁਣੇ ਜੇ ਤੁਰੇ ਫਿਰਦੇ ਆ ਨਾ ਵਿੱਚ ਇਹ ਸੌਖੇ ਨਹੀਂ ਹੈ ਦੱਸਦੇ ਨਹੀਂ ਕੁਛ ਹੈ ਇਹ ਬਹੁਤ ਔਖੀਆਂ ਗੱਲਾਂ ਹੈ ਇਹ ਦੂਜੇ ਬੰਨੇ ਉਹ ਤਾਂ ਸਟਾਰ ਵਾਲੇ ਆ ਉਹ ਇੱਥੋਂ ਚੱਕਿਆ ਉੱਥੇ ਲਾਤਾ ਆਟੋਵਾਚ ਬੈਠਾ ਕੋਈ ਸਰੀ ਦੇ ਐਮਐਲਏ ਦੀ ਫਾਈਨਲ ਉਹਦੀ ਜ਼ਿੰਦਗੀ ਕਰਦਾ ਫਿਰ ਮੈਂ ਇੱਥੋਂ ਇੱਥੇ ਕਰ ਇੱਥੋਂ ਇੱਥੇ ਗਾ ਛਤਰਾਂਜ ਤੇ ਸਾਰ ਪਾਸਾ ਖੇਲਦੇ ਆ ਲੋ ਇੱਥੇ ਤੀਜੇ ਬੰਦੇ ਜ਼ਰੂਰਤ ਹੈ ਮੈਂ ਮੇਰਾ ਮਨ ਇਹ ਆ ਕੋਈ ਅਹਜੀ ਵਧੀਆ ਪਾਰਟੀ ਸ਼ੁਰੂ ਜੇ ਆ ਨਹੀਂ ਤਾਂ ਅਗਲੀਆਂ ਇਲੈਕਸ਼ਨਾਂ ਤੱਕ ਉਹ ਜ਼ੋਰ ਫੜੇ ਹਰਜੀਤ ਸਿੰਘ ਜੀ ਲਾਈਨ ਨੰਬਰ 2 ਸਤਿ ਸ੍ਰੀ ਅਕਾਲ ਹਰਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਰਜੀਤ ਸਿੰਘ ਜੀ ਮੇਰਾ ਵੀ ਬੇਟਾ ਨਾ ਰਹਿਣਾ ਸੀ ਉਹਦੀ ਜਿਹੜੀ ਨਾਲ ਥੋੜੀ ਜਿਓ ਅਸੀਂ ਹਸਪੀਟਲ ਜਾਂਦੇ ਰਹਿੰਦੇ ਸੀ ਕਦੇ ਆਪਣੇ ਵਾਈਟ ਰੋਕ ਲੈ ਜਾਣਾ ਕਦੇ ਸਰੀ ਵਾਲੇ ਕੋਲੇ ਤੇ ਅਸੀਂ ਫਿਰ ਅੱਗੇ ਉਹਨੂੰ ਲੈ ਕੇ ਬੈਂਕੋੜਾ ਚਿਲਡਰਨ ਹਸਪੀਟਲ ਦੇ ਵਿੱਚ ਤੇ ਆਪਾਂ ਕਹਿੰਦੇ ਉੱਥੇ ਜਾਣਾ ਚਾਹੀਦਾ ਅਸੀਂ ਜਦੋਂ ਉੱਥੇ ਲੈ ਕੇ ਗਏ ਨਰਸ ਨੇ ਚੈੱਕ ਕੀਤਾ ਡਾਕਟਰ ਆ ਉਹ ਤਾਂ ਸੇਮ ਡਾਕਟਰ ਜਿਹੜਾ ਸਰੀ ਵਾਲੇ ਹਸਪੀਟਲ ਸੀ ਉਹੀ ਸੀ ਅਸੀਂ ਨਰਸ ਨੂੰ ਪੁੱਛਿਆ ਵੀ ਇਹ ਡਾਕਟਰ ਉੱਥੇ ਸੀਗਾ ਉਹ ਕਹਿੰਦੀ ਉਹੀ ਡਾਕਟਰ ਸੇਮ ਇੱਥੇ ਆਉਂਦੇ ਉਹੀ ਤਰ੍ਹਾਂ ਇੱਥੇ ਉਹੀ ਉੱਥੇ ਹੁੰਦੇ ਨੇ ਤੇ ਫਰਕ ਕੀ ਹੈ ਉੱਥੇ ਤੇ ਇੱਥੇ ਲਿਆਣ ਦਾ ਇਹ ਤਾਂ ਹਰਾਮ ਹੈ ਕਿ ਕਦੇ ਉੱਥੇ ਬਹੁਤ ਵਧੀਆ ਲਾਜਦਾ ਕਿ ਡਾਕਟਰ ਤਾਂ ਉਹੀ ਹੈ ਸੇਮ ਉਹੀ ਟੂਲ ਇੱਥੇ ਪਿਆ ਉਹੀ ਮੈਂ ਕਹਿ ਰਹੇ ਹਾਂ ਤੇ ਅਜਿਹਾ ਹਰਾਮ ਹੈ ਸੇਮ ਡਾਕਟਰ ਨੇ ਉੱਥੇ ਉਹ ਦੇਖਿਆ ਬੱਚੇ ਨੂੰ ਥੈਂਕ ਯੂ ਜੀ ਨਹੀਂ ਇਹ ਮੁਸ਼ਕਲ ਹੈ ਇਹ ਇਹ ਡਾਕਟਰ ਬਰਡਨ ਹੈ ਅੰਡਰ ਸਟਾਫ ਨੇ ਡਾਕਟਰ ਕੰਮ ਕਰਨ ਨੂੰ ਜੇ ਕੋਟ ਜਾਂਦਾ ਡਾਕਟਰ ਕੰਮ ਕਰਨਾ ਚਾਹੁੰਦਾ ਪਰ ਅੰਡਰ ਸਟਾਫ ਹੈ ਕਰਨ ਕੀ ਲੋਕ ਇਹ ਦੁਨੀਆ ਦੀ ਪ੍ਰੋਬਲਮ ਆ ਰਾਜਨੀਤਿਕ ਬੰਦੇ ਤੇ ਨਾਲ ਡਰਗ ਦੀ ਪ੍ਰੋਬਲਮ ਦੁਨੀਆ ਦੇ ਵਿੱਚ ਸੇਮ ਪ੍ਰੋਬਲਮ ਆ ਚਾਹੇ ਉਹ ਪੰਜਾਬ ਆ ਚਾਹੇ ਬੀਸੀ ਇਹ ਸਾਰੇ ਉਹੋ ਜਿਹੇ ਨੇ ਉੱਥੇ ਕੁਰਤਾ ਪਜਾਮਾ ਪਾਈ ਫਿਰਦੇ ਮੁਕਸਰੀਆ ਇੱਥੇ ਸਕਰਟਾ ਤੇ ਪੈਂਟਕੋਟ ਪਾਈ ਫਿਰਦੇ ਨੇ ਫਰਕ ਕੋਈ ਨਹੀਂ ਹੈ ਸਭ ਮਖਮਲੀ ਗੱਲੇ ਗੱਲਾਂ ਵਾਲੇ ਨੇ ਗੱਲਾਂ ਕਰਕੇ ਜੱਫੀਆਂ ਪਾ ਕੇ ਹਾਸੇ ਬਖੇਰ ਕੇ ਬਸ ਵੋਟਾਂ ਲੈ ਲਈਆਂ ਆ ਦੇਖਿਓ ਹੁਣ ਮਹੀਨੇ 3 ਰਹਿੰਦੇ ਨੇ ਹੁਣ ਸਰਪਲਸ ਬਜਟ ਦੇਖੀ ਤੁਹਾਡੇ ਮੋਢਿਆਂ ਤੇ ਕਿਵੇਂ ਅੱਜ ਟੰਗਦੇ ਹਰਜੀਤ ਸਿੰਘ ਜੀ ਲਾਈਨ ਨੰਬਰ 3 please you try your call again later narinder singh ji line number ha gazat di ga satshya kal ji mai photo pronto bolda mai pronto di hal das dena ji mere na csi de vich condenser te gussa aake nau vichte reh gaya galaude te maasi le gaya mole ho na mai saher 5 baje da gaya emergency mere 3 baje tak kise ne pehde putte ne puchya sa lok cotton deta ch rakhiye jin de menu kehi jagah pronto ji ਅੱਛਾ ਜੀ ਤੇ ਮੈਂ ਇਹ ਦੇਖੋ ਮੈਨੂੰ ਭੁੱਖ ਲੱਗੀ ਹੋਈ ਮੈਂ ਕੌਰ ਨੂੰ ਉੱਧਾ ਰੱਖਿਆ ਉਹ ਗੂਠਾ ਨਾਲ ਲੱਥਾ ਤੇ ਮੈਂ ਬਾਹਰ ਮਕਰੋਲ ਖਾਣ ਏਦਾਂ ਆਈ ਤੇ ਉਹ ਨਾ ਚੱਕ ਕੇ ਫਰਾਗ ਉੱਧਰ ਹੱਡੀ ਵੱਧ ਕੇ ਮਾਂ ਉਹਦੇ ਪੱਤੀ ਨੇ ਦਿੱਤੀ ਗੋਲੀਆਂ ਲੈਤੀਆਂ ਕਿਉਂਕਿ ਦਿਨ ਬਾਅਦ ਆਈ। ਹੁਣ ਇਹ ਦੇਖੋ ਵੀ ਹੂਣ ਉਹਦੇ ਬਗੀ ਗਿਆ। ਹੂਣ ਵਾਖ ਕੇ ਉਹ ਪੱਥਰ ਬਣ ਕੇ ਦਸ ਦਿਨਾਂ ਕੱਦ ਆਵੇ ਬਾਦਰ ਗਿਆ ਤਾਂ ਉਹ ਕਹਿੰਦੀ ਇਹਨੂੰ ਖੋਲ ਮੈਂ ਕਿਹਾ ਕਿ ਦੱਕਾ ਖਲੂਗਾ ਤਾਂ ਪੱਥਰ ਬਣਿਆ ਪਿਆ ਔਰ ਪਾਣੀ ਜਦ ਬੋਲ ਨਿਕਲਿਆ ਤਾਂ ਦੋ ਤਿੰਨ ਬਾਰੇ ਕਹਿੰਦੀ ਸਟਾਈ ਕਰ ਮੈਂ ਕਿਹਾ ਵੀ ਨਹੀਂ ਮੈਂ ਹੱਥ ਨਾਲ ਲਾਉਂ ਗਿਆ ਮੇਰਾ ਵੀ ਸੁਜਿਆ ਬਾਹਮ ਵੀ ਸੁਦੀ ਹੈ ਉਹ ਦੋ ਤਿੰਨ ਵਾਰ ਟ੍ਰਾਈ ਕੀਤੀ ਮੈਂ ਹੱਥ ਨਾਲ ਮੈਨੂੰ ਪਤਾ ਮੇਰਾ ਦਰਦ ਕਰਨਾ ਜਦੋਂ ਮੈਨੂੰ ਕਹਿੰਦੀ ਮੇਰਾ ਹੋ ਗਿਆ ਟੈਬ ਆਹ ਤੱਕ ਕਾਟਨ ਆਪਿੰਦ ਦਵਾਈ ਲੈ ਕੇ ਆਪਕੇ ਘਰ ਜਾ ਕੇ ਕਰ ਲੈਂਗੇ ਮੈਂ ਉੱਥੇ ਘਰੇ ਆ ਕੇ ਟ੍ਰਿਪ ਬਹੁਤ ਪਾਇਆ ਵਿੱਚ ਕੁਝ ਉੱਥੇ ਨਾਲ ਸੀ ਕੁਝ ਜਿਆਦਾ ਦੇਖਿਆ ਬਹੁਤ ਸਾਰੇ ਖੂਨ ਆ ਫੇਰ ਭੱਗ ਗਿਆ ਮੈਨੂੰ ਪਤਾ ਹਾਂਜੀ ਭੈਣ ਅਨੇ ਇੰਦਰਕੌਰ ਜੀ ਸਾਹ ਕੁਲਦੀਪ ਸਿੰਘ ਸੇਖੋਂ ਜੀ ਲਾਈਨ ਅਪ ਸੋਸਰੀਕਾਲ ਹਰਜੀਤ ਸਿੰਘ ਜੀ ਸਤਸਿਕਾ ਬੈ ਜੀ ਸਿੰਘ ਜੀ ਐਕਚੁਅਲੀ ਬਾਈ ਜੀ ਜਿਹੜਾ ਸਿਸਟਮ ਆ ਨਾ ਆ ਆਪਣੇ ਬਹੁਤ ਸਾਲਾਂ ਤੋਂ ਸਪੋਇਲ ਹੋ ਗਿਆ ਜਿਵੇਂ ਆਰੇ ਆ ਨਸਪੀ ਆ ਫਾਰਮੈਕਾ ਆ ICBC ਆ WCB ਆ ਤੇ ਇਹ ਜਿਹੜੇ ਮਹਿਕਮੇ ਆ ਇਹਨਾਂ ਦੇ ਸੀਓ ਤੇ ਓਵਰਹੈਡ ਖਰਚੇ ਤੇ ਇਹਨਾਂ ਦੀ ਜਿਹੜੀ ਮੈਸ ਆ ਸਾਰਾ ਪੈਸਾ ਹੈ ਹੁਣ ਐਮਐਸਪੀ ਦਾ ਬਜਟ ਇੰਨਾ ਵੱਡਾ ਆ ਜਿਹੜੇ ਸੀਓ ਆ ਉਹ 5-5 ਲੱਖ ਡਾਲਰ ਲੈਂਦੇ ਆ ਜਿੰਨੀਆਂ ਆਰਐਨਨ ਨਰਸਾਂ ਸਾਰੀਆਂ ਨੂੰ ਸਾਰ-ਸਾਰ ਘੰਟਾ ਹੋਰ ਮਿਲਦਾ 85 ਦੇ ਖੈਰ ਨਿਊ ਨਰਸਸ ਤੇ ਡਾਕਟਰਾਂ ਦੇ ਇੰਨਾ ਓਵਰਲੋਡ ਆ ਉਹਨਾਂ ਨੂੰ ਓਵਰਟਾਈਮ ਮਿਲਦਾ ਆ ਉਹ ਪੈਸੇ ਠੀਕ ਆ ਬਣਾਈ ਜਾਂਦੇ ਆ ਪਰ ਕੇਅਰ ਕੋਈ ਨਹੀਂ ਮੈਂ ਤੁਹਾਨੂੰ ਆਪ ਹੱਡ ਬੀਤੀ ਦੱਸਦਾ ਆ 2012 ਤੋਂ ਮੈਂ ਸਪੈਸ਼ਲਿਸਟ ਚੈੱਕ ਕਰਾਰਿਆ ਸੀ ਕੋਲਨਸਕਾਪੀ ਕਰਾਰਿਆ ਸੀਗਾ ਉਹਨਾਂ ਨੇ CT ਉਹ ਕਹਿੰਦੇ ਵੀ ਕੁਝ ਨਹੀਂ ਹੈ ਵੀ ਹੋਰ ਫਾਰਦਰ ਛੋਟੀ ਚੈੱਕ ਕਰਨੀ ਪੈਣੀ ਆ ਮੈਂ ਸਪੈਸ਼ਲਿਸਟ ਦੇ ਅਪਾਇੰਟਮੈਂਟ ਬਣਾਈ ਡਾਕਟਰ ਸਾਹਿਬ ਆ ਮੈਂ ਨਾਲ ਲੈਂਦਾ ਵੀ ਉਹਦਾ ਝਿਜਕਦਾ ਉਹ ਬੰਦੇ ਨੇ 2-3 ਸਾਲ ਮੈਨੂੰ ਲਮਕਾਈ ਰੱਖਿਆ ਕੁਝ ਨਹੀਂ ਕੀਤਾ ਕੀਰ ਨੂੰ ਮੇਰੀ ਕੋਲਨਸਕਾਪੀ ਫੇਰ ਕਰਾ دی۔ ਮੈਂ ਇੰਡੀਆ ਸਪੈਸ਼ਲਿਸਟ ਦੇਖਿਆ ਉਹ ਕਹਿੰਦਾ ਵੀ ਜਦੋਂ ਕੋਲਨਸਕਾਪੀ ਦੇ ਵਿੱਚ ਠੀਕ ਆ ਤਾਂ ਤੇਰੀ ਛੋਟੀ ਇੰਟਰਸਟਾਈਮ ਦੀ ਕੈਪਸੂਲ ਕੈਮਰੇ ਦੇ ਨਾਲ ਹੋਣੀ ਚਾਹੀਦੀ ਐ ਸਕੋਪੀ ਮੈਨੂੰ ਉਹਨਾਂ ਨੇ ਮੁੱਕ ਵੀ ਕੀਤਾ ਬਿਆਨ ਅੰਦਰ ਉਹ ਮੇਰੀ ਪ੍ਰੇਪਰੇਸ਼ਨ ਅਸੋ ਹੀ ਅਗਲੇ ਦਿਨ ਮੇਰੀ ਫਲਾਈਟ ਸੀ ਮੈਨੂੰ ਦੱਸਿਆ ਮੈਂ ਕਿ ਮੈਂ ਸਾਰੇ ਤੇ ਮੈਨੂੰ ਕਹਿੰਦਾ ਨਹੀਂ ਅਸੀਂ ਆਪ ਲੈਬ ਟੈਸਟ ਕਰਨੇ ਆ ਦੁਬਾਰਾ ਫੇਰ ਮੇਰੀ ਸੀ.ਡੀ ਸਕੈਨ ਕਰਾਈ ਜਦੋਂ ਕੁਝ ਨਾ ਆਇਆ ਫੇਰ ਮੈਨੂੰ ਕਹਿੰਦਾ ਥੋੜੀ ਜਿਹੀ ਇਨਫੋਰਮੇਸ਼ਨ ਆਉਂਦੀ ਤੇ ਵੀ ਹੁਣ ਕੈਪਸੂਲ ਕੈਮਰਾ ਤੇਰੀ ਜਿਹੜੀ ਹੈਗੀ ਉਹ ਕਰਦੇ ਆ ਉਹ ਕੀਤੀ ਉਹਦੇ ਚ ਅਲਸਰ ਨਿਕਲਿਆ ਸਾਬ ਮੈਨੂੰ ਪਹਿਲਾਂ ਹੀ ਉਸ ਕਾਫੀ ਕਰਨ ਤੋਂ ਪਹਿਲਾਂ ਹੀ ਮੈਨੂੰ ਚਾਈ ਮਿਲੀਗ੍ਰਾਮ ਪ੍ਰੈਣੀ ਸੌਂਦੇ ਦੀ ਵੀ ਨਾ ਕਹਿੰਦਾ ਵੀ 3 ਮਹੀਨੇ ਲਈ ਚੱਲ ਹਰੇਕ ਵੀਰ ਇੱਕ ਗੋਲੀ ਘਟਾਈ ਜਾਣੀਆਂ ਉਹਨੇ ਮੇਰੇ ਹਾਰਮੋਨ ਚੇਂਜ ਕਰਤੇ ਸਾਰੀ ਸਾਇੰਸ ਚੀਜ਼ ਕਰਤੀ ਕੈਮੀਕਲ ਚੇਂਜ ਕਰਤੇ ਜਦੋਂ ਅਲਸਰ ਨਿਕਲਿਆ ਕਹਿੰਦਾ ਇਹਨੂੰ ਬੰਦ ਕਰ ਦੇ ਮੈਨੂੰ ਚਾਕੇ ਇੱਕ ਪੰਟਾਸਾ ਨਾਂ ਦੀ ਦਵਾਈ ਆ ਉਹਦੇ ਵਿੱਚ ਸੈਲੀਸੈਲਿਕ ਐਸਿਡ ਹੁੰਦਾ ਉਹ ਮੈਨੂੰ ਦੇਤੀ ਤੇ ਐਸਪ੍ਰਿਨ 'ਚ ਵੀ ਸੈਲੀਸੈਲਿਕ ਐਸਿਡ ਹੁੰਦਾ ਉਹ ਹਾਲਾਂਕਿ ਮੇਰੇ ਚਾਰਟ 'ਤੇ ਲਿਖਿਆ ਵੀ ਮੈਨੂੰ ਉਹ ਤੋਂ ਅਲਰਜੀ ਆ ਤੇਰੇ ਪੁੱਤਰੇ ਮੈਨੂੰ ਦੇਦੀ ਦੀ ਮੈਂ ਲੈ ਲਈ ਦੋ ਡੋਜਾਂ ਹੀ ਲਈਆਂ ਮੈਨੂੰ ਬਲੱਡ ਮੈਂ ਫੋਨ ਕੀਤਾ ਲੋਕਾਂ ਮੈਨੂੰ ਫੋਨ ਗੱਲ ਤਾਂ ਆ ਮੈਸੇਜ ਛੱਡੋ ਫੇਰ ਉਹ ਕਾਲ ਅਟਰਨ ਕਰਦੀ ਆ ਦੋ ਦਿਨਾਂ ਬਾਅਦ ਜਾਂ ਇੱਕ ਦਿਨ ਬਾਅਦ ਤਾਂ ਮੈਨੂੰ ਕਹਿੰਦੇ ਵੀ ਉਹਨੂੰ ਬੰਦ ਕਰ ਮੈਂ ਕਿਹਾ ਵੀ ਠੀਕ ਆ ਤਾਂ ਮੇਰੇ ਘਰੇ ਪ੍ਰਸਕ੍ਰਿਪਸ਼ਨ ਆ ਗਈ ਮੇਲ ਦੇ ਵਿੱਚ ਮੈਨੂੰ ਨਾਮੇਰ ਨਾਲ ਗੱਲ ਕੀਤੀ ਨਾ ਮੈਨੂੰ ਦੱਸਿਆ ਵੀ ਤੂੰ ਕੀ ਕਰਨਾ ਤਾਂ ਮੈਨੂੰ ਐਸਾ ਕੋਲ ਨਾ ਆਈ ਇੱਕ ਦਵਾਈ ਲਗਤੀ ਉਹ ਵੀ ਉਹ ਸੇਮ ਰੂਪੀ ਆਸਾ ਲੀ ਸੈਲ ਕੈਸਰ ਜਦੋਂ ਮੈਂ ਉਹ ਲੈ ਲਈ ਪਹਿਲਾਂ ਦਾ 100 ਰੂਪੀ 100 ਦੀ ਮੈਂ ਦਵਾਈ ਲਿਆ ਉਹ ਵੀ ਮੇਰੀ ਐਵੇਂ ਗਈ ਫਿਰ ਮੈਂ ਦੂਜੀ ਲਿਆ ਜਦੋਂ ਮੈਂ ਲੈ ਲਈ ਦੋ ਦੋ ਜੇ ਮੈਂ ਲਈਆਂ ਮੈਨੂੰ ਫੇਰ ਉਹੀ ਕੰਮ ਫੇ ਮੈਂ ਫੋਨ ਕੀਤਾ ਨਾ ਉਹ ਪਿਓ ਦੇ ਪੁੱਤਰੇ ਅੱਜ ਤੱਕ ਮਹੀਨਾ ਡੇਢ ਮਹੀਨਾ ਹੋ ਗਿਆ ਕਦੇ ਫੋਨ ਟਰਨ ਕੀਤਾ ਨਾ ਮੇਰੀ ਗੱਲ ਸੁਣੀ ਹਾਰ ਕੇ ਮੈਂ ਮੈਂ ਉਹ ਦਵਾਈ ਬੰਦ ਕਰਕੇ ਇੱਥੇ ਲੈ ਆਪਣੇ ਜਾ ਕੇ ਕਿਸਾਰਤ ਹਸਪੀਟਲ ਚ ਦਾਖਲ ਹੋਇਆ ਉਹ ਕਹਿੰਦੇ ਵੀ ਦਵਾਈ ਬੰਦ ਕਰ ਵੀ ਉਹਦੇ ਨਾਲ ਅਲਸਰ ਹੋਇਆ ਤੈਨੂੰ ਵੀ ਵੱਧ ਗਿਆ ਬਲੀਡਿੰਗ ਹੋਣ ਲੱਗੀ ਹੁਣ ਮੈਂ ਜਾ ਕੇ ਮੁੜ ਕੇ ਹੋਰ ਹਾਰ ਸਪੈਸ਼ਲਿਸਟ ਦੀ ਅਪਾਇੰਟਮੈਂਟ ਬਣਾਈ ਆ ਇਸੇ ਤਰ੍ਹਾਂ ICBC ਆ ਜਿਹੜਾ ਵਿਅਕਤ ਮੈਂ ਉਹਨੂੰ 32-40 ਹਜ਼ਾਰ ਪੱਲੇ ਪੈਂਦਾ ਡੂੜ ਲੱਖ ਡਾਲਰ ਘੱਟੋ ਘੱਟ ਲੋਅਰ ਤੇ ਡਾਕਟਰ ਜਿਹੜੇ ਉੱਥੇ ਤੁਹਾਡੀਆਂ ਅਪਾਇੰਟਮੈਂਟਾਂ ਬਣਾਉਂਦਾ ਅਸੈਸਮੈਂਟਾਂ ਕਰਦੇ ਆ ਉਹ ਲੈ ਜਾਂਦੇ ਆ ਇਸੇ ਤਰ੍ਹਾਂ ਜਿਹੜੀ ਫਾਰਮੇਕੇਰ ਆ ਕਰੋੜਾਂ ਰੁਪਈਆ ਜਿਹੜੀ ਦਵਾਈ ਇੱਥੇ ਓਪਰਾਮੇਜ਼ੋਲ ਆ ਜਿਹਨੂੰ ਓ ਐਸਿਡ ਕਹਿੰਦੇ ਆ ਇੱਥੇ 2 ਡਾਲੇ ਦਾ ਆਉਂਦਾ ਉੱਥੇ 10 ਰੁਪਈਏ ਦਾ ਆ ਜਾਂਦਾ ਇੰਡੀਆ ਤੋਂ ਅਧੀਆਂ ਦਵਾਈਆਂ ਇੰਡੀਆ ਤੋਂ ਆਉਂਦੀਆਂ ਜਿੰਨਾ ਮੈਡੀਕਲ ਦਾ ਲੋਡ ਆ ਸਮਾਨ ਆ ਸਰੰਜਾਂ ਜਾਂ ਜਿਹੜਾ ਮੈਡੀਕਲ ਏਡ ਆ ਜਿੱਲੀ ਇੰਡੀਆ ਤੋਂ ਆਉਂਦੀ ਐ ਅਮਰੀਕਾ ਨੂੰ ਵੀ ਕੈਨੇਡਾ ਨੂੰ ਵੀ ਇੰਗਲੈਂਡ ਨੂੰ ਵੀ ਬਹੁਤ ਸਾਰਾ ਸਰਜੀਕਲ ਈਵਨ ਜਿੰਨਾ ਦਵਾਈਆਂ ਮੈਡੀਸਨ ਉੱਥੋਂ ਆਉਂਦੀਆਂ ਤੇ ਇਹ ਪੈਸਾ ਫਾਰਮਾਸਿਊਟੀਕਲ ਕੰਪਨੀਆਂ ਜਿਹੜੀਆਂ ਇੰਨਾ ਪੈਸਾ ਕਿਉਂ ਕਾਈ ਜਾਂਦੀਆਂ ਇਹਦਾ ਸਾਰਾ ਕੁਝ ਓਵਰਆਲ ਕਰਨ ਵਾਲਾ ਹੁਣ ਮੈਨੂੰ ਜ਼ਿਆਦਾ ਵੀ ਕੰਪਨੀ ਮੇਰੇ ਬ੍ਰਦਰ ਦੀ ਡਿੱਗ ਪਿਆ ਉਹ ਆਪਣਾ ਟਵੀਟ ਕਰੈਕ ਆ ਗਿਆ ਉਹਦੀ ਆਪਦੀ ਕੰਪਨੀ ਉਹ 1 ਮਹੀਨਾ ਅਰੈਸਟ ਕੀਤੀ ਉਹ ਕੰਮ ਤੇ ਜਾਣ ਲੱਗਿਆ ਉਹਨੂੰ 49000 ਦਾ ਆ ਗਿਆ ਬਿੱਲ ਵੀ ਉਹ ਕਹਿੰਦੇ ਵੀ ਤੇਰੇ ਬਿਹਾਵ ਚ ਹੀ 50000 ਡਾਲਰ ਪੇ ਕੀਤਾ। ਉਹਨੂੰ ਮਿਲਿਆ 2500 ਡਾਲਰ। ਕੀ ਨਿਹਰਾ। ਹੁਣ ਤੁਸੀਂ ਹਿਸਾਬ ਲਾ ਲਓ ਜਾਂਦੇ ਆ ਕੀ ਕਰ ਰਹੇ ਆ ਇਹਨੂੰ ਜਿੰਨਾ ਇਹ ਕਰ ਰਹੇ ਉੱਥੇ ਜਾਂਦੇ ਆ ਮੈਂ ਕਨੇਵਰੀ ਅਮਰ ਸਿੰਘ ਹਸਪੀਟਲ ਜਾਇਆ ਇੱਥੇ ਪ੍ਰੋਬਲਮ ਦੀ ਖਾਤਰ ਉੱਥੇ ਸਿਰਫ ਤੁਹਾਨੂੰ ਬੋਤਲ ਪੀਨ ਕਿਲਰ ਦੇ ਕੇ ਬੰਮ ਫ੍ਰੀਜ਼ ਕਰਨ ਵਾਲੀ ਦਵਾਈ ਦੇ ਕੇ ਦੇ ਦਿੰਦੇ ਆ ਤੇ ਵੀ ਸਪੈਸ਼ਲਿਸਟ ਦੇਖ ਅਸੀਂ ਕੋਈ ਨਹੀਂ ਕਰ ਸਕਦੇ। ਤੇ ਸਪੈਸ਼ਲਿਸਟਾਂ ਦੀ ਦੋਵੇਂ ਗੱਲ ਕਰਨੀ ਕਿਉਂ ਨਹੀਂ ਇਹਦੇ ਤੇ ਗੱਲਬਾਤ ਕਰਾਂਗੇ ਸੇਖੋਂ ਸਰ ਥੈਂਕ ਯੂ ਮੈਡੀਕਲ ਫੀਲਡ ਕਰਕੇ ਉਹਨਾਂ ਨੂੰ ਪਤਾ ਦੇਖੋ ਦਵਾਈਆਂ ਤੇ ਐਸਿਡ ਜਿਹੜਾ ਸਾਲਟ ਆ ਇੱਥੇ ਤੱਕ ਦੱਸਿਆ ਨਰਸਿੰਗ ਸਟੂਡੈਂਟਸ ਇੱਥੇ ਬਹੁਤ ਨੇ ਉਥੋਂ ਲੜਕੀਆਂ ਲੜਕੇ ਬਹੁਤ ਨਰਸ ਨੇ ਜਿਹੜੇ ਇੱਥੇ ਨੇ ਉਹਨਾਂ ਨੂੰ ਅਪਗ੍ਰੇਡ ਕਰਨ ਲਈ ਮਹਿੰਗਾ ਬਹੁਤ ਆ ਸਿਸਟਮ ਮਹਿੰਗੇ ਦੇ ਲਈ ਉਹਨਾਂ ਦੀ ਸਪੋਰਟ ਨਹੀਂ ਹੈ ਡਾਕਟਰ ਕਿੰਨੇ ਨੇ ਜਿਹੜੇ ਟੈਕਸੀਆਂ 'ਚ ਤੁਰੇ ਫਿਰਦੇ ਆ ਕੋਈ ਫਾਰਮਾ 'ਚ ਤੁਰੇ ਫਿਰਦਾ ਅਪਗ੍ਰੇਡ ਕਰਨ ਲਈ ਪੈਸੇ ਨਹੀਂ ਸਿਸਟਮ ਦੀ ਫੇਲਰ ਆ ਅੰਡਰ ਸਟਾਫ ਆ ਤੇ ਡਾਕਟਰ ਨਾਲ ਡਾਕਟਰ ਵੇਰੀ ਕਰਦਾ ਇੱਕ ਹੋਰ ਕਾਲਰ ਲਿਖਿਆ ਵੀ ਮੇਰੀ ਵਾਈਫ ਦੇ ਗੈਲ ਬਲੈਡਰ ਦੇ ਵਿੱਚ ਸਟੋਨ ਸੀ ਅਸੀਂ ਇੱਥੇ ਢੇੜੇ ਚੜਦੇ ਰਹੇ ਦਰਦ ਹੋਵੇ ਉਹ ਕਹਿੰਦੇ ਐਸਿਡ ਦੀ ਐਸਿਡ ਦੀ ਦਵਾਈ ਲਿਆ ਇੰਡੀਆ ਗਏ ਹੁਣ ਦਰਦ ਹੋ ਗਿਆ ਜਾਂ ਡਾਕਟਰ ਨੇ ਚੈੱਕ ਕੀਤਾ ਉਹ ਕਹਿੰਦੇ ਵੀ ਹੁਣ ਪੂਰਾ ਤੇਰਾ ਜਿਹੜਾ ਇਹ ਬਲੈਡਰ ਆ ਉਹ ਬਿਲਕੁਲ ਗਲ ਬਲੈਡਰ ਆ ਜਿਹੜਾ ਪੂਰਾ ਸਟੋਨ ਨਾਲ ਭਰਿਆ ਤੇ ਇਹਦੇ ਤੋਂ ਬਾਅਦ ਫੂਡ ਪਾਈਪ ਸਰਜਰੀ ਕਰਕੇ ਗਲ ਬਲੈਡਰ ਕੱਢਿਆ ਔਰ ਤੁਸੀਂ ਮਾੜਾ ਛੇੜੋ ਲੋਕ ਐਉਂ ਆਉਂਦੇ ਆ ਵਿਆਹ ਹੋ ਗਿਆ ਆ ਹੋ ਗਿਆ ਆ ਹੋ ਗਿਆ ਵਪਾਰਕ ਸਥਿਤੀ ਤੋਂ ਬਾਅਦ ਹੁਣੇ ਗगन ਰਜਿੰਦਰ ਕੌਰ ਜੀ ਤੇ ਐ ਵੀ ਬੈਨਿਫਾਇਡ ਹੁਣੇ ਗੱਲ ਕਰਦਾ ਜੀ ਇੱਕ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਸਾਰੇ ਚਾਹੋ ਪ੍ਰਾਈਵੇਟ ਕਰਾ ਲਓ ਚਾਹੇ ਕੁਛ ਕਰਾ ਲਓ ਇੱਕ ਗਲੂਟਨ ਦੀ ਅਲਰਜੀ ਜ਼ਰੂਰ ਚੈੱਕ ਕਰੋ ਗਲੂਟਨ ਦੀ ਅਲਰਜੀ ਚੈੱਕ ਨਹੀਂ ਹੁੰਦੀ ਤੇ ਬਹੁਤ ਲੋਕ ਉਹਨਾਂ ਬਿਮਾਰ ਹੋਏ ਬੁਰਾ ਹਾਲ ਹੋ ਰਿਹਾ ਮੇਤੇ ਦਾ ਗਲੂਟਨ ਬਹੁਤ ਲੋਕਾਂ ਨੂੰ ਅਲਰਜੀ ਹੈ ਚੈੱਕ ਕਰੋ ਇਹ ਵੇਲੜੀਆਂ ਕੰਕਾਂ ਇੱਥੇ ਇਹ ਵੇਲੜੀਆਂ ਕੰਕਾਂ ਕਰਕੇ ਮੁਸ਼ਕਲ ਹੈ ਉਹ ਜਿਹੜੀਆਂ ਤੁਹਾਡੀਆਂ ਪੁਰਾਣੀਆਂ ਜਿਹੜੀਆਂ ਉੱਥੋਂ ਖਾਂਦੇ ਆ ਸੀ ਉਹ ਨਹੀਂ ਇੱਥੇ ਹੈ ਪਤਾ ਨਹੀਂ ਕੀ ਕੀ ਰਲਾਉਂਦੇ ਆ ਗਗੰਦੀ ਲਾਈਨ ਨੰਬਰ 3 ਸਤਿ ਸ਼੍ਰੀ ਅਕਾਲ ਗਿਲਸਾਤ ਧੰਵਾ ਜੀ ਸਮਾਂ ਸਤਿ ਸ਼੍ਰੀ ਅਕਾਲ ਬਾਈ ਜੀ ਗਿਲਸਾਤ ਪਹਿਲੋਂ ਜੀ ਰੁਗ ਭਰਦਾ ਉਸ ਬੱਚੀ ਦਾ ਜ਼ਿਕਰ ਕਰਕੇ ਮਾਂ ਜਿਹੜੀ ਇੰਨਾ ਕੁਝ ਫਿਰ ਵੀ ਮੀਡੀਆ ਦੇ ਸਾਹਮਣੇ ਬੋਲ ਰਹੀ ਆ ਆਪਣੀ ਬੱਚੀ ਨੂੰ ਖੁਦ ਤਿੱਲ ਤਿੱਲ ਕਰਕੇ ਉਹਨੇ ਮਰਦਿਆਂ ਦੇਖਿਆ ਜੀ ਪਰ ਉਹਦੇ ਤੋਂ ਬਾਅਦ ਜਿਹੜਾ ਦੀ ਗੱਲ ਆ ਬਈ ਆਪਣੇ ਆਪ ਕੀ ਕਦੇ ਐਦਾਂ ਸੁਣਿਆ ਵੀ ਜਿਹੜੇ ਵਿਦਿਆਰਥੀ ਨੇ ਕੋਈ ਟੈਸਟ ਦਿੱਤਾ ਆ ਉਹ ਆਪਣੇ ਆਪ ਹੀ ਉਹਦੀ ਏਵੈਲੂਏਸ਼ਨ ਕਰ ਲਵੇ ਫਰੇਜ਼ਰ ਹੈਲਥ ਦੀਆਂ ਗਲਤੀਆਂ ਆ ਫਰੇਜ਼ਰ ਹੈਲਥ ਹੀ ਉਹਦੇ ਤੇ ਇਨਕੁਆਰੀ ਕਰਨ ਲੱਗੀ ਬੜੀ ਗੱਲ ਹੈ ਜੀ ਤੇ ਜੀ ਜਿਹੜੇ ਕੌਲੀ ਚਟਪੁਰੇ ਫਿਰਦੇ ਆ ਹੁਣ ਬਾਰੇ ਨੋਟ ਕਰ ਰਿਹਾ ਸੀਗਾ ਕਿਸੇ ਨੇ ਇਹਦੇ ਬਾਰੇ ਇੱਕ ਸ਼ਬਦ ਤੱਕ ਨਹੀਂ ਬੋਲਿਆ ਪੰਜਾਬ ਦੇ ਬਾਰੇ ਅਸੀਂ ਇੰਨਾ ਕੁਝ ਬੋਲਦੇ ਜੀ ਉੱਤੇ ਨਸ਼ੇ ਆ ਜੀ ਉੱਥੇ ਐਦਾਂ ਜੀ ਓਨ ਰੈਕੋਰਡ ਆ 900 ਤੋ ਉਪਰ ਬੰਦਾ ਓਵਰਡੋਜ਼ ਦੇ ਨਾਲ ਕੱਲੀ BC ਦੇ ਵਿੱਚ ਚੜ੍ਹਾਈ ਕਰ ਗਿਆ ਜਿਹਦੀ ਐਵਰੇਜ ਤਕਰੀਬਨ 3 ਘਰ ਹਰ ਰੋਜ਼ ਉੱਜੜਦੇ ਸੀ ਇਸੇ ਕੋਈ ਨੀ ਅਜੇ ਤੱਕ ਬੋਲਿਆ ਤੇ ਜਿਹੜਾ ਬਜਟ ਕਹਿੰਦੇ ਆ ਬਜਟ ਜੀ ਸਾਡਾ ਤਾਂ ਘਾਟੇ ਵਾਲਾ ਬਜਟ ਹੀ ਹੈ ਨੀਗਾ ਮੈਂ ਆ ਸਾਹਿਬ ਆਏ ਸੀ ਪਿਛਲੇ ਹਫ਼ਤੇ ਤੁਹਾਡੇ ਈਡੀਓ ਤੇ ਰਸਕੇ ਗਏ ਜੀ ਬਈ ਅਸੀਂ ਐਦਾਂ ਕਰਦੇ ਆਂਗੇ ਅਸੀਂ ਉਦਾਂ ਕਰਦੇ ਆਂਗੇ ਹਣੇ ਥੋੜਾ ਜਿਹਾ ਇਸ ਟਾਪਿਕ ਤੋਂ ਹਟ ਕੇ ਆ ਜੀ ਸਾਡੇ ਕੰਟੇਨਰ ਟਰਕਿੰਗ ਕਮਿਸ਼ਨਰ ਦੀ ਅਡਵਾਈਜ਼ਰੀ ਦੀ ਮੀਟਿੰਗ ਸੀਗੀ ਜੀ ਅੱਜ ਅਸੀਂ ਉਹਨਾਂ ਨੂੰ ਫਰਡੇ ਮੈਂ ਈਮੇਲ ਕੀਤੀ ਦੋ ਅੱਜ ਕਿਤੇ ਮਿੰਟ ਤੇ ਤੇ ਉਹਨਾਂ ਨੂੰ ਦੋ ਕਨਸਰਨਸ ਸੀਗੇ ਉਹਨਾਂ ਨੂੰ ਮੈਂ ਕਨਸਰਨ ਵੀ ਮੈਂ ਦੱਸ ਦਿੰਨਾ ਵੀ ਇੱਕ ਇਹੋ ਕੰਪਨੀ ਦਾ ਰਿਪਰੈਜ਼ੈਂਟੇਟਿਵ ਉੱਥੇ ਬਿਠਾ ਲਿਆ ਜਿਨ੍ਹਾਂ ਤੇ ਇਹ ਇਲਜ਼ਾਮ ਨਹੀਂ ਲੱਗਿਆ ਇਸ ਸਾਬਤ ਹੋ ਚੁੱਕਿਆ ਕਿ ਉਹਨਾਂ ਨੇ ਕਿਸੇ ਡਰਾਈਵਰ ਤੇ 8000 ਡਾਲਰ ਮਾਰਿਆ ਫਿਰ ਸਮਾਲ ਕੋਟ ਦੇ ਵਿੱਚ ਉਹਨਾਂ ਨੂੰ ਲਿਜਾ ਕੇ ਉਹ ਵਿਚਾਰੇ ਨੂੰ ਡਰਾਈਵਰ ਨੂੰ ਲੈ ਗਏ ਕਿਹੜੀ ਗੱਲ ਤੇ ਵੀ ਤੂੰ ਸਾਡੇ ਟਰੱਕ ਦਾ ਜੀ ਐਕਸੀਡੈਂਟ ਕੀਤਾ ਹੈਗਾ ਫਿਰ ਉਹੀ ਕੰਪਨੀ ਦਾ ਰਿਪਰੈਜ਼ੈਂਟੇਟਿਵ ਜਦੋਂ ਉੱਥੇ ਬੈਠਾ ਅਸੀਂ ਉਹਨੂੰ ਲਿਖ ਕੇ ਭੇਜਾਵੇ ਭਾਈ ਵੀ ਜੇ ਐਹੇ ਜੀਆਂ ਕੰਪਨੀਆਂ ਦੇ ਬੰਦਿਆਂ ਨੂੰ ਤੁਸੀਂ ਐਡਵਾਈਜ਼ਰੀ 'ਚ ਬਿਠਾਉਣਾ ਆ ਤੇ ਅਸੀਂ ਫਿਰ ਇਸ ਤੋਂ ਬਾਹਰ ਆ ਯਕੀਨ ਕਰਿਓ ਤਕਰੀਬਨ 5 ਦਿਨ ਦੇ ਨੇੜੇ ਦਾ ਸਮਾਂ ਹੋ ਚੱਲਿਆ ਅੱਜ ਤੱਕ ਉਹਨਾਂ ਦਾ ਰਿਪਲਾਈ ਤੱਕ ਨਹੀਂ ਆਇਆ ਮਿਸਟਰ ਸਾਹਿਬ ਨੂੰ ਈਮੇਲ ਕੀਤੀ ਜਿਹੜਾ ਕਿ ਬਹੁਤ ਮਾਰਿਆ ਗੋਲ ਮੋਲ ਗੱਲਾਂ ਕਰਨ ਦੇ ਲਈ ਅੱਜ ਤੱਕ ਉਹਨਾਂ ਦਾ ਵੀ ਰਿਪਲਾਈ ਤੱਕ ਨਹੀਂ ਆਇਆ ਤੇ ਜਦੋਂ ਕਿਸੇ ਦੇ ਘਰ ਕੋਈ ਬੱਚਾ ਇਕੱਲਾ ਰਹਿ ਜਾਵੇ ਤੇ ਸੋਸ਼ਲ ਸਰਵਿਸੇਸ ਬੜੀ ਛੇਤੀ ਆ ਜਾਂਦੇ ਆ ਪੁਲਿਸ ਵੀ ਨਾਲ ਆ ਜਾਂਦੀ ਹੈ ਜੀ ਤੁਹਾਡਾ ਬੱਚਾ ਲੈ ਜਾਣਾ ਕਈ ਜਗ੍ਹਾ ਲੈ ਕੇ ਵੀ ਗਿਆ ਪਰ ਇੱਕ ਬੜਾ ਕੁਐਸਚਨ ਆਉਂਦਾ ਕਿ ਉਹ ਬੱਚੀ ਇੰਨੇ ਦਿਨ ਵਿਚਾਰੀ ਹਸਪਤਾਲ ਦੇ ਵਿੱਚ ਪੂਰਾ ਇੱਕ ਦਿਨ ਪਹਿਲਾਂ ਤੜਫਦੀ ਰਹੀ ਦੂਜੇ ਦਿਨ ਫੇਰ ਉਹ ਤੜਫਦੀ ਰਹੀ ਤੇ ਉਸ ਵੇਲੇ ਸੋਸ਼ਲ ਸਰਵਿਸਸ ਵਾਲੇ ਕਿੱਥੇ ਗਏ ਸੀ ਕੀ ਉਹਨਾਂ ਦਾ ਫਰਜ਼ ਨਹੀਂ ਸੀ ਉੱਥੇ ਜਾ ਕੇ ਪੁੱਛਣ ਦਾ ਜਿਹੜੇ ਠੀਕ ਹੈ ਜੀ ਕੀ ਜੀ ਧੰਨਵਾਦ ਹਾਂ ਜੀ ਹਾਂ ਫਿਨਿਸ਼ ਕਰ ਲੋ ਫਿਰ ਆਪਾਂ ਅੱਗੇ ਵੀ ਚਲੀਏ ਫਿਨਿਸ਼ ਕਰ ਬਿਲਕੁਲ ਜਿਹੜਾ ਮੇਰਾ ਅਗਲਾ ਸਵਾਲ ਸੀ ਉਹ ਇਹ ਹੈਗਾ ਕਿ ਜਿਹੜੇ ਭਾਈਚਾਰਕ ਦੇ ਭਾਈਚਾਰੇ ਦੇ ਜਿਹੜੇ ਵੱਟੀਆਂ ਆ ਦਾ ਕੰਮ ਕੱਲਾ ਡਾਇਰੈਕਟਰੀਆਂ ਲੈਣ ਦਾ ਕਿ ਉਹਨਾਂ ਦਾ ਕੰਮ ਕੱਲਾ ਆਪਣੇ ਬੱਚੇ ਜਿਹੜੇ ਆ ਉਹ ਮਿਨਿਸਟਰ ਦੇ ਜਾਂ ਮਿਨਿਸਟਰੀ ਚ ਕੱਲਾ ਸੈੱਟ ਕਰਾਉਣ ਦਾ ਸੋ ਇਹਨਾਂ ਦੇ ਅੱਗੇ ਬੇਨਤੀ ਆ ਹੱਥ ਜੋੜ ਕੇ ਵੀਰੋ ਪਲਾ ਕਰਦੇ ਹੋ ਇਸ ਕੰਮ ਤੇ ਕਾਹਨੂੰ ਤੁਸੀਂ ਬੇੜਾ ਗਰ ਕਰਨ ਲੱਗੀਆਂ ਤੇ ਜਿੰਦਣ ਫੇ ਥੈਂਕ ਜੇ ਤੁਸੀਂ ਮੈਂ ਠੀਕ ਹੈ ਫਿਰ ਜਦ ਬਾਰੀ ਆਪਣੀ ਆਉਂਦੀ ਆ ਉਸ ਸਮੇਂ ਵੋਟਾਂ ਖਿਆਲ ਸਾਰੇ ਫੈਡਰਲਾ ਚਾਹੇ ਲੋਕਲਾ ਚਾਹੇ ਸਿਟੀ ਹੈ ਥੈਂਕ ਯੂ ਗੁਰਗਨ ਸਿੰਘ ਅਸਰਾਨ ਜਿੰਦਰਕੌਰ ਜੀ ਲਾਈਨ ਨੰਬਰ 4 ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਪਿਛਲੇ ਸਾਲ ਵੀ ਤੁਸੀਂ ਆਈਲੈਂਡ ਦੀਆਂ ਗੱਲਾਂ ਕਰਦੇ ਸੀ ਅਸੀਂ ਕੋਈ 40 ਸਾਲ ਹੋ ਗਏ ਆ ਅੱਛਾ ਜੀ ਇੱਥੇ ਡਾਕਟਰ ਐਨੇ ਚੰਗੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਸਾਡੇ ਬੱਚੇ ਵੈਨਕੂਵਰ ਆ ਸਾਡੀਆਂ ਮਿੰਤਾ ਕਰਦੇ ਸਾਡੇ ਕੋਲ ਪਰ ਅਸੀਂ ਵੈਨਕੂਵਰ ਨਹੀਂ ਆਉਣਾ ਨਹੀਂ ਆਉਣਾ ਨਹੀਂ ਆਉਣਾ ਜੀ ਡਾਕਟਰ ਐਨੇ ਚੰਗੇ ਹਰਜੀਤ ਜੀ ਡਾਕਟਰ ਦੇ ਅਸੀਂ ਸੀਨੀਅਰ ਹੈ ਹਸਨ ਵਾਈਫ ਮੈਂ ਵੀ ਹੁਣ 75 ਸਾਲ ਦੀ ਹਾਂ ਜੇ ਡਾਕਟਰ ਦੇ ਜਾਣੀ ਆ ਤੇ ਉਹ ਮੇਰੇ ਉੱਥੇ ਉੱਪਰ ਹੀ ਨਰਸ ਹੁੰਦੀ ਮੇਰਾ ਬਲੱਡ ਟੈਸਟ ਕਰ ਸੀਨੀਅਰ ਦਾ ਇੰਨਾ ਖਿਆਲ ਰੱਖਦੇ ਮੈਂ ਦੱਸ ਨਹੀਂ ਸਕਦੀ ਉਸ ਤੋਂ ਇਵਨ ਸਾਡਾ ਬਲੱਡ ਟੈਸਟ ਕਰਨਾ ਆ ਜੇ ਡਾਕਟਰ ਨੇ ਦਵਾਈ ਰੈਫਰ ਕੀਤੀ ਆ ਮੈਂ ਨਹੀਂ ਤੇ ਜੇ ਮੇਰੇ ਫੈਮਿਲੀ ਡਾਕਟਰ ਨੇ ਉਹਨੂੰ ਜੇ ਤੁਮੇ ਦਵਾਈ ਲੈਣੀ ਉਹਨੂੰ ਸਿੱਧੀ ਕਰ ਦੇ ਲਈ ਤੂੰ ਉੱਥੇ ਜਾ ਕੇ ਲੈ ਲੈ ਮਿਸਿਸ ਸਿੰਘ ਐਨਾ ਚੰਗਾ ਸਿਪਾਹ ਬਿਲਕੁਲ ਪਤਾ ਨਹੀਂ ਕੀ ਹੋਇਆ ਚੰਗੇ ਨਾਲੇ ਆਬੋ ਹਵਾ ਚੰਗੀਆਂ ਮੌਜਾਂ ਕਰੋ ਇਧਰ ਨੂੰ ਨਾ ਜੰਗਲ 'ਚ ਨੂੰ ਆਇਓ ਆਰਾਮ ਕਰੋ ਇੱਥੇ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਬੈਨੀਪਾਲ ਜੀ ਲਾਈਨ ਨੰਬਰ 5 ਅਵੀ ਜੀ ਸੋਪਪਿੰਦਰ ਸਿੰਘ ਲੇਹਲ ਲਾਈਨ ਨੰਬਰ 2 ਹਾਂਜੀ ਰੀਤ ਸਸਤਰੀ ਕਾਲ ਵੀਰ ਸਸਤਰੀ ਕਾਲ ਜੀ ਇਹ ਜਿਹੜੀ ਉਹ ਬੱਚੀ ਵਿਚਾਰੀ ਦੀ ਮੌਤ ਹੋਈ ਹੈ ਉਹਦਾ ਬਹੁਤ ਦੁੱਖ ਹੋਇਆ ਮਤਲਬ ਦੇਖੋ ਵਿਚਾਰੀ ਮਾਂ ਨੇ ਕਿਵੇਂ ਮਤਲਬ ਥਿਲ-ਥਿਲ ਹੋ ਕੇ ਮਰਦੀ ਦੇਖੀ ਬੱਚੀ ਆਪਦੀ ਮਤਲਬ ਉਹਦਾ ਇਹਦੇ ਪੁੱਛਿਆ ਜਾਣੀ ਨਾ ਮਾਪਿਆਂ ਦਾ ਵੀ ਇਹ ਜਿਹੜੇ ਸਰੀ ਮੈਮੋਰੀਅਲ ਮਤਲਬ ਲੀਡਰ ਆ ਮਰ ਮੈਡੀਕਲ ਤੇ ਮਨਾਂ ਸਰੀ ਵਾਲਿਆਂ ਦਾ ਤਾਂ ਖਾਸ ਕਰਕੇ ਇਹਨੇ ਇੱਕ ਸਾਡੀ ਰਿਸ਼ਤੇਦਾਰੀ ਆ ਥੋੜੀ ਜਿਹੀ ਦੂਰ ਦੀ ਉਹਨਾਂ ਦੇ ਦੋ ਮੁੰਡੇ ਵਿਕਟਿਮਾਈਜ਼ ਕਰ ਲਏ ਜਿਸ ਤਰ੍ਹਾਂ ਪਿੰਡ ਆ ਉਹਨਾਂ ਦਾ ਇੱਕ ਤਕਲੀਫ ਹੋਈ ਅੰਡਰ 40 ਸੀਗਾ ਉਹ ਤੇ ਕਹਿੰਦੇ ਜੀ ਇਹ ਤਾਂ ਨਸ਼ਾ ਪੀਤਾ ਵੈਰ ਤਾਂ ਜੀ ਇਹ ابو ਆ ਇਹ ਮੋੜਤਾ ਉਹਨੂੰ ਉਹ ਫੇਰ ਮਤਲਬ ਜੇ ਨਸ਼ਾ ਵੀ ਪੀਤਾ ਵੈ ਉਹ ਹਾਥੀ ਤਾਂ ਨਹੀਂ ਵੀ ਤੁਸੀਂ ਉਹਨੂੰ ਤਾਂ ਕਰੋ ਤੁਡੇ ਕੋਲ ਸਿਕਿਉਰਟੀ ਆ ਸਾਰਾ ਕੁਝ ਆ ਆਖਰ ਉਹ ਬੰਦਾ ਹੀ ਆ ਫੇਰ ਉਹਨੂੰ ਦੂਜੀ ਵੇਰ ਉਹ ਆਇਆ ਫਿਰ ਮਤਲਬ ਉਹ ਮਤਲਬ ਹੋ ਗਈ ਉਹਦੀ ਪਹਿਲਾਂ ਉਹਨੂੰ ਮੋੜਤਾ ਕਹਿੰਦੇ ਤੂੰ ਪਖੰਡ ਫੇਰ ਮਤਲਬ ਇਤਿਹਾਸ ਨੇ ਫੇਰ ਆਪਣੇ ਆਪ ਨੂੰ ਦੁਹਰਾਇਆ ਉਸੇ ਪਰਿਵਾਰ ਦਾ ਉਹਦਾ ਸਾਕਾ ਭਾਈ ਉਹਨੂੰ ਪੰਜ ਛੇ ਸਾਲ ਹੋ ਗਏ ਮਤਲਬ ਸੈਕੰਡ ਬੰਨੂ ਉਹ ਇਸੇ ਤਰ੍ਹਾਂ ਇਹਨਾਂ ਨੇ ਨਜ਼ਰ ਅੰਦਾਜ਼ ਕਰਕੇ ਮਾਰਿਆ ਲਿਖਤਾਂ ਪਿੰਡ ਆ ਉਹਨਾਂ ਦਾ ਮੇਰੇ ਕੋਲ 99% ਲਿਖਤਾਂ 1% ਪਿੰਡ ਪੱਬੀਆਂ ਸੋਈਆਂ ਹੋ ਸਕਦਾ ਪਰ 99% ਲਿਖਤਰਾ ਪਿੰਡ ਦੀ ਤੇ ਬਾਕੀ ਇਹ ਵੀ ਇੰਨਾ ਇੰਨਾ ਦਾ ਤਾਂ ਇਹ ਤਾਂ ਐਡਾ ਵੱਡਾ ਗੋਰਖ ਧੰਦਾ ਨਾ ਇਹ ਮਤਲਬ ਵੀ ਇਹ ਤਾਂ ਜੇ ਇਹ ਦੇਖਦੇ ਨੇ ਨਾ ਵੀ ਮਰੀਜ਼ ਆ ਮਿਡਲ ਏਜ ਤੋਂ ਟੱਪ ਗਿਆ ਉਹਦੀ ਕੇਅਰ ਵੀ 50% ਰਹਿ ਜਾਂਦੀ ਹੈ ਤੇ ਜਿਹੜੇ ਵੱਡੇ ਜਿਹੜੇ ਹੋ ਜਾਂਦੇ ਨੇ 70 ਦੇ ਉਹ ਇਹ ਦੇਖਦੇ ਨੇ ਵੀ ਇਹਨੇ ਲੰਮਾ ਸਮਾਂ ਜਿਉਣਾ ਪਰ ਇਹ ਹਸਪਤਾਲ ਆਉਂਦਾ ਰਹੂਗਾ ਇਹ ਪਰਉ ਕਿਉਂਕਿ ਇਹ ਉਹਨਾਂ ਤੋਂ ਸਰਕਾਰ ਤੋਂ ਲੈਂਦੇ ਨੇ ਮੈਂ ਜਾਂ ਮੇਰੀ ਮਾਂ ਦਾਖਲ ਸੀ ਨਾ ਮੈਂ ਕਈ ਵਾਰ ਲੜਿਆ ਮੈਂ ਕਿਹਾ ਅਸੀਂ ਅਮਰੀਕਾ ਉੱਥੋਂ ਹੋ ਗਏ ਸੀ ਉਹ ਆਈਵੀ ਰਾਹੀਂ ਦਿੰਦੇ ਸੀ ਕਿਉਂਕਿ ਐਂਟੀਬਾਇਓਟਿਕ ਨੇ ਜਿਹੜੇ ਢੇਟ ਨੂੰ ਅਕਸਰ ਖਰਾਬ ਕਰ ਨੇ ਤੇ ਆਈਵੀ ਰਾਹੀਂ ਇੰਨਾ ਨਹੀਂ ਕਰਦੇ ਉਹ ਉਹਦਾ ਸਾਈਡ ਇਫੈਕਟ ਬਹੁਤ ਘਟ ਜਾਂਦਾ ਆਈਵੀ ਰਾਹੀਂ ਜਾਂ ਦਿੰਦੇ ਨੇ ਤੇ ਕਹਿੰਦੇ ਨਹੀਂ ਨਹੀਂ ਉਹ ਜਦ ਮੈਂ ਪੂਰੇ ਕਪਾਤ ਕਰਿਆ ਕਰਾਂ ਫਿਰ ਅੱਧਾ ਦਿਨ ਲਾ ਦਿਆ ਕਰਨ ਤੇ ਮਤਲਬ ਇਸ ਤਰ੍ਹਾਂ ਮੈਂ ਕਿਹਾ ਉਹਨੂੰ ਥੈਂਕ ਯੂ ਵੀਰ ਜੀ ਮੈਨੂੰ ਬ੍ਰੇਕ ਤੇ ਜਾਣਾ ਪੈਣਾ ਥੈਂਕ ਯੂ ਲੀਡ ਸਰ ਥੈਂਕ ਯੂ ਲਾਈਨ ਨੰਬਰ 5 ਐਵਰੀ ਬੈਨੀਪਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਮੈਂ ਤਾਂ ਇੱਕੋ ਹੀ ਗੱਲ ਸੋਚ ਰਿਹਾ ਕਾਫੀ ਦੇਰ ਤੋਂ ਮੈਂ ਕਿਹਾ ਵੀ ਜਦੋਂ ਵੀ ਕੋਈ ਫੰਡ ਰੇਜ਼ਿੰਗ ਹੁੰਦੀ ਆ ਕੋਈ ਹਸਪੀਟਲ ਨੂੰ ਮਨੀ ਚਾਹੀਦੀ ਆ ਕਿਤੇ ਵੀ ਜਿੱਥੇ ਆਪਣੀ ਕਮਿਊਨਿਟੀ ਜ਼ਿਆਦਾ ਉੱਥੇ ਜਿਹੜੇ ਲੰਬਰਾਰ ਇਕੱਠੇ ਕਰ ਕਰਕੇ ਉਦੋਂ ਦਿੰਦੇ ਆ ਪੈਸੇ ਕੋਈ ਉਹਨਾਂ ਦਾ ਕੋਈ ਕੰਟੈਕਟ ਨੰਬਰ ਵਾਸਤੇ ਨਹੀਂ ਛੱਡਦੇ ਸੰਸਥਾਵਾਂ ਦਾ ਵੀ ਜੇ ਕਿਸੇ ਨੂੰ ਕੋਈ ਇਹੀ ਐਮਰਜੈਂਸੀ ਆ ਜਾਏ ਸਾਨੂੰ ਤੁਸੀਂ ਕੰਟੈਕਟ ਕਰਿਓ ਕੋਈ ਅਸੀਂ ਤੁਹਾਡੇ ਕੰਮ ਆਵਾਂਗੇ ਸਾਡੇ ਨਾਲ ਡੈਲਟਾ 'ਚ ਸਾਡੇ ਛੋਟਾ ਜਿਹਾ ਹਸਪੀਟਲ ਹੈ ਡੈਲਟਾ 'ਚ ਮੈਂ ਡਾਕਟਰ ਜਦੋਂ ਵੀ ਕਦੇ ਜਾਣਾ ਕੋਈ ਪ੍ਰੋਬਲਮ ਹੋਊਗੀ ਉੱਥੇ 10 ਜਾਂ 15 ਮਿੰਟ ਤੋਂ ਵੱਧ ਨਹੀਂ ਲੱਗਦੇ ਤੁਸੀਂ ਨਾਲੇ ਆਪਣੀ ਗੱਡੀ ਤੇ ਭਾਵੇਂ ਜਾਓ ਮਤਲਬ ਨਾਲ ਹੀ ਸਿਟੀ ਆ ਕਿੰਨਾ ਕੁ ਫਰਕ ਹੈ ਦੇਖ ਲੋ ਸੋ ਇਹ ਚਾਈ ਦਾ ਹੈ థాంਕ ਯੂ ਬਈ ਪਡੀ ਮਕਲਾ ਜੀ ਉਹ ਪੈਸਾ ਥੇਲੇ ਵਾਲਾ ਕੰਮ ਤਾਂ ਜੱਦ ਹੁੰਦਾ ਜਾਂ ਮੈਨੂੰ ਪੁਲੇਸ਼ਨ ਕਰਨੀ ਹੈ ਮਹਾਰਾਜਾ ਦਾਨ ਦੂਮ ਦੇ ਨਾ ਉਤੇ ਰੋਲਾ ਪਾ ਕੇ ਉਹ ਨੰਬਰ ਹੈਗੇ ਫ੍ਰੀਜ਼ਰ ਹੈਲਥ ਦੇ ਨੰਬਰ ਨੇ ਬਸ ਹੋਰ ਨੰਬਰ ਕੋਈ ਨਹੀਂ ਹੈ 5 ਡਾਲਰ ਦੋ ਘੰਟੇ ਦੇ ਫਾਰਕ 8 ਡਾਲਰ ਦੋ ਘੰਟੇ ਦੀ ਪਾਰਕਿੰਗ ਦੇ ਅਕ੍ਰੋਸ ਦਾ ਰੋਡ ਡੈਲਟਾ ਡੈਲਟਾ ਦੇ ਵਿੱਚ ਉੱਥੇ ਜਾ ਕੇ ਪਾਰਕਿੰਗ ਲਾ ਦੋ ਹਸਪਤਾਲ ਦੇ ਵਿੱਚ ਉੱਥੇ ਕੋਈ ਪਾਰਕਿੰਗ ਫੀਸ ਵੀ ਹੈ ਸਮਝ ਨਹੀਂ ਆਉਂਦੀ ਫਰਕ ਕੀ ਆ ਔਰ ਉਦੋਂ ਦੁੱਗਣਾ ਸ਼ਹਿਰ ਆ ਸਾਡੇ ਵਾਲੇ ਪਾਸੇ ਖਬਰਾਂ ਖਬਰਾਂ ਤੋਂ ਬਾਅਦ ਵਾਪਸ ਆਉਨੇ ਆ ਗੱਲਬਾਤ ਚੱਲ ਰਹੀ ਆ ਜਿਸੇ ਸਵਾਮਾਂ ਦੇ ਸੰਬੰਧੀ ਲਾਈਨ ਹਾਂਜੀ ਸਸਕੀ ਕਾਲ ਗੱਲ ਇਹ ਆ ਕਿ ਟੂ ਬੈੜਾ ਕਿ ਵੀ ਬੱਚੀ ਗੁੰਮ ਗਈ ਆ ਗਲਤੀ ਨਾਲ ਮੇਰਾ ਕਹਿਣ ਦਾ ਮਤਲਬ ਇਹ ਆਪਾਂ ਨੂੰ ਹੈਲਥ ਮਿਨਿਸਟਰ ਨਾਲ ਗੱਲ ਲਿਆਉਣਾ ਚਾਹੀਦਾ ਇਹਦੇ ਤੇ ਨਾਗੇ ਫਰੇਜ਼ਰ ਹੈਲਥ ਵਾਲੇ ਫਰੇਜ਼ਰ ਹੈਲਥ ਵਾਲਿਆਂ ਨੂੰ ਤਾਂ ਕੁਝ ਦੱਸਣਾ ਹੀ ਨਹੀਂ ਨਾਲੇ ਕਿ ਵੀ ਇਹ ਦਾ ਸਿਸਟਮ ਆ ਦੋ ਸਿਸਟਮ ਬਣਾਏ ਆ ਮਨਿਸਟਰ ਬੋਰਡ ਤੇ ਕਹਿੰਦਾ ਬੋਰਡ ਸਿਸਟਮ ਉਹਨੂੰ ਕਹਿੰਦਾ ਹਰ ਇੱਕ ਹਰ ਚਾਹੇ ਉਹ ਹੈਲਥ ਦਾ ਚਾਹੇ ਉਹ ਟਰਾਂਸਪੋਰਟ ਦਾ ਚਾਹੇ ਕੋ ਕੋਈ ਦਾ ਇਹ ਸਭ ਸਿਰਫ ਇਹ ਗੱਲੀ ਦਾ ਜੇ ਬੋਰਡ ਹੈਗਾ ਤਾਂ ਫਿਰ ਮਨਿਸਟਰ ਖਾਦ ਲਈ ਹੈ ਜੇ ਮਨਿਸਟਰ ਹੈਗਾ ਫਿਰ ਬੋਰਡ ਖਾਦ ਲਈ ਹੈ ਇਹ ਸਿਰਫ ਪੈਸਿਆਂ ਨੂੰ ਵੇਸਟ ਕਰਨ ਲਈ ਹੈ ਤੇ ਹਸਪਤਾਲ ਨੇ ਕਿੰਨੇ ਬੋਰ ਬਾਇਨ ਕਿਹਾ ਤੇ ਤੇ ਕੋਸਟ ਹਲਤਾ ਉਥੇ ਫ੍ਰੀਜ ਹਲਤਾ ਇਹ ਸਾਰੇ ਸੀਓ ਨੂੰ ਪੈਸੇ ਜਾਂਦੇ ਸਾਰੇ ਇਹਨਾਂ ਨੂੰ ਡੁੱਗਨੇ ਪੈਸੇ ਬੇਸਟ ਕਰਦੇ ਆ ਅਗਲੀ ਦਾ ਤੁਹਾਨੂੰ ਚਾਹੀਦਾ ਹੈਲਥ ਮਿਨਿਸਟਰ ਨੂੰ ਲਿਆਓ ਤੇ ਉਸ ਨੂੰ ਉਹ ਆ ਕੇ ਜਵਾਬ ਦੇਵੇ ਜੀ ਜੀ ਥੈਂਕ ਯੂ ਮਾਂ ਬੋਲੀ ਦਾ ਦੇਵਸਾ ਜਿਹੜਾ ਉਹ ਮਾਂ ਬੋਲੀ ਦਾ ਜਾਗਰਤੀ 1 ਮਾਰਚ ਮਨਮੋਹਨ ਵਾਰਿਸ ਹੋਣਾ ਨੇ ਜਲੰਧਰ ਦੇ ਨੇੜੇ ਨਾਲ ਮਲਕੀਤ ਸਿੰਘ, 바ਵਾ, ਨੂਰਾ ਸਿਸਟਰਸ ਇਹ ਸਾਰਿਆਂ ਨੇ ਢਲ ਕੇ ਕੱਢਿਆ ਬਾਕੀ ਬਹੁਤ ਲਾਣਾ ਤੁਰਿਆ ਫਿਰਦਾ ਉੱਥੇ ਛੱਲੇ ਮੁੰਨੀਆਂ ਪਾਈ ਕੁ ਨਹੀਂ ਲੱਭਿਆ ਉੱਥੇ ਪੰਜ ਛੇ ਨੇ ਨੇ ਇੱਕ ਵਧੀਆ ਤਰੀਕੇ ਨਾਲ ਮਾਂ ਬੋਲੀ ਲਈ 1 ਮਾਰਚ ਕੱਢਿਆ ਨਕੋਦਰ ਰੋਡ ਤੋਂ ਲੈ ਕੇ ਤੇ ਫਿਰ ਉੱਥੇ ਇੱਕ ਸਕੂਲ ਦੇ ਵਿੱਚ ਸਾਰੇ ਨੇ ਗਾਇਆ ਤੇਰੇ ਬਿਨਾ ਕਾਹਦੇ ਆ ਬੇਬੇ ਤੇਰੇ ਜੰਮੇ ਤੇਰੇ ਪਾਲੇ ਹੋਏ ਆ ਚ ਸਾਹ ਲੈਨੇ ਆ ਤੂੰ ਝਖੜਾ ਚ ਵੀ ਅਡੋਲ ਰਹੀ ਪਤਾ ਨਹੀਂ ਕਿਵੇਂ ਆਪਣੇ ਜੰਮਿਆਂ ਨੂੰ ਸਿਰ ਤੇ ਹੱਥ ਫੇਰ ਕੇ ਅਸੀਸਾਂ ਦੇ ਦਿੰਨੀ ਐ ਕਿ ਸਾਰੀ ਦੁਨੀਆ ਦੇ ਸਬਰ ਸਦਕ ਬੇਪਰਵਾਹੀਆਂ ਅਡਵਾਈਆਂ ਹਾਸੇ ਹੌਸਲੇ ਜਜ਼ਬਾਤ ਦਲੇਰੀ ਰਹਿਮ ਇੱਕੋ ਦਮ ਖੂਨ ਚ ਰਚ ਜਾਂਦੇ ਔਲ ਧਰਮ ਦਇਆ ਕਾਪੂਤ ਪੀੜੀ ਜਾਰ ਪੀੜੀ ਚੱਲ ਕੇ ਕਹਿਣੀ ਤੋਂ ਕਥਨੀ ਕਰਨ ਦੀ ਏ ਵਿੜਿਆਈ ਤੇਰੇ ਹਿੱਸੇ ਆਉਣੀ ਸੀ ਬੀਬੀ ਕਿ ਤੇਰੀ ਧਰਤੀ ਤੇ ਸਾਜੀ ਕੌਮ ਦੇ ਪੰਜ ਮਰਜੀਵੜਿਆਂ ਦੇ ਨਾਂ ਇਸ ਤਰ੍ਹਾਂ ਰੱਖੇ ਕਿ ਦਇਆ ਚ ਧਰਮ ਉਪਜੇ ਤੈਨੂੰ ਲਹੂ ਲਹਾਨ ਕਰਨ ਵਾਲੇ ਕਿੱਥੇ ਐ ਕਬਰਾਂ ਮੜੀਆਂ ਦੀਆਂ ਮਿੱਟੀਆਂ ਵੀ ਨਾ ਰਹੀਆਂ ਪਰ ਤੂੰ ਸਦਾ ਜਵਾਨ ਹਮੇਸ਼ਾ ਨਾਉ ਵਰਨਾਉ ਹੈ ਤੇਰੇ ਪੁੱਤਾਂ ਦੀਆਂ ਪਗਾਂ ਦੇ ਸ਼ਮੇ ਹਮੇਸ਼ਾ ਚੀਨੇ ਕਬੂਤਰਾਂ ਵਾਂਗ ਉੱਚੇ ਉੱਡਦੇ ਗਏ ਦੁਨੀਆ ਮੱਥੇ ਤੇ ਹੱਥ ਰੱਖ ਕੇ ਸੂਰਜ ਵੱਲ ਲਾਣਾ ਇਹਨਾਂ ਦੀਆਂ ਉਡਾਰੀਆਂ ਦੇਖਦੀ ਰਹੀ ਜਿੱਥੇ ਗਏ ਤੇਰੀ ਦਿੱਤੀ ਗੁਰਤੀ ਦੀ ਮਿਠਾਸ ਨਾਲ ਲੈ ਕੇ ਗਏ ਦੁਨੀਆਂ ਦੇਖਦੇ ਦੁਨੀਆਂ ਘੁੰਮਦੇ ਮੋੜ ਤੇਰੇ ਦਰ ਆ ਕੇ ਸਜਦੇ ਕਰਦੇ ਰਹੇ ਤੇਰੇ ਪੁੱਤ ਤੇਰਾ ਪੱਲਾ ਨਹੀਂ ਕਦੇ ਛੱਡਿਆ ਤੂੰ ਟਿੱਲਿਆਂ ਢਾਬਾਂ ਇੱਬਿਆਂ ਹਰਿਆਵਲਾਂ ਬੇਲਿਆਂ ਦੀ ਰਾਣੀ ਮਰਦਾਨੇ ਦੀ ਰਵਾਬ ਚੋ ਪੂਰਨ ਦੇ ਅਲਖ ਨਰੰਜਣ ਚੋਂ ਰਾਂਝੇ ਦੀ ਵੰਝਲੀ ਚੁੰਮ ਮੰਦਰਾਂ ਦੀਆਂ ਕੜਿਹਾਲਾਂ ਚੋ ਮਸਜਿਦ ਦੀਆਂ ਨਵਾਜਾਂ ਚੋਂ ਗੁਰੂ ਘਰਾਂ ਦੇ ਨਿਤਨੇਮਾਂ ਚੋਂ ਪੌ ਫੁੱਟ ਦੀ ਨੂੰ ਬਾਹਰ ਲਈ ਨਿਆਈ ਚ ਲਾਈ ਖਾਲੀ ਦੀ ਹੀਠੋਂ ਲਵੇ ਗੋਪੀ ਦੀ ਮਧਾਨੀ ਚੋਂ ਸੰਗੀਤ ਬਣ ਬਾਪੂ ਪੰਜਾਬ ਦੇ ਸਾਹ ਚ ਭੋਲਰੀ ਪਟਰਾਣਿਆ ਆਪਣੇ ਬਣ ਕੇ ਲਈ ਤੂੰ ਹਮੇਸ਼ਾ ਦਰ ਖੋਲੇ ਨੇ ਪੁੱਤਾਂ ਨੂੰ ਗੁਰਤੀ ਦੇ ਨਾਲ ਹੀ ਇੱਕ ਸਿੱਖਿਆ ਇਹ ਵੀ ਦਿੱਤੀ ਪੁੱਤਾ ਧਰਤੇ ਆਇਆ ਨਾ ਖਾਲੀ ਜਾਵੇ ਤੇ ਨਾ ਭੁੱਖਾ ਜਾਵੇ ਦਰਤਾ ਕੀ ਬੇਬੇ ਤੇਰੇ ਪੁੱਤਾਂ ਨੇ ਕੋਨੇ ਕੋਨੇ ਪਹੁੰਚ ਕੇ ਦੁਨੀਆ ਰਜਾ ਕਰਤੀ ਸਵਾਲੀ ਬਣ ਕੇ ਆਇਆ ਲਈ ਆਇਆ ਲਈ ਤੇਰੇ ਪੁੱਤਾਂ ਦੇ ਦਰ ਸਦਾ ਖੁੱਲੇ ਵਾਹ ਵਾ ਸਦਾ ਆਡੀਆਂ ਦੁਸ਼ਮਣ ਬਣ ਆਇਆ ਲਈ ਤੇਰਾ ਥਾਪੜ ਇਹਨਾਂ ਦੀ ਹਮੇਸ਼ਾ ਹੀ ਢਾਲ ਬਣਿਆ ਹੌਸਲਾ ਬਣਿਆ ਬਹਾਦਰੀ ਬਣਿਆ ਮੁਗਲ ਦਰਬਾਰ ਚਾਹੇ ਢਾਇਰ ਪਰਵਾਰ ਤੇਰੇ ਜੰਮਿਆਂ ਦੀਆਂ ਜਿੱਤਾਂ ਹੀ ਜਿੱਤਾਂ ਕੀ اٹਕ ਕੀ ਖੈਬਰ ਤੇਰੇ ਪੁੱਤਾਂ ਨੇ ਗੋਡਣੀਆਂ ਕਰ ਛੱਡੇ ਪੂਰੇ ਮੁਲਖ ਤੇ ਤਾਂਗੜ ਦੀ ਦਿੱਲੀ ਨੂੰ ਜਿੱਤ ਕੇ ਛੱਡ ਆਏ ਮੁੜ ਕੇ ਆਉਂਦੇ ਲਾਲ ਕਿਦੋਂ ਦੇਖ ਕੇ ਜਿਵੇਂ ਕਹਿੰਦੇ ਹੋਣ ਬਾਦਸ਼ਾਹਿਆਂ ਤਾਂ ਸਾਡੀ ਜੁੱਤੀ ਦੀ ਨੋਕ ਤੇ ਨੇ ਬਸ ਆੜੀ ਭੰਨੀ ਸੀ ਨਿੱਕਿਆ ਤੇਰੀ ਜੇ ਇੱਕੋ ਗੱਲ ਕਹੀਏ ਤਾਂ ਜਿਉਂਦੇ ਹੀ ਤੇਰੇ ਕਰਤੇ ਆ ਕਿਉਂਕਿ ਤੂੰ ਰੂਹ ਹੈ ਤੂੰ ਨਾ ਹੁੰਦੀ ਤਾਂ ਰੱਬ ਵਰਗਾ ਸ਼ਬਦ ਬੀਬੀ ਕਿੱਥੋਂ ਸਿੱਖਦਾ ਨਿੱਕੀਆਂ ਭੈਣਾਂ ਦਾ ਬਾਬੇ ਫਰੀਦ ਦੀ ਸ਼ਕਰ ਵਰਗਾ ਸ਼ਬਦ ਵੀਰਾ ਵੀਰਾ ਨਾ ਸੁਣ ਹੁੰਦਾ ਮਾਂ ਪੰਜਾਬੀਏ ਤੇਰੀਆਂ ਸੱਤੇ ਖੈਰਾਂ ਲੱਖ ਕਰੋੜ ਦੁਆਮਾਂ ਵੱਧੀ ਫੁੱਲਦੀ ਰਹੇ ਸਦਾ ਜਵਾਨ ਰਹੇ ਮਾਂ ਪੰਜਾਬੀ ਜਿੰਦਾਬਾਦ ਬਾਪੂ ਪੰਜਾਬ ਜਿੰਦਾਬਾਦ ਤੁਹਾਡੇ ਜੰਮੇ ਜਿੰਦਾਬਾਦ ਸਰਿੰਦਰ ਸਿੰਘ ਬਪਾਰਕਸੰਦੇਸ਼ ਮੈਸਰ ਸਿੰਘ ਲਾਈਨ ਨੰਬਰ 4 ਤੁਸੀਂ ਏਅਰ ਤੇ ਹਰਜੀਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਤੇਰੇ ਮਨ ਚ ਆਇਆ ਸੀ ਮੈਂ ਕਿ ਬੱਚੀ ਦੀ ਡੈਥ ਦੇ ਬਾਰੇ ਜੇ ਤੁਸੀਂ ਆਪਣੇ ਵਕੀਲ ਬੇਜਮਨ ਜੀ ਹੈ ਬੱਚੇ ਦੀ ਡੈਥ ਵਿੱਚ ਉਹ ਵਕੀਲ ਸਾਹਿਬ ਨੂੰ ਪੁੱਛਿਆ ਜਾਵੇ ਅਲੌਂਗ ਵੇਦ ਬਿਲਕੁਲ ਜੀ ਮੈਂ ਪੁੱਛਾਂਗਾ ਪਲੀਜ਼ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ ਸੋ ਮਚ ਬਰਾਬਰ ਦੇ ਕੇ ਇਕਵਿਟਮੈਂਟ ਹੋਇਆ ਜੀ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਂਦੇ ਨੇ ਪੰਜਾਬ ਬੈਂਕਟ ਹਾਲ ਸ਼ਾਮਾ ਗਿਲ 604 598 7611 ਵੱਡੀ ਛੋਟੀ ਪਾਰਟੀ ਰਾਜਨੀਤਿਕ ਇਕੱਠ ਕੋਈ ਹੁਣ ਤਾਂ ਸੰਗ ਲੱਗਦੀ ਹੈ ਗੱਲ ਕਹਿੰਦੇ ਕੋਈ ਪਿੰਡੂਆਂ ਦਾ ਇਕੱਠ ਕਿਉਂਕਿ ਦੁੱਖ ਇਹ ਹੈ ਕਿ ਇਹ ਨਹੀਂ ਹੱਟ ਸਕਦੇ ਕੁਝ ਵੀ ਹੋ ਜਾਏ ਇਹ ਜਿਹੜਾ ਨਾ ਇੱਕ ਸ਼ਬਦ ਅੱਗੇ ਦਰਮਾਰ ਬੰਦਾ ਕਿ ਬਹੁਤ ਨਾਬਲਾ ਦੇ ਵਿੱਚ ਬਾਈ ਜੱਗੀ ਕੁੱਸਾ ਲਿਖਦਾ ਇਹ ਬੰਦਾ ਮੈਨੂੰ ਗਿੱਦਰਮਾਰ ਲੱਗਦਾ ਉਹ ਕਹਿੰਦਾ ਗਿੱਦਰਮਾਰ ਕੌਣ ਹੁੰਦਾ ਕਹਿੰਦਾ ਜਿਹੜਾ ਐਵੇਂ ਹੀ ਮਾਰੀ ਜਾਵੇ ਉਹੀ ਗੱਲ ਹੈ ਜਿਹੜੇ ਹਾਲਾਤ ਨੇ ਸਾਡੇ ਲੋਕਲ ਲੈਵਲ ਤੇ ਜਾਂ ਫੈਡਰਲ ਲੈਵਲ ਤੇ ਜਿਸ ਤਰ੍ਹਾਂ ਜੇਨਟਰੂਡਰ ਨੂੰ ਇੱਕ ਗਰੁੱਪ ਚਾਰੇ ਪਾਸੋਂ ਘੇਰਿਆ ਹੋਇਆ ਬਾਹਲਾਪ ਉਹ ਇੱਕ ਵਧੀਆ ਨਹੀਂ ਹੈ ਤੁਹਾਡਾ ਮੇਰਾ ਸਾਰਿਆਂ ਦਾ ਇਹ ਯਾਦ ਰੱਖ ਲਿਓ ਆਪਣੀ ਇੱਚੇ ਭਤੀਜੇ ਆਪਣੇ ਪੁੱਤ ਆਪਣੇ ਮਨਿਸਟਰ ਕਦੇ ਖੱਬੇ ਕਦੇ ਸੱਜੇ ਤੇ ਆਪ ਹੀ ਢੇੜੇ ਆਪ ਹੀ ਬੰਦੇ ਆਪ ਹੀ ਮੇਅਰ ਦੇ ਬੰਦੇ ਆਪ ਹੀ ਕੰਸਲਟੈਂਟ ਆਪ ਹੀ ਪੈਸੇ ਆਪ ਹੀ ਥੇਲੇ ਸਾਰਾ ਕੁਝ ਹੀ ਆਪ ਗਾ ਤੁਹਾਡੇ ਮੇਰੇ ਗਾ ਇੱਥੇ ਦੀ ਪੀੜ੍ਹੀ ਜਿਹੜੀ ਜੰਮੀਆਂ ਇਹਨਾਂ ਦੇ ਰਾਹ ਕੰਡੇ ਇੰਨੇ ਸੁੱਟ ਦੇਣਗੇ ਚੁਗਨੀ ਹੋਣੇ ਮੇਰੇ ਯਾਦ ਆ ਇੱਕ ਬੀਸੀ ਸਿਕ ਕਾਉਂਸਲ ਬਣੀ ਸੀ ਜਾਂ ਸਾਡਾ ਉੱਪਰ ਤੇ ਥੱਲੇ ਬੈਠਣ ਦਾ ਝਗੜਾ ਪਵਾਇਆ ਉਹਦੇ ਬਾਅਦ ਉਹ ਇੱਥੇ ਦੇ ਜੰਮ ਫੜ ਅਸੀਂ ਸਿਕਾਂ ਦੇ ਬਾਰੇ ਗੱਲ ਕਰਾਂਗੇ ਕਿ ਮੁੜਮਕੇ ਖੁਰਚਣੇ ਪਤੀਲੇ ਜੱਜੀ ਕਰਦੇ ਟੀਵੀ ਵਾਲੇ ਦਿਖਾਉਂਦੇ ਸੀ ਦਾਲਾਂ ਦੇ ਪਤੀਲੇ ਰੋੜ ਦੇ ਡਾਂਗਾ ਵਰਦੀਆਂ ਉਹ ਕਹਿੰਦੇ ਅਸੀਂ ਕੋਸ਼ਿਸ਼ ਕਰਾਂਗੇ ਇੱਥੇ ਦਾ ਜੰਪੜ ਗਰੁੱਪ ਇਕੱਠਾ ਹੋ ਗਿਆ ਬਾ ਚਾਰ ਕੇ ਮੀਟਿੰਗਾਂ ਹੋਈਆਂ ਜਿਹੜੇ ਉੱਥੇ ਦੇ ਘਾਗ ਆਏ ਨੇ ਰੋਲ ਤੇ ਉਹਨਾਂ ਦਾ ਪਤਾ ਹੀ ਨਾ ਲੱਗਿਆ ਕਿੱਧਰ ਮੈਂ ਕਿਹਾ ਉਹ ਕਿੱਥੇ ਆ ਉਹ ਕਹਿੰਦੇ ਕਾਉਂਸਲ ਨਹੀਂ ਹੈ ਪੁਰਾਣੇ ਬੰਦੇ ਨੇ ਉਹਨਾਂ ਕੋਲ ਗੁਰਦੁਆਰੇ ਨੇ ਕਾਉਂਸਲ ਕਾਉਂਸਲ ਨਹੀਂ ਬਣ ਦਿੰਦੇ ਇੱਥੇ ਉਹ ਈ ਜਿਨ੍ਹਾਂ ਦਾ ਸੂਤ ਆ ਗਿਆ ਮੇਰੇ ਅੜਗੇ ਨੂੰ 20000 ਬਾਹਰ ਨਹੀਂ ਸੀ ਮਾਰਕੀਟ 'ਚ ਮਿਲਣਾ ਉਹਨੂੰ 1.5 2-2 ਲੱਖ ਮਿਲਦਾ ਹੈ ਜਾਂਦਾ ਹੌਂਕ ਦਾ ਬੰਦਾ ਉਹਨਾਂ ਦਾ ਸੂਤ ਬੈਠ ਗਿਆ ਉਹਨਾਂ ਨੇ ਕਿਸੇ ਪਾਸੇ ਨਹੀਂ ਗੱਲ ਤੁੰਦੇ ਨਹੀਂ ਉਹਨਾਂ ਨੇ ਨਿਤ ਤੁਹਾਡੇ ਕੋਲੋਂ ਕੁਝ ਕਹਿਣਾ ਤੇ ਉੱਥੇ ਜਾ ਕੇ ਕੁਝ ਕਹਿਣਾ ਇੱਕ ਤੱਲਾ ਤੁਹਾਡੇ ਸਾਹਮਣੇ ਹੋਈਆਂ ਪਰ ਇਹ ਮੈਸ ਹੈ ਹੁਣ ਟੋਟਲੀ ਇਹ ਕਲੀਨ ਹੋਣੀ ਚਾਹੀਦੀ ਸਾਨੂੰ ਤਾਂ ਮੇਨ ਸਟ੍ਰੀਮ ਦੇ ਵਿੱਚੋਂ ਹੀ ਬੰਦੇ ਬਥੇਰੇ ਵਧੀਆ ਨੇ ਸਾਨੂੰ ਕੋਈ ਤੰਗੀ ਨਹੀਂ ਆਸੀ ਕੋਈ ਇਹੋ ਜਿਹਾ ਕੁਝ ਨੀ ਕਰਾਉਣਾ ਜਿਹੜਾ ਆਪਣਾ ਬੰਦਾ ਕਰਦਾ ਤੇ ਉਹ ਨਹੀਂ ਕਰਦੇ ਰੂਲ ਦੇ ਹਿਸਾਬ ਨਾਲ ਸਾਰਾ ਉੱਠਦਾ ਇਹ ਕਲੀਨਿੰਗ ਦੀ ਜ਼ਰੂਰਤ ਹੈ ਔਰ ਕਲੀਨਿੰਗ ਦੇ ਵਿੱਚ ਉਹ ਬੰਦੇ ਰਹਿਣ ਜਿਹੜੇ ਸੱਚ ਦੀ ਬਿਨਾਤੇ ਨੇ ਜਿਹੜੇ ਤੁਹਾਡੇ ਕੋਲ ਵੀ ਸੱਚ ਬੋਲਦੇ ਤੇ ਜਾ ਕੇ ਅੰਦਰ ਬੈਂਚਾਂ ਤੇ ਬਹਿਦ ਨੇ ਚਾਹੇ ਆਟੋਵਾਚ ਚ ਚਾਹੇ ਵਿਕਟੋਰੀਆ ਚ ਉਹ ਸੱਚ ਬੋਲਦੇ ਬਸ ਉਹਨਾਂ ਨੂੰ ਸਲੂਟ ਕਰੋ ਜਿਹੜੀਆਂ ਪਾਰਟੀਆਂ ਦੇ ਵਿੱਚ ਅੰਦਰੋਂ ਖਾਤੀ ਤੂੰ ਇੱਥੇ ਖੜ ਜਾ ਮੈਂ ਇੱਥੇ ਖੜਦਾ ਮੈਂ ਇੱਥੇ ਖੜਦਾ ਹੁਣ ਤਾਂ ਦੋਨੇ ਹੀ ਲੋਕਲ ਪ੍ਰੋਵਿੰਸ਼ੀਅਲ ਲੈਵਲ ਦਾ ਦੋਨੇ ਆਹ ਕੁਝ ਕਰਦੀ ਕੋਈ ਇਹਨਾਂ ਦੇ ਵਿੱਚੋਂ ਨਹੀਂ ਦੇਖਿਓ ਬਈ ਜੇ ਤੁਸੀਂ ਕਹੋ ਵੀ ਹਾਂ ਜੀ ਅਸੀਂ ਸੂਲ ਨਾਲ ਚੱਲਦਾ ਕੋਈ ਅਸੂਲ ਸਾਲ ਓਏ ਜਿਹੜੀ ਅਸੀਂ ਆਪਣੇ ਹੱਥੀ ਮੈਸਪਾਈ ਆਪਣਾ ਹੋਊ ਆਪਣਾ ਹੋਊ ਆਪਣਾ ਹੋਊ ਦਿਖਾਇਓ ਦੱਸਿਓ ਕੋਈ ਵਿਆਹ ਲਓ ਜੀ ਆ ਅਸੀਂ ਬੋਲ ਕਹਾਂ ਆਟੋਵਾ ਚ ਆ ਅਸੀਂ ਬੋਲਿਆ ਵਿਕਟੋਰੀਆ ਚ ਆ ਅਸੀਂ ਕੰਮ ਕੀਤੇ ਔਰ ਬਦਲਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਜਸਨ ਟਰੂਡੋ ਬਹੁਤ ਵਧੀਆ ਦੁਨੀਆ ਚ ਕੰਮ ਕਰ ਰਿਹਾ ਉਹ ਕੋਸ਼ਿਸ਼ ਕਰ ਰਿਹਾ ਠੀਕ ਹੈ ਉਹਦੇਆਂ ਕੁਝ ਪਾਲਿਸੀਆਂ ਰਿਫਿਊਜੀ ਵਾਲੀਆਂ ਜਾਂ ਕੁਝ ਜਿਹੜਾ ਸੈਟ ਨਹੀਂ ਬੈਹ ਹੁੰਦਾ ਪਰ ਜਿਹੜੇ ਬੰਦੇ ਉੱਥੇ 9 ਚਮਕਾਉਂਦੇ ਐ ਵਧੀਆ ਜਗ੍ਹਾ ਤੇ ਬੈਠੇ ਐ ਉਸ ਉਹਨਾਂ ਨੂੰ ਸਿਰ ਮੱਥੇ ਦੁਨੀਆ ਦੇ ਲੈਵਲ ਤੇ ਹਰਜੀਤ ਸਿੰਘ ਸੱਜਣ ਵਰਗੇ ਡਿਫੈਂਸ ਮਿਨਿਸਟਰ ਬਣ ਗੱਲ ਕਰਦੇ ਆ ਬਾਹਰ ਮੁੰਡਾ ਬੈਂਸ ਐ ਉਹ ਗੱਲ ਕਰਦਾ ਬਾਹਰ ਜਿਹੜਾ ਬਾਕੀ ਲਾਣਾ ਤੁਰਿਆ ਫਿਰਦਾ ਨਾ ਇਹਨਾਂ ਦਾ ਸੂਤ ਆ ਗਿਆ ਬਸ ਕਮਿਊਨਿਟੀ ਵੱਧ ਗਈ ਵੋਟਾਂ ਪੈਂਦੀਆਂ 15 18000 ਐਮਪੀ ਨੂੰ ਤੇ ਬਸ ਜਿੱਥੇ 50000 ਬੰਦਾ ਬਸੋ ਤੋ 12000 ਨੇ ਪਵਾ ਲੈਣੀ ਗੋਰੇ ਦਾ ਦਰਾਂ ਮੂਰੇ ਨਹੀਂ ਖੜਦੇ ਉੱਥੇ ਫਸ ਜਾਂਦੀਆਂ ਜੂ ਮੈਂ ਜੂ ਮੈਂ ਕਰਨ ਲੱਗ ਜਾਂਦੇ ਆ ਆਪਣੇ ਪਾ ਦਿੰਦੇ ਆ ਰਿਸ਼ਤੇਦਾਰੀ ਗੰਡ ਲੈਣੀ ਹੈ ਖਿੱਤੇ ਚ ਵੰਡ ਦੇਣੇ ਤੂੰ ਮਲਵਈਆਂ ਮੈਂ ਮੈਂ ਵੀ ਮਲਵਈਆਂ ਤੂੰ ਦੁਆਬੇ ਦਾ ਮੈਂ ਦੁਆਬੇ ਦਾ ਭਾਈ ਆਪਾਂ ਇੱਕੋ ਪਿੰਡ ਦੇ ਆਹਜਾ ਕਰ ਕਰ ਕੇ ਵਿੱਚੋਂ ਉਂਗਲੀਆਂ ਸੰਗਲੀਆਂ ਕੱਢ ਕੇ ਭੈਣਾ ਵੀਰ ਕਹਿ ਕੇ ਵੋਟਾਂ ਪਾ ਕੇ ਆਉ ਗਏ ਮੈਂ ਕਹ ਫੇਰ ਫੇਰ ਦੱਸਦੇ ਆ ਵੀ ਮਿਨਿਸਟਰ ਪਰਮਟ ਕਿਵੇਂ ਆ ਤੇ ਕਿਵੇਂ ਦਵਾਈ ਦੇ ਆਫੇ ਇਹਨਾਂ ਨੂੰ ਥਾਂ 'ਤੇ ਰੱਖਣ ਲਈ ਅਸੀਂ ਵੀ ਖੁੱਲਾ ਛੱਡਦੇ ਆਂ ਵੀ ਚੱਲ ਵੀ ਤੂ ਤੁਰਿਆ ਫਿਰ ਜਿੱਧਰ ਮਰਜੀ ਲਾ ਦਿੰਨੇ ਆ ਇੱਕ ਵਾਰ ਆਪਾਂ ਵੀ ਲਾ ਕੇ ਨਾ ਮੋਰ ਛੱਡ ਦਿੰਨੇ ਆ ਲੈ ਵੀ ਬੇਲਾ ਜਿੱਧਰ ਮਰਜੀ ਚਿਰਦਾ ਫਿਰ ਇਹ ਕੰਮ ਬੰਦ ਕਰੋ ਤੇ ਇਹਨਾਂ ਨੂੰ ਅਕਾਊਂਟੇਬਲ ਕਰੋ ਜੇ ਸਾਡੀਆਂ ਇਸ ਤਰ੍ਹਾਂ ਹਸਪਤਾਲਾਂ ਦੇ ਵਿੱਚ ਬੱਚੀਆਂ 3-3 ਸਾਲਾਂ ਦੀਆਂ ਧੀਆਂ ਮਰਨੀਆਂ ਤੇ ਜਾਂ ਸਾ ਤੋਂ ਡਾਲਰ ਇਕੱਠੇ ਕਰਕੇ 9 ਲੋਕਾਂ ਨੇ ਆਪਣਾ ਚਮਕਾਉਣਾ ਇਹਨਾਂ ਦਾ ਸਸਤਾ ਵੱਡੋ ਲੋਕੋ ਉਹਦੇ ਨਾਲ ਤਾਂ ਦੇਣ ਨਾਲੋਂ ਤਾਂ ਕੋਲੋਂ 2000 ਡਾਲਰ ਕਿਤੇ ਖਰਚ ਕੇ ਆਪਣੇ ਜਵਾਕ ਦਾ ਇਲਾਜ ਕਰਾ ਲਓ ਗਲੂਟਨ ਦੀ ਇੱਕ ਅਲਰਜੀ ਹੈ ਗਲੂਟਨ ਤੋਂ ਉਹੀ ਚੈੱਕ ਕਰਾ ਲਓ ਜੇ ਗਵਰਨਮੈਂਟ ਨਹੀਂ ਕਰਦੀ ਤਾਂ ਇੱਕ ਮੈਸੇਜ ਨਹੀਂ ਮੇਰੇ ਕੋਲ ਘੱਟੋ ਘਾਟਾ 40 ਮੈਸੇਜ 1.5 ਘੰਟੇ ਚ ਆਏ ਨੇ ਜਿਨ੍ਹਾਂ ਦੇ ਪਰਿਵਾਰਾਂ 'ਚ ਕੁਝ ਹੋਇਆ ਸਾਰੇ ਮੈਂ ਸਾਹਮਣੇ ਹੋਇਆ ਗਲੂਟਨ ਦੀ ਅਲਰਜੀ ਆਲਸਰ ਦੀਆਂ ਦਵਾਈਆਂ ਦੇ ਗਏ ਮੇਨ ਜਿਹੜੀ ਵੱਡੀ ਨਾੜੀ ਹੈ ਮੇਨ ਜਿਹੜੀ ਲਾਰਜ ਇਨਸਟਾਈਨ ਹੈ ਉਹਦੇ ਵਿੱਚ ਇਨਫੈਕਸ਼ਨ ਹੋ ਗਈ। ਸੋ ਕੌਣ ਉਹਦਾ ਜ਼ਿੰਮੇਵਾਰ ਹੈ? ਵੱਡੀ ਮੇਨ ਨਾੜੀ ਉਹਦੇ ਵਿੱਚ ਮੁਸ਼ਕਲ ਹੋ ਗਈ ਸਿਰਫ ਗਲੂਟਨ ਦੀ ਸੀ ਪਰ ਦਵਾਈਆਂ ਅਲਸਰ ਦੀ। ਅਰ ਜਦ ਮੇਨ ਲਾਰਜ ਦੀ ਤੁਹਾਡੀ ਇਨਸਟੈਂਟ ਹੈ ਉਦੀ ਮੁਸ਼ਕਿਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਮੁਸ਼ਕਲੇ ਮੁਸ਼ਕਲਾ ਨੇ ਐਨੀਵੇਸ 6045987611 ਪੰਜਾਬ ਬੈਂਕਟ ਹਾਲ ਦੇ ਵਿੱਚ ਵਧੀਆ ਪਾਰਟੀ ਤੁਸੀਂ ਕਰਨੀ ਹੈ ਤਾਂ ਤੁਸੀਂ ਕਰ ਸਕਦੇ ਹੋ ਕੀਮਤਾਂ ਬਹੁਤ ਵਾਜਬ ਨੇ ਸਵਾਰ ਨੱਟ ਦੇ ਨਾਲ ਤੁਸੀਂ ਗੱਲ ਕਰਿਓ ਸੌਰੀ ਸਦਾ ਸ਼ਾਮੇ ਗਿਲ ਦੇ ਨਾਲ ਗੱਲਬਾਤ ਕਰੋ 6045987611 ਪੰਜਾਬ ਬੈਂਕਟ ਹਾਲ ਨਤ ਸਾਹਿਬ ਤਾਂ ਹਨ ਓਵਰ ਤੇ ਪ੍ਰੋਗਰਾਮ ਸੁਣਦੇ ਸਦਾ ਭਪਿੰਦਰ ਸਿੰਘ ਨੱਤ ਉਹਨਾਂ ਦਾ ਮੈਸੇਜ ਆਇਆ ਸੀ ਉਹਦੇ ਕਰਕੇ ਉਹ ਦਿਮਾਗ ਚ ਵਿਸਰਗੀ ਗੱਲ ਥੈਂਕ ਯੂ ਸੋ ਮਚ ਨੱਤ ਸਾਹਿਬ ਤੁਸੀਂ ਇੱਡੀ ਦੂਰ ਬੈਠੇ ਸੁਣਦੇ ਥੈਂਕ ਯੂ ਤੇ ਨਾਲ ਹੀ ਅਮਨ ਖੜਕੜ ਮਾਰਗੇਜ ਦੇ ਵਿੱਚ ਵੱਡਾ ਨੰਬਰ 9600482513 14 aman.ca aman@aman.ca ਈਮੇਲ ਹੈ ਮਾਰਗੇਜ ਦੀ ਦੁਨੀਆ ਦੇ ਵਿੱਚ ਕੋਈ ਕੰਮ ਹੋਵੇ ਤਾ ਅਮਨ ਖੜਕੜ ਨਾਲ ਗੱਲ ਕਰੋ ਰੈਜ਼ੀਡੈਂਸ਼ਨ ਕਮਰਸ਼ੀਅਲ ਤੇ ਕੰਸਟਰਕਸ਼ਨ ਮੌਰ ਦੇ ਘਰ ਬਣਾਉਣਾ ਹੈ ਤਾਂ ਉਸ ਦੀ ਵੀ ਕੋਈ ਫਿਕਰ ਨਹੀਂ ਤੇ ਨਾਲ ਜੇ ਤੁਸੀਂ ਲਾਇਸੈਂਸ ਬਿਲਡਰ ਲਵਦੇ ਹੋ ਤਾਂ ਵੀ ਰੀਅਲਟਰ ਕੋਈ ਚਾਹੀਦਾ ਇੱਕ ਜਗ੍ਹਾ ਤੇ ਕਿਉਂਕਿ ਕੰਮ ਪੈਂਦਾ ਨਾ ਇੱਕ ਦੂਜੇ ਇੱਕ ਜਗ੍ਹਾ ਤੇ ਗੱਲਾਂ ਹੁੰਦੀਆਂ 604 825 13 14 ਕਈ ਵਾਰ ਨਾ ਬੰਦੇ ਜਿਹੜੇ ਸੱਚੇ ਆ ਸੋਸ਼ਲ ਕਦਰਾਂ ਕੀਮਤਾਂ ਤੇ ਜਿਉਂਦੇ ਆ ਉਹ ਦੁਖੀ ਹੋ ਜਾਂਦੇ ਅਰਵੀਰ ਸਿੰਘ ਗਰੇਵਾਲੂ ਨੀ ਰਾਤ ਮੈਨੂੰ ਕਹਿੰਦੇ ਯਾਰ ਇਹ ਤਾਂ ਸਾਰੇ ਬਾਈ ਜੀ ਮੈਸ ਹੋ ਗਿਆ ਸਾਡੀਆਂ ਤਾਂ ਪੀੜ੍ਹੀਆਂ ਆਉਣ ਵਾਲੀਆਂ ਦਾ ਫਿਊਚਰ ਖੂਚ ਪਾ ਦੇਣਗੇ ਲੋਕ ਪਰ ਬਦਲ ਕੀ ਹੈ ਬਦਲ ਇਹ ਹੈ ਵੋਟ ਪਾਉਣ ਵੇਲੇ ਤੁਸੀਂ ਸਿਆਣੇ ਹੋਵੋ ਦਰ ਤੇ ਜਦ ਵੋਟ ਮੰਗਦੇ ਆ ਇਹਨਾਂ ਨੂੰ ਕਹਿੰਦੇ ਆ ਆ ਜਾ ਅੰਦਰ ਬਹਿ ਜਾ ਤੈਨੂੰ ਚਾਹ ਪਲਾਉਣੀ ਆ ਡਾਂ ਗਰਗੀ ਨਾਲੇ ਤੇ ਤੂੰ ਹੁਣ ਸਵਾਲ ਪੁੱਛਣਾ ਵੋਟ ਫੇਰ ਪਾਵਾਂਗੇ ਨਾਲ ਬੈਠਿਆ ਤੇ ਕਰ ਲਿਓ ਰਿਕਾਰਡ ਤੇ ਆਹ ਗੱਲਾਂ ਦਾ ਦੇਓ ਜਵਾਬ ਇਕਰਮ ਬਾਜੀ ਕਿੱਥੋਂ ਤੇ ਕਿੱਥੇ ਚਲਦੀ ਹੈ ਤੇ ਕਿਵੇਂ ਚੱਲਦੀ ਹੈ ਦਾ ਜਵਾਬ ਦਿਓ ਐਤਕੀ ਹੁਣ ਇਹਨਾਂ ਜਿਹੜੇ ਹੁਣ ਨੇ ਤੇ 19 ਵਾਲੀ ਦੇ ਵਿੱਚ ਤਾਂ ਕੰਮ ਸਵਾਰ ਕੇ ਕਰਨਾ ਇਸ ਵਾਰ ਜਿਹੜੇ ਜਾ ਕੇ ਆਟੋਵਾ ਨਾ ਛੱਕਦੇ ਆਪਣੇ ਕੋਲ ਦੁੱਧ ਦੀਆਂ ਦੋਹਣੀਆਂ ਕਿਸੇ ਦੀ ਭਰਦੀਆਂ ਉਹਨਾਂ ਦਾ ਹਿਸਾਬ ਤਾਂ 19 'ਚ ਕਰਨਾ ਇੱਕ ਸਾਲ ਅਗਲਾ 18 ਵਾਲਾ ਆਪਣੇ ਸ਼ਹਿਰ ਦੀ ਇਲੈਕਸ਼ਨ ਹੈ ਉਹਨੇ 3 ਸਾਲ ਹਾਈ ਗੇਅਰ 'ਤੇ ਰਹਿਣਾ ਇਹਨਾਂ ਨਾਲ ਅਕਾਉਂਟੇਬਿਲਟੀ ਹੈ ਜਿਹੜੀ ਉਹ ਜ਼ਰੂਰ ਹੈ ਕਿ ਇਹ ਸਾਨੂੰ ਆ ਜਵਾਬ ਦਿਓ ਜਦ ਤੁਸੀਂ ਜਿੱਤ ਕੇ ਆਉਨੇ ਹੋ 4 ਸਾਲ ਕਿੱਥੇ ਹੁੰਨੇ ਹੋ ਜਦ ਤੁਸੀਂ ਜਿੱਤ ਕੇ ਜਾਂਦੇ ਹੋ ਫਿਰ ਤੁਸੀਂ ਲੱਭਦੇ ਕਿਉਂ ਨਹੀਂ ਕਿੱਥੇ ਹੁੰਨੇ ਹੋ ਤੁਸੀਂ ਜਦ ਕਮਿਊਨਿਟੀ ਦੀਆਂ ਮੁਸ਼ਕਲਾਂ ਨੇ ਟਰੱਕਰ ਸਾਡੇ ਸਵੇਰੇ ਇੱਕ ਟਰੱਕ ਦਾ ਦਾ ਟਰੱਕ ਕੰਮ ਮਿਲਦਾ ਨਹੀਂ ਜੇ ਉਹ ਟੈਗ ਮੂਵ ਕਰਦਾ ਦੂਜੀ ਜਗ੍ਹਾ ਟਰੱਕ ਨਮਾ ਪਾਉਣਾ ਪੈਂਦਾ ਕਹਿੰਦਾ ਮੈਂ ਡਿਪਰੈਸ ਹੋ ਗਿਆ ਮੇਰੇ ਬੱਚੇ ਧੀਆ ਤੇ ਮੇਰੇ ਪੁੱਤ ਯੂਨੀਵਰਸਿਟੀ ਜਾਂਦੇ ਨੇ ਮੈਂ ਬਹੁਤ ਡਿਪਰੈਸ ਆ ਗੋਲੀ ਖਾਣ ਲੱਗ ਗਿਆ ਮੇਰਾ ਜੀ ਕਰਦਾ ਖੁਦਕੁਸ਼ੀ ਕਰ ਲਾਂ ਅੱਜ ਸਵੇਰ ਦੀ ਗੱਲ ਐ ਯਰ ਕਿੱਥੇ ਬੈਠੇ ਤੁਸੀਂ ਫਾਜ਼ਲ ਕੇ ਬੈਠੇ ਹੋ ਹੋਰ ਬੈਠੇ ਤੇ ਡੋਡਾ ਅੰਦਰ ਬਾਰ ਕੇ ਬਾਹਾਂ ਵੜ ਦੂ ਦਲਤ ਦੀਆਂ ਭੀਮ ਦੀਆਂ ਕਿਸੇ ਦੀਆਂ ਜਦ ਤੱਕ ਲੋਕੋ ਤੁਸੀਂ ਬੋਲਦੇ ਨਹੀਂ ਕੱਖ ਨਹੀਂ ਹੋਣਾ ਸਪੀਕ ਆਊਟ ਇਹ ਗੁੰਗਣਾ ਕੰਮ ਆ ਜਿਹੜਾ ਇਹ ਇਹ ਛੱਡੋ ਇਹ ਜਿਹੜੀਆਂ ਨਾ ਵੀ ਮੇਰੇ ਕਰਤਾ ਜੇ ਤੁਸੀਂ ਨਾ ਆਈਸੋਲੇਟ ਹੋਣਾ ਫਿਰ ਆਈਸੋਲੇਟ ਹੋ ਕੇ ਰਹੋ ਵੀ ਸਾਡਾ ਭਾਈਚਾਰ ਨਾਲ ਸੰਬੰਧ ਨਹੀਂ ਮੇਰੀ ਫਲਾਣੇ ਬੰਦੇ ਨੇ ਗੱਲ ਕਰਤੀ ਮੈਂ ਤੁਹਾਡਾ ਹਿੱਸਾ ਨਹੀਂ ਫੇਰ ਤਾਂ ਬਿਬਕ ਕੇ ਕਹੋ ਬਾਹਰ ਆ ਕੇ ਮੇਰੇ ਫਲਾਣੇ ਐਮਪੀ ਨੇ ਫਲਾਣੇ ਐਮਐਲਏ ਨੇ ਫਲਾਣੇ ਮਿਨਿਸਟਰੇ ਮੇਰਾ ਕੰਮ ਕਰਤਾ ਮੇਰੀ ਉਹਨਾਂ ਨਾਲ ਠੀਕ ਹੈ ਫਿਰ ਭਾਈਚਾਰੇ ਤੋਂ ਬਾਹਰ ਨਿਕਲੋ ਫਿਰ ਉਹ ਉੱਥੇ ਖਾਂ ਜਿਨ੍ਹਾਂ ਦਾ ਹੁੰਦਾ ਨਹੀਂ ਕੁਝ ਇਹਨਾਂ ਜਨਰਲ ਭਾਈਚਾਰੇ ਬਾਰੇ ਖਿਆਲ ਕਰੋ ਕਿ ਜੇ ਤੁਸੀਂ ਸਾਰਾ ਕੁਝ ਕਰਤ ਕੇ ਮੈਨੂੰ ਕਦੇ ਕਦੇ ਲੱਗਦਾ ਹੈ ਵੀ ਕਾਦੇ ਲਈ 10 10 20 20 ਸੈਂਟ ਘੰਟੇ ਦੇ ਕਮਾਉਣ ਵਾਲੇ ਕਾਦੇ ਲਈ ਸਰਦ ਮੀਵਾ ਸਿੰਘ ਗੱਲ ਉਹਨਾਂ ਨੇ ਇੱਥੇ ਸ਼ਹੀਦੀਆਂ ਲਈਆਂ ਸਾਡੀ ਲਈ ਜਿਹੜੀ ਆ ਕਾਮ ਅੱਗੇ ਆਉਣੀ ਸੀ ਕਿਉਂ ਪਾਣੀ ਦੇ ਟੱਟ ਤੇ ਉਹ ਕਾਮਾਗਾਟਾ ਮਾਰੂ ਖੜਾ ਰਿਹਾ ਤੇ ਸਾਡੇ ਸਾਰਾ ਕੁਝ ਵੇਚ ਕੇ ਉਹਨਾਂ ਤੇ ਲਾਉਣ ਨੂੰ ਫਿਰਦੇ ਰਹੇ ਭਾਗ ਸਿੰਘ ਬਦਨ ਸਿੰਘ ਉਹਨਾਂ ਨੇ ਸ਼ਹੀਦੀਆਂ ਕਿਉਂ ਦਿੱਤੀਆਂ ਜੇ ਹਜੇ ਕੁਛ ਹੋਣਾ ਸੀ ਫਿਰ ਤਾਂ ਬੇਲੇਗਦਾਰ ਹੋਣੀ ਠੀਕ ਸੀ ਫਿਰਦੇ ਤੇ ਤੁਰੇ ਫਿਰਦੇ ਸਭ ਕੁ ਵਧੀਆ ਸੀ ਕਾੜੇ ਲਈ ਮਾਝ ਦੇ ਜਰਨੈਲ ਉਹ ਸਰਦਾਰ ਨੇ ਮੇਵਾਸੀਓ ਨੇ ਸ਼ਹੀਦ ਦੀ ਲਈ ਕਾੜੇ ਲਈ ਕਿਉਂ ਭਗਤ ਸਿੰਘ ਤੇ ਬਦਲ ਸਿੰਘ ਸ਼ਹੀਦ ਹੋਏ ਆਉਣ ਵਾਲੀਆਂ ਪੀੜੀਆਂ ਸੱਚ ਦੀ ਬਿਨਾ ਤੇ ਬਾਪੂ ਨੇ ਚਾਰੇ ਪੁੱਤ ਹੱਥੀ ਤੋਰਿਆ ਇਹਦੇ ਲਈ ਸੱਚ ਦੀ ਬਿਨਾ ਤੇ ਕਿ ਜ਼ੁਲਮ ਰਾਜ ਨੇ ਜਿਹੜਾ ਝੱਲਣਾ ਕੁਛ ਨਹੀਂ ਸੀ ਕਹਿੰਦੇ ਉਹਨੂੰ ਕੋਈ ਕੱਖ ਨਹੀਂ ਸੀ ਕਹਿੰਦੇ ਅਨੰਦਪੁਰ ਦੇ ਕਿਲੇ 'ਚ ਅਲਗ-ਅਲਗ ਦੇ ਪਹਾੜੀ ਰਾਜੇ ਕਹਿੰਦੇ ਅਸੀਂ ਹਾਥੀ ਤੇ ਚੜਾ ਦੇਣਾ ਤੂੰ ਵੀ ਦੇ ਯਾਰ ਕਾਦੇ ਲਈ ਪੰਗੇ ਪਾਉਣਾ ਕਿਉਂ ਨਗਾਰੇ ਵਜਾਉਣਾ ਤੂੰ ਕਾਦੇ ਲਈ ਨਿਤ ਰੰਗਦੇਵ ਪੰਗਾ ਲੈਣਾ ਕਿਉਂ ਚਿੜੀਆਂ ਤੋਂ ਬਾਤ ਜਾਂਦੀਆਂ ਗੱਲਾਂ ਕਰਦਾ ਕਿਉਂ ਤੀਰ ਅੰਦਾਜ਼ੀ ਕਰਦਾ ਸਿੱਖ ਜਾ ਉਹ ਨਾ ਨਾ ਇਹ ਨਹੀਂ ਗੱਲ ਹੋਣੀ ਜ਼ੁਲਮ ਰਾਜ ਦਾ ਫਸਤਾ ਵੱਢਣਾ ਬਾਕੀ ਵੀ ਤੁਰੇ ਫਿਰਦੇ ਸੀ ਗਾਤਰੇ ਪਾ ਕੇ ਸੰਤ ਜਨੈਲ ਸਿੰਘ ਨੂੰ ਕਿਉਂ ਦਿੱਲੀ ਦਾ ਤਖਤ ਲੱਗਿਆ ਵੀ ਸਾਨੂੰ ਖਾਂਦਾ ਕਿਉਂ ਸੱਚ ਬੋਲਿਆ ਅੱਜ ਫੋਟੋ ਭੇਜੀਆ ਕਿਸੇ ਨੇ ਜਰਮੈਲ ਬੁੱਧ ਸਿੰਘ ਵਾਲਾ ਦੀ ਮਾਤਾ ਦੀ ਬੇਬੇ ਘਰੇ ਪੁੱਤ ਭਜਾਇਆ ਹੋਇਆ ਕਿਸੇ ਕਾਰਨ ਕਰਕੇ ਭਜ ਲਿਆ ਆਪ ਭਜ ਲਿਆ ਪੁਲਿਸ ਨੇ ਭਜਾ ਲਿਆ ਤੇ ਦਰਵਾਜ਼ੇ ਲੈ ਗਿਆ ਲਾ ਕੇ ਮਿੱਤ ਸਿਓ ਥਾਣੇਦਾਰ ਮੈਂ ਤੁਸੀਂ ਥਾਣੇਦਾਰ ਮਿੱਤੂ ਆ ਕੇ ਮਾਂ ਨੂੰ ਪੁੱਛਦਾ ਜਰਮੈਲ ਕਿੱਥੇ ਐ ਕਿੱਥੇ ਆ ਤੇਰਾ ਜੰਟਾ ਬੇਬੇ ਕਹਿੰਦੀ ਪੁੱਤ ਬਾਹਰੇ ਫਿਰਦਾ ਫੜ ਲੈ ਤੂੰ ਮਿੱਤ ਮੇਰੇ ਕੋਲ ਕਿੱਥੇ ਆ ਘਰ ਚ ਹੰਕਾਰੇ ਹੋਏ ਥਾਣੇਦਾਰ ਨੇ ਦੋਨੇ ਬਾਲੀਆਂ ਬੇਬੇ ਦੀਆਂ ਅਥੀਂ ਖਿੱਚੀਆਂ ਬਾਹਰ ਕੰਨਾਂ ਦੀਆਂ ਕੰਨ ਪਾਟ ਗਏ ਫੋਟੋ ਆ ਮੈਂ ਫੇਸਬੁੱਕ ਤੇ ਪਾਈ ਆ ਬੇਬੇ ਨੂੰ ਮੁਰਕੇ ਤੱਕਾ ਦੇਤਾ ਦੋਨੇ ਸਾਰੇ ਮੂੰਹ ਦੇ ਦੰਦ ਬੇਬੇ ਮਾਤਾ ਦੇ ਟੁੱਟ ਗਏ ਤੇ ਜਦ ਹਿੱਕ ਤੇ ਚੜਿਆ ਜਾ ਕੇ ਬਾਗੇ ਪੁਰਾਣੇ ਫੇਰ ਨੂੰ ਦੱਸਿਆ ਵੀ ਪੁੱਤ ਆ ਮੈਂ ਮੇਰਾ ਨਾਂ ਆ ਗਰਜਨਸਿਓ ਅੱਜ ਹੁਣ ਤਰਾ ਦੇ ਮੂਹਰੇ ਠਾਣੇ ਦੇ ਮੂਹਰੇ ਫੇਰ ਜਿਹੜਾ ਦੂਜਾ ਛੋਟਾ ਠਣਦਰ ਵੀ ਤੀਜੇ ਦਿਨ ਆ ਕੇ ਦਰਵਾਜ਼ੇ ਲਾ ਕੇ ਗਿਆ ਆਪ ਜਰਨਲ ਦੇ ਕਰ ਇਹ ਗੱਲਾਂ ਜਿਹੜੀਆਂ ਵਕਤ ਦੇ ਦੁਖੀ ਹੁੰਦੇ ਲੋਕ ਜੀ ਇਹ ਗੱਲ ਆ ਗੱਲ ਇਹ ਆ ਵਕਤ ਦਾ ਰੌਲਾ ਜਿਹੜਾ ਸਾਡਾ ਸਰਕਾਰਾਂ ਨਾਲ ਰੌਲਾ ਕਾਹਦਾ ਸੱਚ ਦਾ ਰੌਲਾ ਥੋੜੇ ਬੇਗੁਣ ਕਾ ਖਾਨ ਵਾਲੇ ਤੇ ਫਿਰਦੇ ਓਪਨੇ ਹੀ ਸਤਜੈ ਸਿੰਘ ਪੁਰੇ ਫਿਰਦਾ ਫਾਲੰਦਾ ਤਜੋਰੀਆਂ ਕੜੀਆਂ ਜਿਹੜੀਆਂ ਆ ਛੱਤ ਤੇ ਉੱਪਰੋਂ ਮਿੱਟੀ ਘਿਰਦੀ ਸਰਕੜੇ ਦੇ ਵਿੱਚੋਂ ਉਹਨੂੰ ਵੀ ਦਿਖਦੀ ਹੋ ਸੀ ਪੁੱਤਾਂ ਦੇ ਹੱਪੈਰਾਂ ਦੇ ਵਿੱਚ ਟੁੱਟੀਆਂ ਹੋਈਆਂ ਚੱਪਲਾਂ ਜਿਹੜੀਆਂ ਤੁਰੀਆਂ ਫਿਰਦੀਆਂ ਟਪਕ ਟਪਕ ਹੁੰਦੀਆਂ ਉਹਨੂੰ ਵੀ ਦਿਖਦੀਆਂ ਸੀ ਪਰ ਸੱਚ ਦੀ ਬਿਨਾ ਦੀ ਜਿਹੜੀ ਆ ਗੱਲ ਉਹ ਸੱਚ ਤੇ ਜਿਹੜੇ ਕਹਿਣਗੇ ਤਾਂ ਉਹ ਵੱਡੇ ਜਾਣਗੇ ਸੱਚ ਹੈ ਕਿਉਂਕਿ ਸਾਡੇ ਬਾਪੂ ਨੇ ਪਹਿਲੀ ਪਾਸ਼ਾਹੀ ਤੋਂ ਬਾਬਰ ਨੂੰ ਜਾਵਰ ਕਿਹਾ ਤੇ ਅਸੀਂ ਸਾਰਾ ਕੁਝ ਤਲਾੰਜਲੀ ਦੇਈ ਬੈਠੇ ਆ ਸਿਰਫ ਆਪਣੇ ਨਿੱਜ ਕਰਕੇ ਤੇ ਮੇਰਾ MP ਆਏ ਮੇਰਾ MLA ਆਏ ਮਸ਼ਰਾਬ ਦੇ ਠੇਕੇ ਦਵਾ ਦੂ ਇਹ ਮੈਨੂੰ ਮਿਨਿਸਟਰ ਪਰਮਟ ਦਵਾ ਦੂ ਇਹ ਨਾਲ ਦਾ ਜਿਗਾੜ ਬੰਨ ਲਾਂਗੇ ਗੱਲਾਂ ਹੁੰਦੀ ਦੇਸ਼ ਚ ਆਏ ਆ ਮਲਟੀਕਲਚਰਲ ਕਰਕੇ ਲੋਕ ਸਾਡਾ ਸਤਿਕਾਰ ਕਰਦੇ ਆ ਬਈ ਇਕੱਲੇ ਹੀ ਹੰਦੇ ਕਰੀਬ ਬੰਦਾ ਜਿਹੜੇ ਦੇਸ਼ਾਂ ਸਾਡੀ ਬਹੁਤਾਤ ਨਹੀਂ ਉੱਥੇ ਦੇਖੋ ਅਸੀਂ ਸਾਡੀ ਭਾਈਚਾਰਾ ਕਿਵੇਂ ਰਹਿੰਦਾ ਔਰ ਕਿੰਨਾ ਉਹ ਦੁੱਖ ਨੇ ਕੋਈ ਕਿਤੇ ਰਹਿੰਦਾ ਕੋਈ ਕਿਤੇ ਇੱਥੇ ਸਾਡੀ ਬਹੁਤਾਤ ਕਰਕੇ ਸਾਡੀ ਜ਼ਰੂਰਤ ਆ ਇਹ ਲੋਕਾਂ ਨੂੰ ਪੰਜ ਚਾਰ ਨੇ ਉਹ ਐਮਪੀ ਦੀਆਂ ਸੀਟਾਂ ਪੰਜ ਚਾਰ ਐਮਐਲ ਦੀਆਂ ਦੇਣੀਆਂ ਪਈਆਂ ਤਾਂ ਤੁਹਾਨੂੰ ਜੱਫੀਆਂ ਪਾਉਂਦੇ ਤਾਂ ਤੁਹਾਨੂੰ ਹੱਸਦੇ ਆ ਪਰ ਚਾਹੇ ਹੋਕਰ ਕਰੁੱਕ ਚਾਹੇ ਭਾਈਚਾਰੇ ਕਰਕੇ ਜਗ੍ਹਾ ਮਿਲ ਗਈ ਜਾ ਕੇ ਕੰਮ ਕਿਉਂ ਨਹੀਂ ਕਰਦੇ ਗੱਲ ਦੀ ਇਹ ਚਾਹੇ ਉਹ ਟ੍ਰੱਕਰ ਦਾ ਇਸ਼ੂ ਹੈ ਚਾਹੇ ਸਾਡਾ ਇਮੀਗ੍ਰੇਸ਼ਨ ਦਾ ਇਸ਼ੂ ਹੈ ਚਾਹੇ ਹੈਲਥ ਕੇਅਰ ਦਾ ਇਸ਼ੂ ਹੈ ਸਾਡਾ ਅਸੀਂ ਕਿਉਂ ਜਿਹੜੇ ਫਿਰਦੇ ਆ ਅਸੀਂ ਕਿਉਂ ਥਾਂ ਆ ਇਹਨਾਂ ਦਾ ਪੰਜਾਬ ਚੰਗਾ ਸਰ ਸਾਡੇ ਚੁੰਡੀਆਂ ਵੱਡਦਾ ਉੱਥੇ ਜਿਹੜਾ ਉਹਨੂੰ ਸਾਜਿ ਪਾ ਕੇ ਇੱਥੇ ਛੱਪਿਆਂ ਉੱਖੜਿਆ ਜੀ ਉਹ ਲੁੱਟਿਆ ਜੀ ਉਹ ਕਰ ਗਿਆ ਤੇ ਇੱਥੇ ਤੁਸੀਂ ਨਿਤ ਲੁਕੀਦੇ ਆ ਕੋਈ ਨਹੀਂ ਬੋਲਦਾ ਆਪਣੇ ਹੱਕਾਂ ਲਈ ਗੱਲ ਕਰਨੀ ਬਹੁਤ ਜ਼ਰੂਰੀ ਹੈ ਸਤਨਾਮ ਸਿੰਘ ਦੀ ਲਾਈਨ ਨੰਬਰ 2 ਸਾਕਰਮਜੀਤ ਸਿੰਘ ਦੀ ਲਾਈਨ ਨੰਬਰ 3 ਹਲੋ ਸੇਵਨ ਜੀ ਸਤਿਕਾਰ ਜੀ ਹਾਂ ਜੀ ਬਾਈ ਮੈਂ ਬੜਾ ਦੋਖਾ ਵੀਰ ਜੀ ਪਹਿਲਾਂ ਉਹ ਖਬਰ ਉਦਣ ਵੀ ਸੁਣੀ ਜੀ ਉਹਦੇ ਮਦਰ ਵੀ ਆਏ ਉਹ ਆ ਹੂੰ ਤੇ ਸਮਝ ਆ ਰਾ ਬਾਈ ਸਾਡੇ ਵੀ ਉਥੇ ਪਿਛਲੇ ਵੀ ਕੇ ਟੈਪ ਨੂੰ ਹਟਿਆ ਜੀ ਉਹ ਮੁੰਡੇ ਨੂੰ ਮੰਨੇ ਨਹੀਂ ਜੀ 2 ਦਿਨ ਪਹਿਲਾਂ ਕਹਤਾ ਕਹਿੰਦੇ ਵੈਂਟੀਲੇਟਰ ਤੋਂ ਕੇ ਰੱਖਣਾ ਸੀ 4 ਵਜੇ ਦਾ ਟਾਈਮ ਦਿੱਤਾ ਜੀ ਉਹਨਾਂ ਦੇ ਪਰਿਵਾਰ ਨੂੰ ਠੀਕ ਆ ਜੀ ਤੇ ਉਹ ਪਰਿਵਾਰ ਦੇਖ ਲੋ ਜੀ ਉਹਦੀ ਮਦਰ ਬ੍ਰਦਰ ਉਹ ਸਾਰੇ ਰੋਂਦੇ ਰਹੇ ਠੀਕ ਹੈ ਛੋਟਾ ਸਮਝੋ ਬਾਹਰ ਹੋਇਆ ਪਿਆ ਜੀ ਲੋਕ ਸਰਦੇ ਕੀ ਲਾਈਕ ਸਰਪ੍ਰਾਈਜ਼ ਕੰਮ ਜੀ ਹਾਂ ਹੁਣ ਨੰਬਰ 2 ਦੇ ਉੱਤੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਕੇ ਭੇਜਿਆ ਹੋਇਆ ਨਾ ਆਟਵਾ ਚ ਤੇ ਜਨ ਜਿਨ੍ਹਾਂ ਨੂੰ ਇੱਥੇ ਬਿਠਾਏ ਹੋਏ ਹੋਂ ਉਹ ਤੁਹਾਡੇ ਹੱਕਾਂ ਲਈ ਬੋਲਦੇ ਨਹੀਂ ਤਾਂ ਸਰਪ੍ਰਾਈਜ਼ ਭਾਈ ਜੀ ਕੋਈ ਨਹੀਂ ਬੋਲਦਾ ਹੈਗਾ ਹੁਣ ਕੱਲ ਇੱਕ ਇੱਥੇ ਸਾਡੇ ਇਸ਼ੂ ਉੱਠਿਆ ਜੀ ਇੱਕ 400 ਆਈ ਵੀ ਦਿੱਤੇ ਉਹ ਉੱਤੇ ਚਲੋ ਜੀ ਦੇਖੋ ਕੀ ਬਣਦਾ ਕੀ ਨਹੀਂ ਹਜੇ ਤਾਂ ਗੱਲ ਪੁਰੀ ਆ ਉਹ ਬੰਦੇ ਨੇ ਆਪਣੇ ਪੰਜਾਬੀ ਭਾਈਚਾਰੇ ਨੂੰ ਟਿਕਟਾਂ ਦਿੱਤੀਆਂ ਜੀ 510 ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜੀ ਉਹ ਬੰਦੇ ਨੇ ਤੇ ਜਿੰਦਾ ਹੀ ਪੱਗ ਵਾਲੇ ਬੰਦੇ ਨੂੰ ਟਿਕਟ ਦਿੱਤੀ ਗਈ ਹਜੇ ਵੀ ਦੇਖ ਲਓ ਇਹ ਕੰਮ ਚੱਲਦਾ ਹੈ ਆਪਣੇ ਮინისტრਰ ਬੈਠੇ ਨੇ ਜੀ ਉੱਥੇ ਆਟੋਵਾਂ ਜਾ ਕੇ ਕੋਈ ਕੁਝ ਨਹੀਂ ਕਰਦਾ ਜੀ ਸਭ ਇੱਥੇ ਸਾਡੇ ਵੀ ਆਈ ਕੋਸ਼ ਹੈ ਜੀ ਉਹ ਭੁਗਤੇ ਆ ਕੇ ਉਹਨਾਂ ਦੇ ਮਰਗ ਤੇ ਰਹਿ ਜੀ ਆਹੀ ਕਰ ਜੋ ਤੇ ਰਹਿ ਗਿਆ ਆਪਾਂ ਇਦੋਂ ਕੁਝ ਹੈਗਾ ਬਾਈ ਜੀ ਸੁਣ ਕੇ ਬੜਾ ਦੁੱਖ ਲੱਗਦਾ ਜਦੋਂ ਇਦਾਂ ਦੀਆਂ ਗੱਲਾਂ ਸੁਣਦੇ ਆਂ ਉਹ 25 ਦਾ ਕੀ ਕਸੂਰ ਸੀਗਾ ਜੀ ਉਹ ਤਾਂ ਉਹ ਬੰਦੇ ਦੀ ਮਦਰ ਨੂੰ ਆਪਣੇ ਇੰਡੀਆ ਤੋਂ ਆ ਜੀ ਹਸਪਤਾਲ ਦੀ ਵੀ ਦਿਨ ਹੋਰ ਰੱਖ ਲਓ ਨਾ ਜੀ ਇਹ ਖਤਮ ਆ ਡਿਸਚਾਰਜ ਕਰਕੇ ਉਹ ਬੰਦਾ ਬਾਹਰ ਕੱਢਤਾ ਕਿਸੇ ਨੇ ਕੋਈ ਨਹੀਂ ਕੀਤਾ ਓਕੇ ਬਾਈ ਜੀ ਥੈਂਕ ਯੂ ਥੈਂਕ ਯੂ ਜੀ ਲਾਈਨ ਨੰਬਰ 4 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਬਹੁਤ ਹੋ ਗਈਆਂ ਸਾਡੇ ਇਹ ਕਾਫੀ ਖਰਾਬ ਹੋ ਗਿਆ ਜਿਹੜਾ ਹੁਣ ਬਜਟ ਆ ਰਿਹਾ ਹੈ ਦਾ ਬਿਲੀਅਨ ਡਾਲਰ ਸਰਪਲਸ ਆ ਦੱਸੋ ਤੁਸੀਂ ਪਹਿਲਾਂ ਕਿਹਾ ਸੀ ਤੁਸੀਂ ਤੁਹਾਨੂੰ ਮੈਨੂੰ ਕੀ ਖਿਆ ਸਾਡੇ ਝੋਲੇ 'ਚ ਕਿੰਨੇ ਜਿਹੇ ਪੈਸੇ ਪਾਉਣੇ ਆ ਜੇ ਉਹ ਡੈਫਿਸਿਟ 'ਚ ਵੀ 2 ਬਿਲੀਅਨ ਦਾ ਏਅਰ ਫੇਅਰ ਹੈ ਇਹਦੇ ਪਿੱਛੇ ਨਹੀਂ ਜਾਣਾ ਚਾਹੀਦਾਗਾ ਮੈਂ ਵੀ ਕਹਿੰਦਾ ਆਣਾ ਤੇ ਤੁਸੀਂ ਰਿਪੀਟ ਕਰਦੇ ਰਹਿੰਦੇ ਹੋ ਉਸ ਗੱਲ ਨੂੰ ਵੀ ਅਸੀਂ ਆਪਣੇ ਆਉਣ ਲੀਆਂ ਆਉਣ ਲਈ ਕੰਡੇ ਖਿਲਾ ਰਹੇ ਜਿਹੜੇ ਅਸੀਂ ਆਪਣੇ ਲੋਕਾਂ ਨੂੰ ਚੁਣ ਜਿਹੜਾ ਤਾਂ ਕੁਆਲੀਫਾਈਡ ਪਰਸਨ ਹੈ ਜਿਹੜਾ ਚੰਗੀ ਤਰ੍ਹਾਂ ਉੱਥੇ ਜਾ ਕੇ ਗੱਲ ਕਰ ਸਕਦਾ ਬੋਲ ਸਕਦਾ ਉਹਨੂੰ ਤਾਂ ਜੀ ਸਦ ਵੋਟਾਂ ਪਾਓ ਜਿਵੇਂ ਇਸੇ ਹੋਏ ਜਾਂ ਆਪਣੇ ਫਿਰ ਨਾਸ ਤੋਂ ਨਾ ਵਾ ਉੱਥੇ ਬੰਦਾ ਜਿਹੜੇ ਜਿਹੜੇ ਬੰਦੇ ਬੋਲ ਸਕਦੇ ਆ ਤੇ ਜਿਹੜੇ ਬੰਦੇ ਮਰਨੇ ਆ ਤੇ ਤੇ ਜਾਣ ਵਾਲੇ ਆ ਉਹਨਾਂ ਨੂੰ ਫੁੱਫੜਾ ਮਾਸੜਾ ਤੇ ਪਲੀਜ਼ ਵੋਟਾਂ ਨਾ ਪਾਇਆ ਕਰੋ ਕਿਉਂਕਿ ਸਾਡਾ ਕੋਈ ਸਵਾਰਨਾ ਆਪਾਂ ਇਹਨਾਂ ਤੋਂ ਕੁਝ ਨਹੀਂ ਲੈਣਾ ਅਸੀਂ ਆਪਣੇ ਕੋਈ ਵਟ ਰੌਲਾ ਨਹੀਂ ਹੈ ਇੱਥੇ ਜਿਹੜੇ ਸਾਨੂੰ ਉਹ ਸਾਡੇ ਐਮਐਲਏ ਚਾਹੀਦੇ ਆ ਸਾਨੂੰ ਉਹ ਬੰਦੇ ਚਾਹੀਦੇ ਆ ਜਿਹੜੇ ਉੱਥੇ ਜਾ ਕੇ ਕੰਮ ਕਰਨ ਇਸੇ ਬੇਲੇ ਜਾਦੇ ਰਹਿ ਗਏ ਹੈਗੇ ਆ ਤੇ ਜਿਹੜੇ ਮੇਵਾ ਸਿੰਘ ਹੁਣੀਆਂ ਉਹ ਬਹੁਤ ਘਟ ਗਿਆ ਕੇ ਇੱਥੇ ਵਾਰਤੀ ਹੈ ਤੇ ਇਹ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ ਅਸੀਂ ਤਾਂ ਚਲੋ ਭੁੱਗ ਲਈਏ ਤੁਰ ਜਾਗੇ ਪਰ ਜਿਹੜੇ ਸਾਡੇ ਬੱਚਿਆਂ ਲਈ ਜੀ ਕੰਡੇ ਵੀ ਰਹੇ ਹਨ ਨਾ ਇਹਦਾ ਇਹਦਾ ਜਿਹੜਾ ਮੁਆਵਜ਼ਾ ਸਾਨੂੰ ਇਹ ਬਹੁਤ ਦੂਰ ਤੱਕ ਭਰਨਾ ਪੈਣਾ ਤੇ ਨਾਲੇ ਇੱਕ ਗੱਲ ਤੁਹਾਨੂੰ ਇੱਕ ਗੱਲ ਇਹ ਵੀ ਦੱਸਣੀ ਚਾਹਨਾ ਇਹ ਨੇ ਇਸਡੇ ਕਮਿਊਨਿਟੀ ਨੂੰ ਪਤਾ ਲੱਗ ਗਿਆ ਵੀ ਅਸੀਂ ਕਿੰਨੀ ਕਿ ਜੋਗੇ ਆ ਕਿੱਥੇ ਕਹਿ ਦੇ ਸਿਰਫ ਓਟਾ ਲੈਣ ਕੋਈ ਗੱਲ ਨਹੀਂ ਹੁੰਦੀ ਗੱਲ ਤਾਂ ਇਹ ਆ ਬੰਦੇ ਜਾਂਦੇ ਕੇ ਸੌਂਦੇ ਨਹੀਂ ਜਾਂਦੇ ਅੱਜ ਖਾੜਾ ਲਾ ਦਿਓ ਤਾਂ 10000 ਬੰਦਾ ਇਕੱਠਾ ਹੋ ਜਾਂਦਾ ਤੇ ਸਾਡੀਆਂ ਸਾਡੀਆਂ ਸਾਡੀਆਂ ਵੀ ਊਟਾਂ ਇਹ ਦੇਖਣ ਵਾਲੀਆਂ ਪਰ ਹਸਪੀਟਲ ਦੇ ਵਿੱਚ ਜਹ ਹੁਣ ਮਾਤਾ ਗੁਜਰੀ ਆ ਆਪਣਾ ਮਾਤਾ ਤ੍ਰਿਪਤਾ ਜੀ ਦਾ ਬਣਾਤਾ ਨਾਂ ਲਿਖ ਕੇ ਉਹ ਸਾਡਾ ਤਾਜ ਠੰਡਾ ਕਰਦੇ ਆ ਪਰ ਜਦੋਂ ਉੱਥੇ ਜਾ ਕੇ 10-10 ਘੰਟੇ ਵੇਟ ਕਰਨੀ ਪੈਂਦੀ ਹੈ ਨਾ ਤੇ ਫੇਰ ਪਰ ਲੱਗਦਾ ਅੱਖਾਂ ਦੇ ਸਾਹਮਣੇ ਬਜ਼ੁਰਗ ਦੀ ਡੈਥ ਹੋਈ ਹੈ ਪ੍ਰਿੰਸੀਪਲ ਸੀ ਉਹ ਇੱਥੇ ਵੇਟ ਕਰਦਾ ਸੀ ਤੇ ਡੈਥ ਹੋ ਗਈ ਹਾਰਟ ਅਟੈਕ ਹੋ ਗਿਆ ਕਿਉਂਕਿ ਇੱਥੇ ਅਵੇਲੇਬਲ ਨਹੀਂ ਸੀ ਵਾਲੇ ਅਪੰਨ ਮਰ ਦੀ ਵੇਟ ਕਰ ਰਿਆ ਸੀ ਹੋਰ ਬਹੁਤ ਏਦਾਂ ਦੇ ਕੇਸ ਹੈਗੇ ਜੀ ਦੱਸਣ ਲੱਗੋ ਤਾਂ ਬਹੁਤ ਟਾਈਮ ਚਾਹੀਦਾ ਪਰ ਗੱਲ ਇਹ ਆ ਵੀ ਸਾਡੇ ਕੋਲ ਕੋਈ ਚੁਆਇਸ ਨਹੀਂ ਆ ਹੁਣ ਸਾਡੇ ਕੋਲ ਇੱਕ ਬਦਲਾਅ ਦੀ ਚੁਆਇਸ ਆ ਉਈ ਰਾਤ ਨੂੰ ਚੂਜ਼ ਦਾ ਲੈਸਰ ਇਵਲ ਲੈਸਰ ਇਵਲ ਚੂਜ਼ ਮੈਂ ਨਹੀਂ ਕਹਿੰਦਾ ਵੀ ਐਨਡੀਪੀ ਵਾਲੇ ਵੀ ਬਹੁਤ ਦੇਰ ਤੇ ਹਨੋ ਪਰ ਇਹਨਾਂ ਦੇ ਵਿੱਚ ਸਾਨੂੰ ਕੰਪੈਰੀਸ਼ਨ ਕਰਨਾ ਪੈਣਾ ਵੀ ਜਿਹੜੇ ਕਾਸਟ ਦੇ ਵਿੱਚ ਡਾਊਨ ਕਲਾਸ ਲੋਕ ਆ ਜਿਹੜੇ ਮੀਡੀਅਮ ਤੋਂ ਥੱਲੇ ਲੋਕ ਆ ਜਿਹੜੇ 10 ਡਾਲਰ 15 ਡਾਲਰ ਤੇ ਕੰਮ ਕਰਨ ਵਾਲੇ ਉਹਨਾਂ ਨਾਲ ਕਿਹੜੀਆਂ ਪਾਰਟੀਆਂ ਖੜਦੀਆਂ ਰਹੀਆਂ ਇਹ ਸਾਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ ਜੇ ਬਾਹਰ ਨਾਲ ਸਿਰ ਮੋਟਾ ਸੁਧਾਰ ਆਉਣ ਦੀ ਮਤਲਬ ਆਸ ਹੈਗੀ ਆ ਤੋ ਦੇਖ ਕੇ ਵੋਟ ਪਾ ਕਰੋ ਇਹ ਨਾ ਦੇਖਿਆ ਕਰੋ ਵੀ ਮੈਂ ਬਿਜ਼ਨਸਮੈਨ ਬਣ ਗਿਆ ਜੇ ਕਹਾ ਕਟਰਾ ਨਹੀਂ ਮਸ਼ੀਨ ਲੈ ਲਈ ਚਾਰ 5 ਕਿਲ ਲਈ ਤਾਂ ਮੈਂ ਬਿਜ਼ਨਸਮੈਨ ਆ ਨਾ ਸੋਚ ਸਮਝ ਕਹਿਣ ਤੇ ਵੋਟ ਨਾ ਪਾਓ ਮੇਰਾ ਤਾਂ ਇਹ ਕਹਿਣਾ ਥੈਂਕ ਯੂ ਜੀ ਥੈਂਕ ਯੂ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਹਿਬ ਅੱਛਾ ਗੱਲ ਆ ਦੇਖੋ ਜੀ ਜਿਹੜਾ ਇਹ ਬੱਚੀ ਦੀ ਡੈਥ ਹੋਈ ਹੈ ਨਾ ਸਾਰੀ ਕਮਿਊਨਿਟੀ ਹੈ ਅੱਜ ਤਾਈਂ ਰੋਣਾ ਰੋ ਰਹੀ ਆ ਸਾਰੀ ਦੇ ਵਿੱਚ ਬੈਠੀ ਹੈ ਜਦੋਂ ਉਹਦੀ ਕਹਾਣੀ ਸੁਣੀਂਦੀ ਆ ਔਰ ਤੁਸੀਂ ਵੀ ਬੜੀ ਸਾਰੇ ਲੋਕ ਹੀ ਇਹ ਪ੍ਰਸੰਨ ਕਰ ਦਿੰਦੇ ਦਾ ਮੇਨ ਗੱਲ ਲਭੋ ਤੁਸੀਂ ਆਪਾਂ ਸੋਚਣੀ ਚਾਹੀਦੀ ਆ ਮੈਂ ਅੱਗੇ ਵੀ ਕਹਿਟਿਆ ਵਾਂ ਦੂਜੇ ਵੀ ਤੁਸੀਂ ਦੇਖੋ ਇਹ ਜਿਹੜਾ ਹੈਲਥ케ਅਰ ਸਿਸਟਮ ਆ ਇਸ ਸੋਵੀਅਤ ਦੇ ਇਹੇ ਦਾ ਬਣਿਆ ਅਜੇ ਤੋਂ 100 ਸਾਲ ਪੁਰਾਣਾ ਸੋਵੀਅਤ ਦਾ ਢਹਿ ਉਹ ਰਾਜ ਜਿਹੜਾ ਢਹਿ ਢੇਰੀ ਹੋ ਗਿਆ ਉਹ ਸੁਖਰੀਆਂ ਦਾ ਰਾਜ ਸੀ ਜਿਹੜਾ ਇਨੂੰ ਨਵੇਂ ਸਿਰੇ ਐਕਟ ਨੂੰ ਬਦਲ ਕੇ ਤੇ ਪ੍ਰਾਈਵੇਟਾਈਜੇਸ਼ਨ ਕਰਕੇ ਕਲੀਨਾਂ ਥਾਂ ਖੋਲ੍ਹਣੀਆਂ ਚਾਹੀਦੀਆਂ ਵਾ ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਖੁੱਲ ਚੁੱਕੀਆਂ ਬੜਾ ਵਧੀਆ ਉੱਥੇ ਹੱਦਕੇ ਸਿਸਟਮ ਇਲਾਜ ਕਰਦੇ ਆ ਜਿਹੜੇ ਗਰੀਬ ਆ ਜਿਨ੍ਹਾਂ ਕੋ ਨਹੀਂ ਮਹਿਗੇ ਉਹਨਾਂ ਦੀ ਵੀ ਸਰਕਾਰ ਮਦਦ ਕਰਦੀ ਆ ਉੱਥੇ ਇਸ ਵਜ੍ਹਾ ਕਰਕੇ ਜੀਏ ਤੇ ਪ੍ਰਾਈਵੇਟ ਹੈਲਥਕੇਅਰ ਸਿਸਟਮ ਖੁੱਲ ਜਾਣ ਜਿਹੜੀ ਐ ਲਾਈਨ ਲੱਗਦੀ ਆ ਨਾ ਜਿਹੜੀ ਵੀ 2-2 ਸਾਲ ਵਾਰੀ ਨਹੀਂ ਹੁੰਦੀ ਜੇ ਇਦੇ ਨੀਰ ਪੜਾ ਪੈ ਜੇ ਗੋਡਾ ਪਾਣਾ ਪੈ ਜੇ ਜਾਂ ਇਹ ਕੁਆਲੀਫਾਈ ਹੋ ਜੇ ਦੋ ਦੋ ਸਾਲ ਤਾਈ ਵਾਰੀ ਨਹੀਂ ਆਉਂਦੀ ਉਸੇ ਵੇਲੇ ਉਹ ਜਿਹੜੇ ਪ੍ਰਾਈਵੇਟ ਹੈਲਥ케ਅ ਦੇ ਵਿੱਚ ਚਲੇ ਜਾਣਗੇ ਤੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਵਾਸਤੇ ਬੜਾ ਸੌਖਾ ਹੋ ਜਾਊਗਾ ਉਹਨਾਂ ਦੀ ਵਾਰੀ ਛੇਤੀ ਆ ਜਾਊਗੀ ਸੋ ਇਹ ਜਿਹੜਾ ਹੈਲਥ케ਅ ਸਿਸਟਮ ਹੈ ਇਹਦੇ ਜਿੱਥੇ ਵੀ ਗਵਰਨਮੈਂਟ ਕੰਟਰੋਲ ਹੋ ਉਸ ਕੌਮ ਦਾ ਪੱਟਾ ਬਹਿ ਜਾਂਦਾ ਵਾ ਪ੍ਰਾਈਵੇਟ ਦੇ ਵਿੱਚ ਬਹੁਤ ਸਾਰਾ ਕੰਪੀਟੀਸ਼ਨ ਹੁੰਦਾ ਵਾ ਕੰਪੀਟੀਸ਼ਨ ਵਿੱਚ ਜਾ ਕੇ ਵਧੀਆ-ਵਧੀਆ ਜਿਹੜੀਆਂ ਸਵਾਵਾਂ ਜਿਹੜੀਆਂ ਵਾਂ ਉਹ ਕੌਮ ਨੂੰ ਦਿੱਤੀਆਂ ਜਾਂਦੀਆਂ ਇਹ ਸਿਸਟਮ ਦਾ ਹੈਲਥ케ਅ ਜਿੱਦੀ ਛੇਤੀ ਹੋ ਗਏ ਇਸ ਨੂੰ ਤੁਮ ਕਰਕੇ ਦੇ ਨਵੇਂ ਸਾਰੇ ਪ੍ਰਾਈਵੇਟ ਪ੍ਰਾਈਵੇਟੀ ਸਭ ਕੁਝ ਜਿਹੜਾ ਅਟਕ ਰਿਹਾ ਇਹ ਉਹਨਾਂ ਦੇ ਹੱਥਾਂ 'ਚ ਕੀਤਾ ਸੀ ਸਾਲ ਕ ਨੇੜੇ ਜਦ ਪ੍ਰਾਈਵੇਟ ਕਲੀਨਿਕ ਦੀ ਗੱਲ ਬੀਸੀ ਦੇ ਸੁਪਰੀਮ ਕੋਰਟ ਚੱਲ ਰਹੀ ਸੀ ਫਰਾਂਸ ਡਾਕਟਰ ਜਿਹੜਾ ਇੱਥੇ ਕਰਦਾ ਰਿਹਾ ਉਸਨੇ ਉਹਦੇ ਟੈਸਟਮਨੀ ਕੀਤੀ ਸੀ ਆਪਾਂ ਉਹਨੂੰ ਕਵਰ ਕੀਤਾ ਸੀ ਇਹ ਗੱਲ ਠੀਕ ਹੈ ਪ੍ਰਾਈਵੇਟ ਹੋ ਜਾਏ ਪ੍ਰਾਈਵੇਟ ਸਾਊਥ ਆਫ ਬਾਰਡਰ ਤੇ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਪਰ ਜੇ ਹੁਣ 2 150 ਡਾਲਰ ਦੇ ਵਿੱਚ ਮਿਲਦਾ ਹੀ ਕੱਖ ਨਹੀਂ ਉਹਦੇ ਵਿੱਚ ਜੇ 6 700 ਦੇ ਕੇ ਜੇ ਮਿਲਣ ਲੱਗੇ ਤਾਂ ਫਿਰ ਗੱਲ ਇਹੀ ਹੋਵੇ ਫਿਰ ਐਟ ਲੀਸਟ ਤਾਂ ਨਹੀਂ ਕਲਾ ਵਿੱਚ ਲੈ ਮਰਨਗੇ ਵਪਾਰਕਿਸ਼ਾ ਮੰਗਤਾ ਜੀ ਤੇ ਸੁਨੀਲ ਜੀ ਹੁਣੇ ਗੱਲ ਕਰਦੇ ਆ ਬਾਸ ਨੰਬਰ 2 ਤੁਸੀਂ ਏਅਰ ਤੇ ਹੋ ਜੀ ਹਰੂ ਸਸਿਓ ਸਸੀਕਲ ਜੀ ਹਾਂ ਜੀ ਫਿਰ ਪੈਂਟਕਸ ਦਾ ਮੇਰਾ ਵੀ ਸਨ ਥੋੜੇ ਜਿਹਾ ਦਿਨਾ ਬਈ ਸੀਗਾ ਤੇ ਉਹ ਮੇਰੀ ਵਾਈਫ ਮੇਰੀ ਉਹਨਾਂ ਕਿ ਉਹਨੂੰ ਕਿਹਨੂੰ ਸਪੈਸ਼ਲਿਸਟ ਹੈ ਕਿਉਂਕਿ ਸਾਡੇ ਮੈਸ ਕਰੀ ਵਾਈਫ ਨੇ ਫੋਨ ਕੀਤਾ ਮੇਰਾ ਸਨ ਵੀ ਰੋਂਦਾ ਹੈਗਾ ਵੀ ਨਾਰਮਲ ਨਹੀਂ ਹੋਣਾ ਵੀ ਕੁਝ ਰੋਂਗ ਲੱਗਦਾ ਸਾਨੂੰ ਤੇ ਗਈ ਡਾਕਟਰ ਨੇ ਉਹਦੀ ਕਹਿੰਦਾ ਜੇ ਤੁਸੀਂ ਕੁਝ ਘੰਟੇ ਲੇਟ ਹੋ ਜਾਂਦੇ ਵੀ ਬੀ ਡੇਂਜਰਸ ਹੀ ਉਹਨਾਂ ਨੇ ਦੋ ਤਿੰਨ ਘੰਟਾ ਵੀ ਜੀ ਸਾਰਾ ਕੁਝ ਉਹ ਕਰ ਕੀਤਾ ਰਿਹਾ ਆ ਉਹ ਜਿਹੜੇ ਆਪਣੇ ਅਨੋਰਾ ਸਿਸਟਰਸ ਵગેਰਾ ਆਪਣੀ ਪੰਜਾਬੀ ਬੋਲੀ ਦੀ ਪ੍ਰੋਟੈਕਸ਼ਨ ਕਰਨੀ ਪੰਜਾਬੀ ਕਲਚਰ ਦਾ ਤੇ ਖਿਆਲ ਆਪਣਾ ਆਪਾਂ ਵੀ ਪੰਜਾਬੀ ਕਲਚਰ ਤੋਂ ਬਿਨਾਂ ਪੰਜਾਬੀ ਬੋਲੀ ਦਾ ਵੀ ਆਪਾਂ ਕੀ ਕਰਨਾ ਹੈ ਜੇ ਆਪਾਂ ਆਪਣਾ ਕਲਚਰ ਇਹ ਲੋਕਾ ਸੰਕਰ ਜਿਹੜੇ ਆਪਣਾ ਐਂਟਰਟੇਨਮੈਂਟ ਵਗੈਰਾ ਹੈ ਇਹ ਵੀ ਜੋ ਫੈਕਟ ਦੇ ਅਸ ਵੀ ਆਪਾਂ ਨੂੰ ਕਰਨਾ ਚਾਹੀਦਾ ਖਤਮ ਹੋ ਰਹੀ ਹੈ ਨਾ ਕਿ ਆਪਾਂ ਓਪਨ ਚਾਹੀਦੀ ਮੈਂ ਇਹ ਕਹਿਣਾ ਚਾਹੁੰਦਾ ਠੀਕ ਹੈ ਜੀ ਧੰਨਵਾਦ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੇਖੋ ਜੀ ਜਿਹੜਾ ਨਾ ਇਹ ਹੈਲਥ케ਅਰ ਦਾ ਜਿਹੜਾ ਮਸਲਾ ਨਾ ਇਹ ਮੀਰਾ ਦੀ ਖੇਡ ਬਣ ਚੁੱਕਾ ਗਰੀਬਾਂ ਨੂੰ ਕੁਛ ਨਹੀਂ ਜਿੱਦਾਂ ਬਈ ਕੋਈ ਇਹਦੀ ਸੁਣਾਈ ਨਹੀਂ ਉਹ ਵੱਡੇ ਵੱਡੇ ਐਮਪੀਆਂ ਦੀ ਜਾਂ ਉਹਨਾਂ ਦੀ ਸੁਣਾਈ ਆ ਜਿੱਦਾਂ ਬਈ ਜਿਹੜੇ ਮੈਂ ਤਾਂ ਕਹਿੰਦਾ ਜਿਹੜੀ ਦਨੇਸ਼ਨ ਦੇ ਰਹੇ ਆ ਲੋਕੀ ਦਾਨ ਦੇ ਦਾਨ ਦੇ ਰਹਿਆ ਕੋਈ ਹਜ਼ਾਰ ਦੇਂਦਾ ਕੋਈ 1200 ਦੇਂਦਾ ਇਹ ਦਨੇਸ਼ਨ ਸਾਡੇ ਭਾਈਚਾਰੇ ਨੂੰ ਬੰਦ ਕਰਨੀ ਚਾਹੀਦੀ ਆ ਆਪਣਾ ਹਸਪੀਟਲ ਜਿੱਦਾਂ ਕਹਿ ਲਓ ਵੀ ਸਿੱਖੀ ਦਾ ਪ੍ਰਚਾਰ ਵਧੂਗਾ ਇਹਦੇ ਨਾਲ ਪੰਜਾਬੀ ਦਾ ਜਿੱਦਾਂ ਆਪਾਂ ਦਿਨ ਮਨਾ ਰਹੇ ਆ ਜੇ ਆਪਣਾ ਸਿੱਖ ਭਾਈਚਾਰਾ ਗੁਰਦੁਆਰੇ ਦੋ ਹਸਪੀਟਲ ਆਪਣੇ ਖੜੇ ਕਰ ਸਕਦੇ ਆ ਇਹ ਜਿਹੜੀਆਂ ਜਨਰੇਸ਼ਨਾਂ ਦੇਣੀਆਂ ਆਪਣਾ ਉੱਥੇ ਨਾਲ ਖਵਾ ਲੈਣਾ ਇੱਕ ਜਣੇ ਨੇ ਤੇ ਉਹ ਦੇਖਦੇ ਰਹਿ ਕਿ ਐਮਰਜੈਂਸੀ ਦੇ ਵਿੱਚ 12-12 ਘੰਟਿਆਂ ਦੀ ਵੇਟਿੰਗ ਕਰਨੀ ਆ ਉੱਥੇ ਡਾਇਰੈਕਟਰ ਬਣ ਜਾਣਾ ਆਪ ਜਾ ਕੇ ਉਹਨਾਂ ਲੱਖ ਡਾਲਰ ਲੈ ਲੈਣਾ ਮਨੀ ਉਹ ਆਪੋ ਵਿੱਚ ਖੇਡਦੇ ਆ ਤੁਹਾਡੇ ਪੈਸੇ ਨਾਲ ਜਿਹੜੇ ਤੁਸੀਂ ਦਾਨ ਦੇ ਰਹੇ ਆ ਤੇ ਉਹ ਦੇ ਦੇ ਉੱਤੇ ਆ ਜਾਂਦੇ ਦੇ ਦੇ ਦੋ ਜੀ ਇੰਨੇ ਭਾਵਕ ਹੋ ਕੇ ਸਾਡੇ ਸਾਰੇ ਜਿੱਦਾ ਕਹ ਲੋ ਵੀ ਵੱਡੇ ਟਰੱਕਾਂ ਵਾਲੇ ਜਾਂ ਟੈਕਸੀਆਂ ਵਾਲੇ ਭਾਵਕ ਹੋ ਕੇ ਜਿਹੜੇ ਚੱਲਦੇ ਚੱਲਦੇ ਉਹ ਵੀਜੇ ਤੋਂ ਦੇਂਦੇ ਮੈਂ ਤਾਂ ਕਹਿੰਦਾ ਵੀ ਕਟਆਫ ਕਰਨੀ ਚਾਹੀਦੀ ਜਿਹੜੀ ਇਹ ਬੱਚੀ ਦੀ ਜਾਨ ਗਈ ਆ ਤੇ ਇਹਨੇ ਤਾਂ ਹਲੂਣਾ ਦਿੱਤਾ ਸਾਰੀ ਕਮਿਊਨਿਟੀ ਨੂੰ ਜਿੱਦਾਂ ਕਹਿ ਲਓ ਤੇ ਉਹਨਾਂ ਦੇ ਜੂਨ ਉਹ ਜਿੱਦਾਂ ਭਈ ਇੱਥੇ ਬੀਸੀ ਦੀ ਉਹਦੀ ਜ਼ਿੰਮੇਵਾਰੀ ਆ ਪਰ ਉਹ ਸੈਂਟਰ ਨੂੰ ਦੋਸ਼ ਦੇ ਦਾਣਾ ਜਿਹੜਾ ਠੇ ਹੋਵੇ ਚਾਹੇ ਚਾਹੇ ਇਮੀਗ੍ਰੇਸ਼ਨ ਦਾ ਮਸਲਾ ਹੋਵੇ ਇੱਕ ਦੂਜੇ ਨੂੰ ਦੋਸ਼ ਦੇਂਦੇ ਸੈਂਟਰ ਦਾ ਮਾਮਲਾ ਆ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਬੋਰਡ ਦੇ ਵਿੱਚ ਜੋ ਵੀ ਇਹ ਘਟਨਾ ਵਾਪਰੀ ਆ ਇਹ ਜਦ ਕਲੋ ਇਹ ਇਹ ਸੋਚਣਾ ਪਊਗਾ ਸਾਰਿਆਂ ਨੂੰ ਤੇ ਆਪਣਾ ਜੇ ਤੁਸੀਂ ਕੋਸ਼ਿਸ਼ ਕਰਕੇ ਜੋ ਆਪਣਾ ਹਸਪੀਟਲ ਖੋਲੋਗੇ ਤਾਂ ਤੁਹਾਡੀ ਜਦਾ ਗੋਰੇ ਵੀ ਉੱਥੇ ਆਉਣਗੇ ਤੁਹਾਡੀ ਕਮਿਟੀ ਦਾ ਨਾਮ ਹੋਊਗਾ ਇੱਦਾਂ ਡੋਨੇਸ਼ਨਾਂ ਦੇ ਕੇ ਦੋ ਚਾਰ ਜਾਣੇ ਆਪਣਾ ਨਾਮ ਲਿਖਾ ਲੈਂਦੇ ਉੱਥੇ ਜਾ ਤਾਂ ਜਿਹੜੇ ਡੋਨੇਸ਼ਨ ਆ ਉਹ ਵਿਚਾਰੇ ਉਹਦੇ ਦਿੰਦੇ ਮੈਂ ਕਹਿੰਦਾ ਵੀ ਇਸ ਜੰਗਲ ਦੇ ਵਿੱਚ ਕੋਈ ਵੀ দান ਨਾ ਦੇਵੇ ਕੋਈ ਫਸਣ ਨਾ ਲੋਕੀ ਮੈਂ ਇਹ ਸਾਰੇ ਰੈਡ ਤੇ ਕਹੂੰਗਾ ਇੰਟਰਨੈਟ ਤੇ ਵੀ ਜਿੰਨੇ ਵੀ ਰੈਡ ਆ ਮੈਂ ਜਿੰਨਾ ਵੀ ਹੋਇਆ ਵੀ 10% ਦਾ ਤਾਂ ਫਰਕ ਪਾਊਗਾ ਹੀ ਇਸ ਕਰਕੇ ਉਹ ਲੁੱਟ ਖਸੁੱਟ ਹੋ ਰਹੀ ਆ ਇਹ ਸਾਰੀ ਇਹ ਦਾਨ ਦੇਣਾ ਨਹੀਂ ਚਾਹੀਦਾ ਡੋਨੇਸ਼ਨ ਦੇਣੀ ਨਹੀਂ ਚਾਹੀਦੀ ਮੇਰੇ ਹਿਸਾਬ ਨਾਲ ਇਹ ਗਵਰਨਮੈਂਟ ਦੀ ਜ਼ਿੰਮੇਵਾਰੀ ਆ ਹਸਪੀਟਲ ਲੋਕਾਂ ਨੂੰ ਟੈਕਸ ਕਰਦੇ ਆ ਬਾਹਰੋਂ ਇਮੀਗ੍ਰੇਸ਼ਨ ਇਹ ਰਹੇ ਆ ਤਾਂ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹਸਪੀਟਲ ਚਲਾਉਣੇ ਜੋ ਸਿਸਟਮ ਪਹਿਲਾਂ ਸੀ ਉਹ ਰਿਹਾ ਨਹੀਂ 20 ਸਾਲ ਜੋ ਪਹਿਲਾਂ ਸੀ ਡਾਕਟਰ ਟਰਾਂਦਾ ਸੀ ਹੁਣ ਉਹ ਸਭ ਹਰਦੀਆਂ ਜਾ ਰਹੀਆਂ ਜਾਂ ਕਲੀਨਿਕ ਦੇ ਉੱਤੇ ਇਹਨਾਂ ਨੂੰ ਹੋਰ ਵੀ ਮਤਲਬ ਵਧੀਆ ਕਰਨੇ ਚਾਹੀਦੇ ਆ ਉੱਥੇ ਇਲਾਜ ਹੋ ਸਕੇ ਇਹ ਇਹ ਮਤਲਬ ਇਹਨਾਂ ਨੂੰ ਆਪਣਾ ਸਿਸਟਮ ਨੂੰ ਠੀਕ ਕਰਨਾ ਚਾਹੀਦਾ ਦਾਨ ਆ ਇਹ ਕੋਈ ਏਦਾਂ ਏਦਾਂ ਦਾਨ ਨਾ ਨਹੀਂ ਹੋਣਾ ਉਹ ਆਪਣੇ ਪੈਸੇ ਗਵਾ ਰਹੇ ਲੋਕ ਇਹ ਨਹੀਂ ਹੋਣਾ ਚਾਹੀਦਾ ਸਸਰੀ ਕਾਲ ਜੀ ਜੀ ਸੁਨੀਲ ਜੀ ਲਾਈਨ ਨੰਬਰ 4 ਸਸਰੀ ਕਾਲ ਜੀ ਫਿੰਗਰ ਸਸਰੀ ਕਾਲ ਬਾਈ ਜੀ ਮੈਂ ਗੱਲ ਕਹਿਣੀ ਚਾਹੁੰਗਾ ਇੱਕ ਬੰਦੇ ਵੈਸੇ ਪਹਿਲੀ ਗੱਲ ਮੈਂ ਕਹਿ ਕਿ ਜਿਹੜੀ ਬੱਚੀ ਦੀ ਡੈਕਟ ਹੋਈ ਆ ਸੱਚ ਸਰਕਾਰ ਤੇ ਜ਼ੋਰ ਪਾਣਾ ਚਾਹੀਦਾ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਦੇਖੋ ਬਸ ਫਸਟ ਆਫ ਆਲ ਜੇਕਰ ਆਪਾਂ ਕਿਸੇ ਚੀਜ਼ ਦਾ ਹੱਲ ਲੱਭਣਾ ਉਹਦੇ ਵਾਸਤੇ ਗਵਰਨਮੈਂਟ ਤੇ ਫਿਰ ਇਹ ਪ੍ਰੈਸ਼ਰ ਬਣਾਈਏ ਕਿ ਇਨਵੈਸਟੀਗੇਸ਼ਨ ਹੋਵੇ ਕਿਹੜੇ ਸਰਕਮਸਟੈਂਸਸ ਬੱਚੇ ਦੀ ਡੈਥ ਹੋਈ ਆ ਜਨਤਕ ਇੱਕ ਪਬਲਿਕ ਇਨਕੁਆਰੀ ਹੋਣੀ ਚਾਹੀਦੀ ਆ ਔਰ ਦੂਜੇ ਲੈਵਲ ਤੇ ਜਿਵੇਂ ਤੁਸੀਂ ਗਏ ਕਿ ਹਟੇ ਹੋ ਕਿ ਵੋਟਾਂ ਇੱਕ ਮੌਕਾ ਅੰਦਾ ਜਿੱਥੇ ਤੁਸੀਂ ਆਪਣੀਆਂ ਜਿਹੜੀਆਂ ਗੱਲਾਂ ਨੇ ਉਹ ਜਿਹੜੇ ਚੁਣੇ ਵਾਲੇ ਬੰਦੇ ਆ ਜਦੋਂ ਆਉਂਦੇ ਆ ਉਹਨਾਂ ਦੇ ਚੋਣ ਮਨੋਰਥ ਪੱਤਰ ਹੁੰਦੇ ਆ ਉਹਦੇ ਵਿੱਚ ਤੁਸੀਂ ਸਾਝ ਪਾ ਸਕਦੇ ਹੋ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਆ ਪਰ ਹੁੰਦਾ ਜੇ ਤੁਸੀਂ ਪਹਿਲਾਂ ਗੱਲ ਕੀ ਮੈਂ ਇੱਕ ਗੱਲ ਰੇਡੀਓ ਤੇ ਸ਼ੇਅਰ ਹੀ ਕਰਨਾ ਚਾਹੁੰਦਾ ਕਿ ਜਦੋਂ ਦੇ ਆਪਾਂ ਆਏ ਆ ਉਸੇ ਸਾਲ ਜਿਹੜਾ ਫੈਡਰਲ ਦੇ ਵਿੱਚ ਪਹਿਲੀ ਵਾਰੀ ਆਪਣੀ ਬੰਦੇ ਗਏ ਸੀ ਜਿਨ੍ਹਾਂ ਵਿੱਚੋਂ ਹਰਬੰਸ ਸਿੰਘ ਢਾਲੀਵਾਹ ਹਰਬ ਢਾਲੀਵਾਹ ਜਿਹੜਾ ਕਹਿੰਦੇ ਸੀਗੇ ਉਹਨਾਂ ਦੀ ਮੱਲੀ ਉਹਨਾਂ ਦੀ ਐਂਟਰੀ ਹੋਈ ਸੀ ਮੈਂ ਕਹਿੰਦਾ ਉਦੋਂ ਤੋਂ ਲੈ ਅੱਜ ਤੱਕ ਇੱਕ ਵੀ 24 ਮੈਨੂੰ ਅਜਿਹਾ ਕਾਨੂੰਨ ਫੈਡਰਲੀ ਤੇ ਪ੍ਰਵਿੰਸ਼ਰੀ ਮੈਨੂੰ ਇਹ ਦਿਖਾਓ ਜਿਹੜਾ ਕਿ ਆਪਣੇ ਬੰਦਿਆਂ ਨੇ ਆਪਣੀ ਕਮਿਊਨਿਟੀ ਦੇ ਹੱਥ ਵਾਸਤੇ ਪਾਸ ਕਰਾਇਆ ਸਿਰਫ ਇੱਕ ਵੀ ਦੱਸ ਦਿਓ ਰੀਜ਼ਨ ਉਹਦਾ ਇਹ ਆ ਕਿ ਸਾਡੀਆਂ ਜਿਹੜੀਆਂ ਕਮਜ਼ੋਰੀਆਂ ਨੇ ਉਹ ਪੋਲਿਟਿਸ਼ੀਅਨਾਂ ਨੇ ਪਛਾਣ ਲਈਆਂ ਨੇ ਤੇ ਆਪਣੇ ਲੋਕਾਂ ਨੂੰ ਦੱਸਤੀਆਂ ਵੀ ਅਸੀਂ ਕੀ ਆ ਅਸੀਂ ਪੋਲਿਟਿਕਲੀ ਪਵਿਰ ਹੈਗੇ ਆ ਪਰ ਜਦੋਂ ਕੋਈ ਵੀ ਥੋੜੀ ਹੁੰਦੀ ਆ ਉਹ ਉਹ ਵੀ ਕੌਨਸ਼ੀਅਸਲੀ ਨਹੀਂ ਕਰਦੇ ਮੁੱਦਿਆਂ ਦੇ ਆਧਾਰ ਤੇ ਨਹੀਂ ਕਰਦੇ ਅਸੀਂ ਪਰਸਨੈਲਿਟੀਆਂ ਦੇ ਬੈਕਗ੍ਰਾਉਂਡ ਦੇ ਜ਼ਿਲ੍ਹਿਆਂ ਦੇ ਜਾਤਾਂ ਤੇ ਧਰਮ ਦੇ ਆਧਾਰ ਤੇ ਕਰਨ ਲੱਪੇ ਔਰ ਜਿਹੜੀ ਇਹ ਗੱਲ ਕਹਿੰਦੇ ਕਿ ਸੋਸ਼ਲ ਸਿਸਟਮ ਜੇ ਚੇਂਜ ਕਰਤੀ ਜਾਵੇ ਕਿ ਇਹਨੂੰ ਪ੍ਰਾਈਵੇਟਾਈਜ਼ ਕਰਦੇ ਪ੍ਰਾਈਵੇਟਾਈਜ਼ੇਸ਼ਨ ਹੱਲ ਨਹੀਂ ਹੈਗਾ ਇਹਦਾ ਜਿਹੜਾ ਸਿਸਟਮ ਦੇ ਉੱਤੇ ਇੰਪਰੋਵਾਈਜ਼ੇਸ਼ਨ ਦੀ ਲੋੜ ਆ ਇਹਨੂੰ ਕਿਸ ਤਰੀਕੇ ਸੁਧਾਰਿਆ ਜਾਵੇ ਸਸਤ੍ਰ ਵਿਪਰਤੀ ਨੂੰ ਕਿਵੇਂ ਵਿਧਾਇਆ ਜਾਵੇ ਜਾਂ ਜਿਵੇਂ ਹਸਪਤਲਾਂ ਦੀ ਲੋੜ ਆ ਹੁਣ ਮੁੱਦੇ ਆਣੇ ਆ ਪ੍ਰਵਿੰਸ਼ਨਲ ਇਲੈਕਸ਼ਨ ਆਣੀਆਂ ਨੇ ਤੁਸੀਂ ਜਿਹੜੀਆਂ ਵੀ ਸਰਕਾਰਾਂ ਨੂੰ ਵੋਟਾਂ ਪਾਣੀਆਂ ਨੇ ਉਹਨਾਂ ਵਾਸਤੇ ਮੁੱਦਾ ਬਣਾ ਦਿਓ ਵੀ ਸਾਨੂੰ ਵੀ ਥੇਲ ਦੀ ਲੋੜ ਆ ਉਹਨਾਂ ਕੋਲੋਂ ਇਕਰਾਰ ਲਵੋ ਉਹਨੂੰ ਰਿਕਾਰਡ ਕਰੋ ਔਰ ਪ੍ਰੈਸ਼ਰ ਬਣਾਓ ਲੋੜ ਇਹ ਆ ਕਿ ਉਸ ਬੱਚੀ ਦੀ ਡੈਟਾ ਸੋਸ਼ਲ ਸਿਸਟਮ ਨੂੰ ਸੁਧਾਰ ਦੀ ਲੋੜ ਹੈ ਕਿ ਸਾਨੂੰ ਵੀ ਕੌਨਸ਼ੀਅਸਲੀ ਲੋੜ ਆ ਕਿ ਅਸੀਂ ਇਸ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕਿਵੇਂ ਸ਼ਾਮਲ ਹੋਣਾ ਧੰਨਵਾਦ ਜੀ થેન્ક યુ બાઈજી બપારક સંદેશ લાઈન નંબર 4 રાજવીર ਸਿੰਘજી हेलो ગર્થા સાફિયા સસ્તીકાલજી ઓ ગર્થા મે જેڑا સિસ્ટમ બનાયા હોયા ના કે કેપિટલિઝમ ਦੇ સાઈડ ઇફેક્ટ ਨੇ સારે ચાહે ઓ મેડિકલ સિસ્ટમ આ ચાહે ઓ ઇકોનોમિક સિસ્ટમ આ એ કુછક લોકા નો પ્રોફિટ કરતે હૈ ਬਣਾਏ ਹੋਏ ਨੇ ਸਿਸਟਮ ਹੈ ਹੁਣ ਤੁਸੀਂ ਨੋਟ ਕੀਤਾ ਹੋਵੇ ਮੈਡੀਕਲ ਸਿਸਟਮ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਲੋਕਾਂ ਦੀ ਟ੍ਰੀਟਮੈਂਟ ਲਈ ਡਿਜ਼ਾਈਨ ਕੀਤਾ ਹੋਇਆ ਹੈ ਲੋਕਾਂ ਨੂੰ ਕਿਉਰ ਲਈ ਨਾਲ ਦੱਸਦੇ ਸੀ ਕਿਹੜੀ ਚੀਜ਼ ਖਾਣ ਨਾਲ ਕੀ ਬਿਮਾਰੀ ਆ ਲੋਕਾਂ ਦੀ ਸਿਹਤ ਬਹੁਤ ਧਿਆਨ ਦਿੱਤਾ ਜਾਵੇ ਵੀ ਪਹਿਲੀ ਗੱਲ ਤਾਂ ਬਿਮਾਰੀਆਂ ਇੰਨੀਆਂ ਕਿਉਂ ਲੱਗ ਰਹੀਆਂ ਨੇ ਅੱਜ ਕੱਲ੍ਹ ਉਹਦੇ ਨਾਲ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਬੰਦ ਕਰਨੀਆਂ ਪੈਣੀਆਂ ਨੇ ਪਿੱਛੇ ਜੇ ਆਪਾਂ ਹੁਣ ਵੀ ਦੇਖ ਰਹੇ ਆ ਰੌਲਾ ਪੈ ਰਿਹਾ ਜਿਹੜੀ ਫੂਡ ਲੇਬਲਿੰਗ ਕੰਪਨੀਆਂ ਨੇ ਫੂਡ ਵਾਲੀਆਂ ਕੰਪਨੀਆਂ ਨੇ ਉਹ ਰੌਲਾ ਪਾ ਰਹੀਆਂ ਨੇ ਵੀ ਅਸੀਂ ਲੇਬਲ ਦੇ ਉੱਤੇ ਫਲਾਨੀ ਫਲਾਨੀ ਚੀਜ਼ ਡਿਸਕਲੋਜ਼ ਨਹੀਂ ਕਰਨੀ ਔਰ ਦੂਸਰੇ ਪਾਸੇ ਰੌਲਾ ਪੈ ਰਿਹਾ ਉਹ ਕਹਿੰਦੇ ਡਿਸਕਲੋਜ਼ ਕਰੋ ਹੁਣ ਪਹਿਲੀ ਗੱਲ ਤਾਂ ਇਹ ਆ ਵੀ ਜੇ ਆਪਾਂ ਲੋਕਾਂ ਨੂੰ ਹੈਲਥੀ ਕਰਨਾ ਜਦੋਂ ਉਹਨਾਂ ਨੇ ਲੇਬਲ ਫੂਡ ਦੀ ਲੇਬਲਿੰਗ ਪ੍ਰੋਪਰ ਕਰਨੀ ਸ਼ੁਰੂ ਕਰਤੀ ਲੋਕਾਂ ਨੇ ਅੱਧੀਆਂ ਉਹ ਚੀਜ਼ਾਂ ਖਾਣੀਆਂ ਛੱਡ ਦੀਆਂ ਜਿਹੜੀਆਂ ਡੱਬੇ ਵਾਲੇ ਫੂਡ ਦੇ ਵਿੱਚ ਪ੍ਰੀਜ਼ਰਵੇਟਿਵ ਜਾਂ ਕੈਮੀਕਲਸ ਪਾਏ ਹੋਏ ਨੇ ਹੁਣ ਸਾਰਾ ਕ ਹੁਣ ਆਪਾਂ ਕਹਿੰਦੇ ਆ ਵੀ ਦੁੱਧ ਇੱਥੇ ਸਸਤਾ ਕੱਟ ਨਹੀਂ ਹੁੰਦਾ ਕਿਉਂਕਿ ਡੇਰੀ ਫਾਰਮਰਾਂ ਦੀਆਂ ਮਨੋਪਲੀਆ ਆ ਲੌਬੀ ਸਿੱਦੇ ਤੱਕਲੇ ਤੱਕਲੇ ਨੇ ਉਹਨਾਂ ਦੇ ਉਹ ਜਾਣ ਨਹੀਂ ਦਿੰਦੇ ਟਾਊਨ ਅੱਛਾ ਹੁਣ ਉਹਨਾਂ ਚੀਜ਼ਾਂ ਨੂੰ ਇਹਨਾਂ ਬਣਾਏ ਹੋਏ ਨੇ ਸਪਲਾਈ ਮੈਨੇਜਮੈਂਟ ਕਹਿੰਦੇ ਉਹਨੂੰ ਹੁਣ ਸਪਲਾਈ ਦਾ ਮਤਲਬ ਕੀ ਹੁੰਦਾ ਜੇ ਦੁੱਧ ਜ਼ਿਆਦਾ ਵੱਧ ਗਿਆ ਮਾਰਕੀਟ ਦੇ ਵਿੱਚ ਤਾਂ ਦੁੱਧ ਦੀ ਕੀਮਤਾਂ ਆ ਜਾਣੀਆਂ 2013 ਦੇ ਵਿੱਚ ਇਹਨਾਂ ਨੇ 1 ਲੱਖ ਲੀਟਰ ਤੋਂ ਉੱਪਰ ਦੁੱਧ ਡੋਲਿਆ ਜਿਵੇਂ ਆਪਾਂ ਇੰਡੀਆ ਕਈ ਸੁਣਦੇ ਉਹਨੇ ਕਾਂਕਰ ਸਿੜਤੀ ਸਮੁੰਦਰ ਚ ਉਹਨਾਂ ਨੇ ਇਹ ਸਪਲਾਈ ਮੈਨੇਜਮੈਂਟ ਦੇ ਚੱਕਰ ਨੇ ਜਦੋਂ ਮਾਰਕੀਟ ਦੇ ਵਿੱਚ ਕਿਸੇ ਚੀਜ਼ ਦੀ ਜਿਆਦਾ ਕਰ ਦਿੱਤਾ ਜਾਂਦਾ ਤਾਂ ਕਿ ਪਿੱਛੇ ਫਰਕ ਨਾ ਪਾਉਦੇ ਪ੍ਰੋਫਿਟ ਬੇਸਡ ਕੰਪਨੀਆਂ ਨੇ ਉਹਨਾਂ ਦੀ ਜਦੋਂ ਡਾਊਨ ਆਊਗਾ ਕੰਮ ਉਹਨਾਂ ਦੀ ਯਕੀਨਤਾ ਡਾਊਨ ਆ ਗਈਆਂ ਤਾਂ ਉਹਨਾਂ ਦਾ ਸਰਵਾਈਵ ਨਹੀਂ ਕਰ ਹੋਣਾ ਪ੍ਰੋਫਿਟ ਘਟ ਜਾਣਾ ਇਹ ਸਾਰਾ ਕੁਝ ਇੱਕ ਦੂਜੇ ਨਾਲ ਕਨੈਕਟਡ ਆ ਇਹ ਕੈਪੀਟਲਿਸਟ ਕੰਟਰੀਆਂ ਦੇ ਸਾਈਡ ਇਫੈਕਟ ਨੇ ਕੈਪੀਟਲਿਸਟ ਇਕਨੋਮੀਆ ਦੇ ਕਿ ਕੱਲੇ ਹੈਲਥ ਸਿਸਟਮ ਨੂੰ ਓਵਰਹਾਲ ਕੀਤੇ ਤੇ ਕੁਝ ਨਹੀਂ ਹੋਣਾ ਇਹ ਤਾਂ ਸਾਰੇ ਪਾਸੇ ਇਫੈਕਟ ਹੋਊਗਾ ਕਿਤੇ ਨਾ ਕਿਤੇ ਵਿੱਚੇ ਫਾਈਨੈਂਸ ਸਿਸਟਮ ਵੀ ਸਾਰਾ ਕਰਪਟ ਹੋਇਆ ਰੌਲਾ ਪਾਉਂਦੇ ਉਹ ਜੇ ਜ਼ਿਆਦਾ ਉਹਨਾਂ ਨੂੰ ਪ੍ਰੈਸ਼ਰ ਕਹਾਂਗੇ ਉਹਨਾਂ ਨੇ ਰੌਲਾ ਪਾ ਲੈਣਗੇ ਮਾੜਾ-ਮੋਟਾ ਪਰ ਚੇਂਜੇਸ ਨਹੀਂ ਆ ਸਕਦੇ ਹੈਗੇ ਕਿਤੇ ਵੀ ਟੋਟਲ ਓਵਰਹਾਲ ਤੋਂ ਬਿਨਾ ਉਹ ਰੌਲਾ ਪਾ ਕੇ ਬਹਿ ਜਾਣਗੇ ਉੱਥੇ ਅੱਧੀ ਗੱਲਾਂ ਤਾਂ ਉਹਨਾਂ ਨੂੰ ਖੋਜੋ ਨਹੀਂ ਪਤਾ ਉਹਨਾਂ ਨੂੰ ਬਿਠਾ ਦਿੱਤਾ ਪਿੱਛੇ ਏਡੇ ਗਲਟੋ ਬੈਠ ਕੇ ਤੁਸੀਂ ਜਿਹੜੇ ਇਕਨੋਮਿਸਟ ਨੇ ਫਿਸਕਲ ਪਾਲਿਸੀਆਂ ਫਾਈਨੈਂਸ਼ੀਅਲ ਪਾਲਿਸੀਆਂ ਬਣਾਉਂਦੇ ਆ ਜਿਹੜਾ ਪੈਨਲ ਬੈਠਾ ਹੁੰਦਾ ਰਾਉਂਡ ਟੇਬਲ ਤੇ ਉਹ ਦੱਸਦਾ ਇਹਨਾਂ ਨੂੰ ਵੀ ਓਕੇ ਵੀ ਆ ਚੱਕ ਤੇਰਾ ਪੇਪਰ ਆ ਚੱਕ ਤੇਰਾ ਪੇਪਰ ਤੂੰ ਜਾ ਕੇ ਆ ਬੋਲਣਾ ਫਲਾਣੇ ਜਦੋਂ ਵੋਟਾਂ ਮੰਗਣ ਜਾਣੀਆਂ ਤੂੰ ਆ ਬੋਲਣਾ ਜਾ ਕੇ ਇਹਨਾਂ ਨੂੰ ਇਹਨਾਂ ਕੋਲ ਥੈਂਕ ਯੂ ਜੀ ਥੈਂਕ ਯੂ ਬਾਈ ਬਾਈ ਜੀ ਅਜੀਸੀ ਰਿਕ ਤੋਂ ਆਪਣੇ ਬੱਚੀ ਦਾ ਜਿਹੜਾ ਹੋਇਆ ਮੈਨੂੰ 1 ਵੀਕ ਹੋ ਗਿਆ ਸਾਰੇ ਰਿਪੋਰਟਾਂ ਦੇ ਕਿੰਨੀ ਇਹ ਤੇ ਗੱਲਬਾਤ ਹੋਈ ਆ ਇੱਕ ਗੱਲ ਦੇਖੋ ਵੀ ਆਪਣੇ ਸੂਬੇ ਦੇ ਕੋਈ ਵੀ ਦੇਖੋ ਤੁਸੀਂ ਆਪਣਾ ਨੁਮਾਇੰਦਾ ਬੋਲਿਆ ਵੀ ਅਸੀਂ ਇਹਦੇ ਬਾਰੇ ਸੋਚਾਂਗੇ ਜਾਂ ਇਹਦੇ ਬਾਰੇ ਵਿਚਾਰ ਕਰਾਂਗੇ ਤੇ ਜਦੋਂ ਦੇਖਦੇ ਹੋ ਤੁਸੀਂ ਆਪ ਦੇ ਬਾਰੇ ਕੋਈ ਗੱਲ ਕਰਨੀ ਹੁੰਦੀ ਆ ਬਾਰੇ ਵੀ ਵੋਟਾਂ ਦਿੰਦੀਆਂ ਜਾਂ ਉਹ ਗੱਲ ਹੁੰਦੀ ਆ ਫਿਰ ਪੂਰੇ ਪੂਰੇ ਟੌਕ ਸ਼ੋਪੀ ਟੌਕ ਸ਼ੋਪ ਪੂਰੇ ਦੇ ਪੂਰੇ ਬਣਵਾ ਕੇ ਵੀ ਰੱਖ ਲੈਂਦੇ ਆ ਫਿਰ ਰੋਜ਼ ਇਹਨਾਂ ਕੋਲ ਟਾਈਮ ਵੀ ਆ ਹੁਣ ਇੱਕ ਵੀ ਬੰਦਾ ਨਹੀਂ ਆ ਜਿਹਨੇ ਮਾੜਿਆ ਕਦੇ ਕੋਈ ਹੌਸਲਾ ਹੀ ਦਿੱਤਾ ਕਿ ਆਪਣੇ ਨਮਾਇਦੇ ਆਪਾਂ ਚੁਣ ਕੇ ਭੇਜਿਆ ਇਹ ਛੋਟੀ ਗੱਲ ਠੀਕ ਆ ਬਿਲਕੁਲ ਵੀ ਇਹ ਆਪਣੀ ਜਿਹੜੀ ਪਾਪੂਲੇਸ਼ਨ ਆ ਉਹਦੇ ਵਿੱਚ ਇਹਨਾਂ ਨੂੰ ਨਮਾਇਦੇ ਚਾਹੀਦੇ ਆ ਉਹਦੇ ਵਾਸਤੇ ਆਪਣਾ ਉਹ ਫਾਇਦਾ ਲੈ ਰਹੇ ਉਹਨਾਂ ਨੇ ਸੀਟਾਂ ਪੂਰੀਆਂ ਕਰਦੀਆਂ ਇਥੋਂ ਕਿ ਜੀ ਗੱਲ ਉਹਨਾਂ ਨੇ ਆਪਣੀ ਗੱਲ ਕਦੇ ਵੀ ਨਹੀਂ ਕਰਨੀ ਉਹ ਜਦੋਂ ਵੀ ਜੱਟ ਜਾਂਦੇ ਦੂਜੇ ਪਾਸੇ ਚ ਜਾ ਕੇ ਬਹਿ ਜਾਂਦੇ ਆ ਉੱਥੇ ਜਾਂਦੇ ਆ ਕਿ ਜਿਨ੍ਹਾਂ ਨੇ ਵੱਡੇ ਵੱਡੇ ਡਿਵੈਲਪਰਾਂ ਨੇ ਪੈਸੇ ਦਿੱਤੇ ਨੇ ਸਾਡੀ ਗੱਲ ਕਰੋ ਤੇ ਆਪਣੀ ਗੱਲ ਕਰਦੇ ਹੋ ਜਦ ਵੀ ਉਹਨਾਂ ਦਾ ਹੱਥ ਘੁੱਟ ਲੈਂਦੇ ਵੀ ਗੱਲ ਤਾਂ ਥੋੜੀ ਕਰਨੀ ਇਹਨਾਂ ਨੂੰ ਤਾਂ ਚੁੱਪੇ ਕਰਾਉਣਾ ਅਸਲ 'ਚ ਗੱਲ ਉਹਨਾਂ ਨਹੀਂ ਕਦੇ ਵੀ ਉਹਨਾਂ ਨੇ ਆਪਣੀ ਗੱਲ ਕਰਨੀ ਹੀ ਨਹੀਂ ਹੈਗੀ ਥੈਂਕ ਯੂ ਜੀ ਰਾਜ ਲਾਈਨ ਨੰਬਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਬੜਵੈ ਜੀ ਦਾ ਪਹਿਲਾਂ ਨਾ ਭਾਈ ਸਭ ਕਹਿ ਗਿਆ ਨਾ ਪੁਰਾਣੇ ਬਿਯਾਰਗੋ ਵਗੈਰਾ ਉਹ ਤੁਹਾਡੀ ਨਬਜ਼ ਆ ਤੁਹਾਡੀਆਂ ਅੱਖਾਂ ਦੇਖਦਾ ਹੁੰਦਾ ਕੀ ਆ ਬੜਾ ਕੀ ਗੱਲ ਆ ਇੱਥੇ ਯਾਰ ਇਹ ਨਾ ਪਤਾ ਲੱਗਦਾ ਮੇਰਾ ਗ੍ਰੈਂਡਫਾਦਰ ਸੀਗਾ 97 ਕਹਿੰਦੇ ਨੋ ਹੋਇਆ ਜੇ ਫੇਵਰੇਚ ਪਾਣੀ ਭਰ ਗਿਆ ਉਹ 2 ਮਹੀਨੇ ਘਟਦਾ ਬਾਅਦ ਜੋ ਮੁੜ ਕੇ ਬਾਜ ਗਿਆ ਜੀ ਇਹ ਕੈਂਸਰ ਆ ਸੋ ਮੈਂ ਤਾਂ ਸਮਝ ਲਈ ਡਾਕਟਰੀ ਕਿਦਾਂ ਡਿਗਰੀ ਲੈ ਕੇ ਭਾਜੋ ਡਿਗਰੀ ਲੈ ਕੇ 2 4 ਸਾਲ ਇਹਨਾਂ ਨੂੰ ਕਿਸੇ ਦੌਲਤ ਹੀ ਨਹੀਂ ਡਾਕਟਰ ਨਾਲ ਇਹਨਾਂ ਨੂੰ ਕੰਮ ਤੇ ਲਾਵੋ ਪੈਸੇ ਹੋਣੇ ਉਹ ਬਦ ਦਿਖਾਵਾ ਉਹ ਵੱਧ ਮਿਲ ਜੀ ਕੋਸ਼ੇ ਨਾਲ ਵੀ ਹੈ ਉਹ ਵੀ ਬਹੁਤ ਇੱਥੇ ਸਭ ਮੋਨੋਪੋਲੀ ਚੱਲ ਰਹੀ ਹੈ ਤੇ ਦੂਜੀ ਗੱਲ ਆਪਣੀ ਹੈਗੀ ਆਪਣੀ ਨਾਲ ਵਾਲਾ ਲਾਣਾ ਨਾ ਇੱਥੇ ਆਵੇ ਕਹਿਣਾ ਮਤਲਬ ਉਹਨਾਂ ਨੂੰ ਨਾ ਉਹ ਐਮਪੀਐਮਐਲ ਬਣਾਓ ਜਿਹੜੇ ਇੱਥੇ ਬੌਰਨ ਬੱਚੇ ਉਹਨਾਂ ਨੂੰ ਬਣਾਵੋ ਉਹਨਾਂ ਨੂੰ ਉਹਨਾਂ ਲੈ ਗਿਆ ਵੋ ਥੈਂਕ ਯੂ ਥੈਂਕ ਯੂ ਬਾਜੀ ਆਜ ਜੀ ਲਾਈਨ ਨੰਬਰ 2 ਹੈਲੋ ਜੀ ਦੀ ਜੋ ਕਰਕੇ ਸਟਾਫ ਜੀ ਨੇ ਕਰਕੇ ਬਹੁਤ ਹੀ ਦੁੱਖ ਆਇਆ ਬਹੁਤ ਹੀ ਮਾੜੀ ਗੱਲ ਹੋਈ ਹੈਗੀ ਆ ਤੇ ਇਹਦੇ ਵਿੱਚ ਜਰੂਰ ਸੁਧਾਰ ਲਿਆਉਂਦੀ ਜਰੂਰਤ ਹੈਗੀ ਆ ਤੇ ਆਪਣੇ ਮੈਨੂੰ ਉਜਾੜ ਹੈਗਾ ਕਿ ਮੇਰੇ ਕੰਰਸ ਸਾਰੀ ਮੇਰਾ ਇਹ ਉਹ ਤਿੰਨੋਂ ਨਾੜਾਂ ਆ ਦੀਆਂ ਸੀਗੀਆਂ ਤੇ ਜਿਹੜੀਆਂ 90% ਦੋ ਪਲੱਗ ਸੀਗੀਆਂ ਤੇ ਦੂਜੀ 70% ਸੀਗੀ ਤੇ ਉਹਨੂੰ ਮੈਂ ਸੈਂਟ ਪਾਲ ਹਸਪਤਲ ਲੈ ਕੇ ਗਿਆ ਅਮਰਜੈਂਸੀ 'ਚ ਤੇ ਉਹਨਾਂ ਨੇ ਚੈੱਕ ਕੀਤਾ ਕਨਫਰਮ ਦੀ ਕਰ ਲਿਆ ਵੀ ਯੈਸ ਦੀ ਇਹਦੀ 90% ਦੋ ਹੈਗੀਆਂ ਨੇ ਤੇ ਦੂਜੀ 70% ਤਾਂ ਹਾਰdਲੀ ਬਰੀਥ ਕਰ ਰਿਆ ਸੀਗਾ ਮੈਨੂੰ ਕਹਿੰਦੇ ਵੀ ਐ ਕਰ ਵੀ ਇਹਨੂੰ ਘਰੇ ਲੈ ਜਾ ਸਰਜਰੀ ਕਰਾਂਗੇ ਮੈਂ ਕਹਵਾਤ ਵੀ 90% ਦੋੜ ਥੋੜੀ ਨਾਲ ਮਾਰ ਸਕਦਾ ਦਾ ਉਹ ਕਹਿੰਦੇ ਨੋ ਵੀ ਇਹੀ ਅਸੀਂ ਡਿਸੀਜਨ ਬਣਾਇਆ ਵੀ ਮੈਂ ਤਾਂ ਨਹੀਂ ਲੱਗ ਜਾਂਦਾ ਮੇਰੀ ਚੱਲੀ ਫਿਰ ਅੰਦੇ ਤੇ ਅੱਗੇ ਕਹਿੰਦੇ ਤੈਨੂੰ ਹੈਵ ਟੂ ਜਾਣਾ ਪੈਣਾ ਮੈਂ ਕਹ ਠੀਕ ਆ ਹੁਣ ਮੈਂ ਲੈ ਜਾਣਾਗਾ ਵੀ ਲੈ ਕੇ ਦੇ ਦੋ ਤੇ ਜੇ ਮੇਰੇ ਜੇ ਜੇ ਨੂੰ ਹੋ ਗਿਆ ਵੀ ਤੁਸੀਂ ਜ਼ਿੰਮੇਵਾਰ ਆ ਫਿਰ ਡਰ ਗਈ ਫਿਰ ਉਹਦੇ ਉਦੋਂ ਉਹਨਾਂ ਦੇ ਹਸਪੀਟਲ ਜਿਹੜਾ ਸਰਜਨ ਸੱਦੇ ਦੋ ਸਰਜਨ ਸੱਦੇ ਤੇ ਵਿਦਨ ਹੈਪਨ ਐਬਲ ਕਿਹਾ ਉਹਕੇ ਸਰਜਨ ਆ ਗਏ ਲੇਟ ਉਹਨੂੰ ਡਿਸੀਜਨ ਮੇਕ ਕਰ ਲਿਆ ਬੰਦਾ ਕਿਹਾ ਓਕੇ ਦਾ 5:00 ਵਜੇ ਜਦ ਸਰਜਨ ਦੋ ਉਹਨਾਂ ਨੇ ਡਿਸੀਜਨ ਮੇਕ ਕੀਤਾ ਹੋਣਾ ਚਾਹੀਦਾ ਵਾ ਵੀ ਅਸੀਂ ਸਵੇਰੀ ਕਰਦੇ ਆ ਇੰਸਟੀਚੂਟ ਨਾਲ ਸਰ ਓਕੇ 10:00 ਵਜੇ ਵਿਦਨ ਉਹ ਸਵੇਰੀ ਉਹਨਾਂ ਨੇ ਪ੍ਰੈਸ਼ਨ ਕਰਤਾ ਹਾਂ ਠੀਕ ਠਾਕ ਆ ਫਿਰ ਸਰਜਨ ਤੇ ਮੈਂ ਦੱਸਿਆ ਕਿ ਤਿੰਨ ਨਹੀਂ ਚੌਥੀ ਵੀ ਬੰਦ ਸੀ ਕਿਹੜਾ ਗੁੱਡ ਸੀਗਾ ਵੀ ਜਿਹੜਾ ਆਪਾਂ ਪ੍ਰੈਸ਼ਨ ਕਰ ਲਿਆ ਨਹੀਂ ਬਹੁਤ ਕੰਮ ਬਹੁਤ ਖਰਾਬ ਦੱਸ ਕਰਕੇ ਕਾਫੀ ਸਿਸਟਮ ਸਧਾਰਲੇ ਹੋਣ ਦੀ ਜ਼ਰੂਰਤ ਹੈਗੀ ਆ ਥੈਂਕ ਯੂ ਜੀ ਥੈਂਕ ਯੂ ਜੋ ਲਾਈਨ ਨੰਬਰ 3 ਹਲੋ ਜੀ ਬਾਈ ਹਾਂਜੀ ਹਾਂਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਦਰਸਲ ਕੈਨੇਡਾ ਦੇ ਵਿੱਚ ਇੱਕ ਹੈਲਥ ਸਿਸਟਮ ਓਵਰਹਾਲ ਹੋਣ ਵਾਲਾ ਇੱਥੇ ਤਕਰੀਬਨ ਸਾਰਾ ਕੁਝ ਓਵਰਹਾਲ ਹੋਣਾ ਸਾਰੇ ਸਿਸਟਮ ਜਿੰਨੇ ਤੁਸੀਂ ਦੇਖੋ ਕਿ ਮੈਂ 30 ਇਅਰਸ ਜਰਮਨ ਰਹਾ ਹੂੰ ਕਦੇ ਕਿਸੇ ਲੋੜੀ ਤੇ ਪਰੇਸ਼ਾਨ ਨਹੀਂ ਆਈ ਹੈਲਥ ਦੀ ਨਹੀਂ ਪੈਨਸ਼ਨ ਦੀ ਨਹੀਂ ਕਿਸੇ ਵੀ ਕਿਸਮ ਦੀ ਕੋਈ ਪੁਲਿਸ ਨਾਲ ਜਾਂ ਖੱਬੇ ਸੱਜੇ ਦੇ ਨਾਲ ਸਾਡਾ ਉੱਥੇ ਸਿਸਟਮ ਹੈਗਾ ਮੈਂ ਜਰਮਨ ਨੈਸ਼ਨਲ ਆ ਪ੍ਰਾਊਡਲੀ ਮੈਂ ਕਹਣਾ 6% ਤਾਂ ਅਸੀਂ ਕਟਾਉਨੇ ਆ ਆਪਣੀ ਕੰਟਰੀਬਿਊਸ਼ਨ ਹੈਲਥ ਦੀ ਔਰ 6% ਸਾਡਾ ਏਮਪਲੋਇਰ ਕਟਾਉਂਦਾ 12% ਸਾਡੀ ਤੇ ਦੇ ਵਿੱਚੋਂ ਜਾਂਦੀ ਆ ਜਿਹੜਾ ਪੈਨਸ਼ਨ ਦੀ ਇੰਸ਼ੋਰੈਂਸ ਹੈ ਉਹਦੇ ਸਾਡੇ 9% ਅਸੀਂ ਦਿੰਨੇ ਆਂ ਔਰ 9% ਸਾਡਾ EMPLOYEER ਦਿੰਦਾ। ਇਸੇ ਤਰ੍ਹਾਂ ਜਿਹੜੀ EI ਆ ਉਹ 2% ਮਤਲਬ ਮੇਰਾ 4000 ਦਾ ਤਕਰੀਬਨ ਮੰਥਲੀ ਪੇ ਹੁੰਦੀ ਸੀ ਜਿਹਦੇ ਵਿੱਚੋਂ ਮੇਰਾ 1500 ਕੰਟ੍ਰਿਬਿਊਸ਼ਨ ਜਿਹੜੀ ਮੇਬੀ ਕਹਿੰਦੇ ਆ ਕੈਨੇਡਾ ਦੇ ਵਿੱਚ ਕਟੌਤੀ ਹੁੰਦੀ ਸੀ ਤੇ ਮੈਨੂੰ 2500 ਆਉਂਦਾ ਸੀ। ਤੇ ਜੇ ਅਸੀਂ 75 ਡਾਲਰ ਦੇ ਵਿੱਚ ਚਾਰ ਫੈਮਿਲੀ ਦੇ ਮੈਂਬਰ ਆ ਔਰ ਇੰਸ਼ੋਰਡ ਆ ਔਰ ਤਾਂ ਫੇਰ ਤਾਂ ਜਿਹੜਾ ਸਿਸਟਮ ਚੱਲਦਾ ਏਸੇ ਹਿਸਾਬ ਨਾਲ ਜਰਣਾ ਇਹਨੇ ਵੀ ਤਰਹੀ ਹੋਣਾ। ਸ਼ਹਿਰੀ ਦੀ ਤਕਰੀਬਨ 5 ਜਾਂ 6 ਲੱਖ ਦੀ ਆਬਾਦੀ ਹੈ। ਇੱਥੇ ਇੱਕ ਜਾਂ ਦੋ ਹਸਪੀਟਲ ਨੇ, ਦੈਟਸ ਇਟ। ਸਾਡਾ ਸ਼ਹਿਰ ਜਟਡਾਟ ਹੈ ਜਿੱਥੇ ਮੈਂ ਰਿਹਾ ਤਕਰੀਬਨ ਏਨੇ ਸਾਲ। ਸਾਡੇ ਘੱਟੋ ਘੱਟ 10 ਹਸਪੀਟਲ ਨੇ, 10 ਹਸਪੀਟਲ। ਹੂੰ ਕੀ ਸੇਮ ਦੇ ਵੀ ਸਰਜਰੀ ਜਾਂ ਕੋਈ ਵੇਟਿੰਗ ਲਿਸਟ ਨਹੀਂ ਹੈਗੀ ਕੁਝ ਨਹੀਂ ਹੈਗੀ ਤੁਹਾਨੂੰ ਮੈਕਸਿਮਮ ਜੇ ਕੋਈ ਸੀਰੀਅਸ ਹੈਗਾ ਕੈਂਸਰ ਵਗੈਰਾ ਤਾਂ ਤੁਹਾਨੂੰ ਹਫਤੇ ਦੀ ਮਤਲਬ ਅਪਾਇੰਟਮੈਂਟ ਮਿਲੂਗੀ ਆਦਰਵਾਇਜ਼ ਕੋਈ ਚੱਕਰ ਵੀ ਹੈਗਾ ਸੋ ਗੱਲ ਹੈਗੀ ਇਹ ਕਿ ਗਵਰਨਮੈਂਟ ਨੂੰ ਜਾਂ ਸਿਸਟਮ ਨੂੰ ਜਾਂ ਲੋਕਾਂ ਨੂੰ ਜਾਂ ਜਿਹੜੇ ਸਾਡੇ ਨੁਮਾਇੰਦੇ ਚੁਲੇ ਹੋਏ ਅੱਗੇ ਜਾਂਦੇ ਨੇ ਜਿਨ੍ਹਾਂ ਦੇ ਮੂੰਹ ਦੇ ਉੱਪਰ ਚਿੱਕੜੀਆਂ ਲੱਗੀਆਂ ਹੋਈਆਂ ਨੇ ਚਿੱਕੜੀਆਂ ਉਹ ਮੂੰਹ ਖੋਲੋ ਸਾਡੀ ਆਵਾਜ਼ ਜੋ ਅਸੀਂ ਸੋਚਦੇ ਹਾਂ ਬੋਲਦੇ ਹਾਂ ਕਹਿੰਦੇ ਹਾਂ ਪਾਰਲੀਮੈਂਟ ਤੱਕ ਸਟੇਟ ਅਸੈਂਬਲੀ ਤੱਕ ਪਹੁੰਚਾਉਣਗੇ ਤਾਂ ਇਹ ਮਸਲਾ ਕੋਈ ਵੱਡਾ ਨਹੀਂ ਹੈਗਾ ਇਹਨੂੰ ਸੋਲਵ ਕੀਤਾ ਜਾ ਸਕਦਾ ਥੈਂਕ ਯੂ ਜੀ ਮਿਹਰਬਾਨੀ ਥੈਂਕ ਯੂ ਬਾਈ ਜੀ ਥੈਂਕ ਯੂ ਮੱਚ ਸਿੰਘ ਜੀ ਤੁਸੀਂ ਆਖੋ ਸਪੋਕਰ ਨੂੰ ਇਸ ਵਿਸ਼ੇ ਬਾਰੇ ਲਾਈਨ ਨੰਬਰ 5 ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਬੱਚੀ ਦਾ ਸੰਕੇਤ ਬਹੁਤ ਬਹੁਤ ਬੋਲਦਾ ਤੇ ਕਿੰਨਾ ਵੀ ਗਹਿਲੀ ਕਾਰਨ ਇਹ ਕੁਛ ਹੋ ਗਿਆ ਇਹ ਜਿਹਦੇ ਤੇ ਬੀਤਦੀ ਹੈ ਜੀ ਪਤਾ ਉਹਨੂੰ ਲੱਗਦਾ 2011 ਦੇ ਵਿੱਚ ਮੇਰੇ ਸਤਕਾਰਯੋਗ ਪਿਤਾ ਜੀ ਜੋ ਕਿ ਬਿਲਕੁਲ ਠੀਕ-ਠਾਕ ਹਨ ਇਹਨਾਂ ਦੀ ਨਹਿਲੀ ਨਾਲ ਮੰਗ ਡੈਸ ਦੇ ਜਿਵੇਂ ਤੁਹਾਡਾ ਚਾਚਾ ਸੁਣਦੇ ਸੀ ਕਿ ਇੱਕ ਲੇਡੀਜ਼ ਦਾ ਤੁਸੀਂ ਬਥੇਆ ਸੀ ਗੋਲ ਬਲੈਡਰ ਕਹਿੰਦੇ ਭਰ ਗਿਆ ਤੇ ਇੰਡੀਆ ਜਾ ਕੇ ਉਹਨਾਂ ਨੇ ਰੀਮਪ ਕਰਾਤਾ ਮੇਰੇ ਡੈਡ 65 ਈਅਰ ਹੋਏ ਸੀ ਬਹੁਤ ਵਧੀਆ ਤੰਦਰੁਸਤ ਸੀ ਰਿਟਾਇਰਡ 에ਅਰਪੋਸਟ ਸੀਗੇ ਇੰਡੀਆ ਤੋਂ ਇੱਕ ਦਿਨ ਉਹਨਾਂ ਦੇ ਦਰਦ ਹੋਇਆ ਤੇ ਅਸੀਂ ਹਸਪੀਟਲ ਲੈ ਗਏ ਜਦੋਂ ਹਸਪੀਟਲ ਲੈ ਕੇ ਗਏ ਜੀ ਅਸੀਂ ਉਹ ਕਹਿੰਦੇ ਵੀ ਇਹਨਾਂ ਦੇ ਪਹਿਲਾਂ ਚੈੱਕ ਕਰਦੇ ਨੇ ਗੋਲ ਬਲੇਡਰ ਦੇਖੋ ਉਹਨਾਂ ਨੇ ਗੋਲ ਬਲੇਡਰ ਜਿਵੇਂ ਐਕਸਪੈਰੀਮੈਂਟ ਕਰਦੇ ਹੁੰਦੇ ਆ ਗੋਲ ਬਲੇਡਰ ਇੰਡੀਆ ਆਪਣੇ ਜੀ ਰਿਮੂਵ ਕਰਦੇ ਆ ਮੋਸਟਲੀ ਤੁਸੀਂ ਦੇਖਿਓ ਤੇ ਕਿਉਂਕਿ ਉਹ ਇੱਕ ਪਿੱਟਾ ਜਿਹੜਾ ਆਪਣੇ ਫੈਟ ਬਰਨ ਕਰਨ ਦਾ ਕੰਮ ਕਰਦਾ ਵਾ ਤੇ ਜੇ ਪਥਰੀਆਂ ਜਿਹੜੀਆਂ ਭੰਨਦੇ ਆ ਜੇ ਇਹ ਆਪਣੇ ਗੋਲ ਬਲੇਡਰ ਦੀ ਨਿਪਨ ਦੇ ਜੀ ਉੱਥੇ ਉਹ ਰਿਮੂਵ ਕਰ ਦਿੰਦੇ ਕਿਉਂਕਿ ਇਹਨਾਂ ਨੇ ਪਹਿਲਾਂ ਜਦੋਂ ਪੱਥਰੀਆਂ ਭੰਨੀਆਂ ਤੇ ਉਹ ਉਹਨਾਂ ਦਾ ਟ੍ਰਾਇੰਗਲ ਲੀਵਰ ਦੇ ਥ्रू ਹੋ ਕੇ ਬਾਹਰ ਉਹ ਫਿਰ ਵਾਸ਼ਰੂਮ ਚ ਨਿਕਲਦੀ ਜੀ ਤੇ ਇਹਨਾਂ ਨੇ ਛੁੱਟੀ ਦਿੱਤੀ ਅਸੀਂ ਦਾਦੀ ਨੂੰ ਘਰ ਲਿਆਏ ਬੜੀ ਸੋਹਣੀ ਫਿਰ ਥੋੜੇ ਦਿਨ ਬਾਅਦ ਫੇਰ ਦਰਦ ਹੋਇਆ ਫੇਰ ਅਸੀਂ ਲੈ ਕੇ ਫੇਰੇ ਕਹਿੰਦੇ ਵੀ ਲੱਗਦਾ ਸਾਨੂੰ ਵਿੱਚ ਗੋਲ ਇਹਨਾਂ ਦੇ ਪੱਥਰੀਆਂ ਦਾ ਕੋਈ ਛਿੰਕੇ ਰਹਿ ਗਏ ਅਸੀਂ ਕਹੇ ਠੀਕ ਆ ਜੀ ਫੇਰ ਐਡਮਿਟ ਕਰਾਤਾ ਫੇਰ ਕਦੇ ਚਲ ਤੋਂ ਚੱਲ ਕਦੇ ਵੈਨਕੂਵਰ ਭੇਜ ਦਣ ਇਹਨਾਂ ਨੇ ਕਦੇ ਅੰਦੀ ਵਾਲੇ ਚ ਕਦੇ ਕੋਸ਼ ਇਨਫੈਕਸ਼ਨ ਹੋਣੀ ਸ਼ੁਰੂ ਕਰ ਹੋਗੀ ਤੇ ਡੈਡੀ ਬਿਲਕੁਲ ਤੰਦਰੁਸਤ ਸੀ ਪਹਿਲਾਂ ਤੇ ਬਾਅਦ ਵਿੱਚ ਜੇ ਆਪਾਂ ਹੁਣ ਮੰਨ ਲਓ ਡੀਜ਼ਲ ਵਾਲੇ ਟੈਂਕ ਦੇ ਵਿੱਚ ਆਪਣੇ ਕਚਰੇ ਉਹਨੂੰ ਡੀਜ਼ਲ ਟੈਂਕ ਪਹਿਲਾਂ ਲਾ ਕੇ ਸਾਫ਼ ਕਰਨਾ ਠੀਕ ਆ ਨਾ ਕਿ ਪਹਿਲਾਂ ਉਹਨੂੰ ਪ੍ਰੈਸ ਕਰਕੇ ਹੈੱਡ ਤੇ ਭੇਜ ਦੇ ਆਪਾਂ ਖਰਾਬ ਕਰ ਲੀਏ ਤੇ ਇਹਨਾਂ ਨੂੰ ਅਸੀਂ ਕਰਦੇ ਰਹੇ ਫਿਰ ਇਹਨਾਂ ਕੋਲੇ ਕੋਈ ਵੀ ਹੈ ਨਹੀਂ ਸੀ ਫਿਰ ਅੰਦਰਲੀ ਜਿਹੜੀ ਇਹ ਅੰਗੈਲੀ ਲੱਗੀਆਂ ਉੱਥੇ ਸਾਰਾ ਸਾਰਾ ਰਾਤ ਦਿਨ ਵੀ ਰਹਿੰਦੇ ਰਹੇ ਡੈਡ ਦੀ ਥੋੜ ਤੇ ਕੋਈ ਫੋਨ ਤੇ ਲੱਗਿਆ ਉਹਨਾਂ ਨੂੰ ਕੋਈ ਮਰੀਜ਼ ਤੱਕ ਨਹੀਂ ਉਹਨਾਂ ਨੂੰ ਆਪਦੀ ਜੋਬ ਦਾ ਕਰਦੇ ਆ ਅਸੀਂ ਜੋਬ ਕਰਦੇ ਆ ਬੰਦਾ ਉੱਥੇ ਪੀਂਚ ਪਿਆ ਘੁਲੀ ਜਾਂਦਾ ਅਖੀ ਅਖੀ ਈਮੇਲ ਕੀਤੀ ਹੋਈ ਆ ਜੀ ਉਜੀਏ ਡਾਕਟਰ ਸਾਹਿਬ ਕਹਿਣਗੇ ਤਾਂ ਕੋਈ ਨਾ ਕੋਈ ਆਪਾਂ ਦੇਖਦੇ ਹੱਲ ਕਰਦੇ ਆ ਫਿਰ ਸਾਰੀ ਰਾਤ ਉਹ ਤੁੱਖਾ ਰੱਖ ਲਿਆ ਕਰ ਰਾਤ ਤੋਂ ਦੂਜੇ ਦਿਨ ਦੁਪਹਿਰ ਤੱਕ ਦੂਸਰੇ ਦਿਨ ਕੈਦਿਆ ਕਰਨਾ ਹੁਣ ਸਰਜਰੀ ਹੋ ਨਹੀਂ ਸਕਦੀ ਐਮਰਜੈਂਸੀ ਆ ਗਈ ਤੇ ਸੀ ਤੇ ਉਹਨੇ ਡੈਡੀ ਦਾ ਜਦੋਂ ਸ਼ੂਗਰ ਲੈਵਲ ਘਟ ਗਿਆ ਤੇ ਡੈਡੀ ਦਾ ਉਹਨਾਂ ਨੇ ਸੌਰੀ ਡੈਡੀ ਦਾ ਸ਼ੂਗਰ ਦੇ ਵੱਧ ਗਿਆ ਡੈਡੀ ਦਾ ਘੱਟ ਕਰਨ ਵਾਲਾ ਟੀਕਾ ਲਾਉਣਾ ਸੀ ਸਾਹਮਣੇ ਇੱਕ ਗੋਰਾ ਪੇਸ਼ੈਂਟ ਸੀ ਉਹਦੇ ਲਾਉਣਾ ਸੀ ਵੱਧ ਕਰਨ ਵਾਲਾ ਦਾੜੀ ਦੇ ਟੀਕਾ ਵੀ ਉਲਟ ਲਾ ਗੀ ਉਹ ਥੋੜੇ ਥੋੜੇ ਟਾਈਮ ਬਾਅਦ ਬਲੱਡ ਵਰਕ ਕਰਨਾ ਇਨੇ ਦਿਨਾਂ ਤੋਂ ਉੱਥੇ ਐਡਮਿਟ ਆ ਤੇ ਦੂਜੇ ਤੋਂ ਦੁਪਹਿਰ ਹੋ ਜਾ ਕੇ ਕਹਿ ਦਿੰਦੇ ਆ ਤੇ ਹੁਣ ਦੇ ਦੋ ਅਸੀਂ ਥੋੜੇ ਐਮਰਜੈਂਸੀ ਮੁੜੇ ਆ ਗਏ ਮੈਂ ਇਹਨਾਂ ਨੂੰ ਬਹੁਤ ਕਿਹਾ ਕਿਉਂਕਿ ਮੇਰੇ ਦਾੜੀ 에ਅਰਪੋਰਟ ਤੇ ਲੱਗਦੀ ਸਾਡਾ ਸਾਰਾ ਇਲਾਜ ਉੱਥੇ ਪੂਰਾ ਵਧੀਆ ਹੋਣਾ ਸੀ ਐਂਡ ਤੇ ਆ ਕੇ ਬਸ ਬਾਅਦ ਚੰਨੀਆਂ ਸੌਰੀਆਂ ਦਾ ਕੰਮ ਰਹਿ ਜਾਂਦਾ ਜੀ ਮੈਂ ਤਾਂ ਪਲੀਜ਼ ਸਾਰਿਆਂ ਨੂੰ ਕਹਿੰਦਾ ਵੀ ਜਿਹੜਾ ਹੈਗਾ ਰੇਡੀਓ ਉਈ ਦੁੱਖ ਕੀ ਹੁੰਦਾ ਬਿਲਕੁਲ ਬਿਲਕੁਲ ਥੈਂਕ ਯੂ ਥੈਂਕ ਯੂ ਉਹ ਕਾਂ ਨੇ ਆਪਣੀ ਜ਼ਿੰਦਗੀ ਦਾ ਦੁੱਖ ਸ਼ੇਅਰ ਕੀਤਾ ਹੁਣ ਅਸੀਂ ਸਾਡੀ ਇੱਥੇ ਤੱਕ ਗੱਲ ਆਪਾਂ ਕਰਦੇ ਆਂ ਇਤੋਂ ਫਰਦਰ ਜਿਹੜੇ ਸਾਡੇ ਰਾਜਨੀਤਿਕ ਨੇ ਉਹਨਾਂ ਦੀ ਗੱਲਾਂ ਕਰਨ ਦੀ ਸਾਰੀ ਕੁਝ ਉਹਨਾਂ ਕੋਲ ਗੱਲ ਪਹੁੰਚਦੀ ਹੈ ਸਭ ਉਹਨਾਂ ਨੂੰ ਪਤਾ ਲੱਗਦਾ ਦਪਾਸ਼ੀ ਰੱਖੇ ਨੇ ਸਭ ਕੁਝ ਉਹਨਾਂ ਨੂੰ ਆਪਣਾ ਸਾਡਾ ਥੋੜਾ ਕਿਹਾ ਸਭ ਪੇਪਰਾਂ ਚ ਕਰਕੇ ਭੇਜ ਦਿਆ ਇੱਥੇ ਵੀ ਉੱਪਰ ਵੀ ਵਿਕਟੋਰੀਆ ਵੀ ਆ ਲੋਕਲ ਦਸਤਰਾں ਚ ਵੀ ਸਾਰੀ ਜਗ੍ਹਾ ਪਤਾ ਹੁੰਦਾ ਕੀ ਕਹਿੰਦੇ ਨੇ ਕਿਉਂਕਿ ਚੁੰਡੀ ਵੱਡੀ ਤਾਂ ਲੇਰ ਹੀ ਨਹੀਂ ਮਾਰਦੇ ਪਤਾ ਹੁੰਦਾ ਵੱਡੀ ਹੋਈ ਹੈ ਪਰ ਇਹ ਮੁਸ਼ਕਲ ਹੈ ਜਿਹੜੀ ਠੀਕ ਹੋਣੀ ਚਾਹੀਦੀ ਹੈ ਵਪਾਰਕ ਸੰਦੇਸ਼ ਉਸ ਤੋਂ ਬਾਅਦ ਆ ਕੇ ਇੱਕ ਨਵਾਂ ਵਿਸ਼ਾ ਸ਼ੁਰੂ ਕਰ ਦੇ 1:23 ਮਿੰਟ ਹੋਏ ਜੀ ਦੂਸਰੇ ਹਿੱਸੇ ਦੇ ਵਿੱਚ ਜਿਹੜੀ ਮੈਂ ਗੱਲ ਕਰਨੀ ਹੈ ਉਹ ਇਹ ਹੈ ਕਿ ਫਰੰਟ ਆਫ ਦਿ ਸਕੂਲ ਨੇ Earl Grey Senior Public School 'e usne policy change kiti hai ke grade 7 te 8 de jehde saade bachche ne oh classroom de vich phone ਕੇ leke ja sakde bahut vaar apni behas da vishay rehya hai ke ki high school de vich gaye bachche ohna nu cell phone di zarurat hai chahe ohna nu basan leke jandiyan chahe assi chhad ke leke aundiyan chahe right sanjh kiti hai school de ਵਿੱਚ ਰਹਿਣਾ ਸਕੂਲ ਦੀ ਗਰਾਊਂਡ 'ਚ ਖੇਲਣਾ ਹੈ ਟੀਚਰਸ ਦੀ ਦੇਖਰੇਖ ਥੱਲੇ ਪ੍ਰਿੰਸੀਪਲ ਹੈ ਸਾਰਾ ਕੁਝ ਹੈ ਕੀ ਉਹਨਾਂ ਨੂੰ ਸੈੱਲਫੋਨ ਦੀ ਜ਼ਰੂਰਤ ਹੈ ਗ੍ਰੇਡ 7 8 9 10 11 12 ਜਿੰਨੇ ਵੀ ਨੇ ਇਹ ਸਾਡੇ ਤਾਂ ਮੈਨੂੰ ਲੱਗਦਾ ਨਹੀਂ ਕੋਈ 7ਵੀਂ ਤੇ 8ਵੀਂ ਦੇ ਵਿੱਚ ਕੋਈ ਬੱਚਾ ਬਚਿਆ ਹੋ ਜਿਹਨੂੰ ਅਸੀਂ ਸੈੱਲਫੋਨ ਨਹੀਂ ਲੈ ਕੇ ਦਿੱਤੇ ਜੇ ਉਹਨਾਂ ਨੂੰ ਆਪਾਂ SIM ਨਹੀਂ ਪਾ ਕੇ ਦਿੱਤਾ Wi-Fi ਦੇ ਥਰੂ ਉਹ ਫੋਨ ਕਰ ਸਕਦੇ ਚੈਟ ਕਰ ਸਕਦੇ ਟੈਕਸਟ ਕਰ ਸਕਦੇ ਉਹ ਸਾਰਾ ਕੁਝ ਕਰ ਸਕਦੇ। ਇਹ ਜਿਹੜਾ ਠੀਕ ਹੈ ਕੀ ਸਕੂਲ ਦੇ ਵਿੱਚ ਬੱਚਿਆਂ ਨੂੰ ਫੋਨ ਦੀ ਜ਼ਰੂਰਤ ਹੈ? ਇਹ ਇੱਕ ਸਵਾਲ ਹੈ। 7ਵੀਂ ਤੇ 8ਵੀਂ ਦੇ ਬੱਚਿਆਂ ਲਈ ਉਹਨਾਂ ਨੇ ਚੇਂਜ ਕੀਤਾ ਇਹ ਚੀਜ਼ ਜਿਹੜੀ ਅੱਜ ਤੋਂ 5 ਸਾਲ ਪਹਿਲਾਂ 7 ਸਾਲ ਪਹਿਲਾਂ ਜਦ ਤੁਹਾਡੇ ਬੱਚੇ ਹਾਈ ਸਕੂਲ ਦੇ ਵਿੱਚ ਸੀ ਬਿਲਕੁਲ ਨਹੀਂ ਸੀ। ਇਹ ਜਿਹੜੀ ਇੱਕਦਮ ਬਦਲ ਆਇਆ ਸਾਡਾ ਪੁਰਾਣਾ ਫੋਨ ਅਸੀਂ ਚੱਕ ਕੇ ਆਪਣੇ ਧੀ ਪੁੱਤ ਨੂੰ ਦੇ ਤਾ ਅਸੀਂ ਨਵਾਂ ਲੈ ਲਿਆ ਤੇ ਉਹ ਅੰਦਰੋਂ ਕੋਈ ਜਰੂਰਤ ਪੈ ਇਮਰਜੈਂਸੀ ਕਿਹੜੀ ਹੋ ਜੂਗੀ ਸਟਾਫ ਤੇ ਪ੍ਰਿੰਸੀਪਲ ਹੈ ਉੱਥੇ ਔਰ 5 ਕਿਲੋਮੀਟਰ 7 ਕਿਲੋਮੀਟਰ ਹੈ ਤੁਹਾਡਾ ਸਕੂਲ ਹੈ ਤੁਹਾਡੇ ਘਰ ਤੋਂ ਜਿਹੜੀ ਪਰਲੋ ਆ ਜਿਹਦੇ ਲਈ ਬੱਚੇ ਨੇ ਤੁਹਾਨੂੰ ਫੋਨ ਕਰਕੇ ਦੱਸਣਾ ਔਰ ਉਹ ਕੱਲੇ ਫੋਨ ਤੁਹਾਡੇ ਲਈ ਥੋੜਾ ਹੁਣ ਜੇ ਤੁਸੀਂ ਕਹਿੰਦਾ ਠੀਕ ਆ ਵਾਈਫਾਈ ਤੇ ਚੱਲਦਾ ਹੈ ਉਹ ਉਹ ਕਿਤੇ ਇਉਂ ਥੋੜਾ ਵੀ ਤੁਹਾਡੇ ਨਾਲ ਉਹ ਬੱਚਾ ਜਾਂ ਬੱਚੀ ਗੱਲ ਕਰਦਾ ਇੱਕ ਰੁਝਾਨ ਹੈ ਜਿਹਦੇ ਤੇ ਟੋਰਾਂਟੋ ਦੇ ਇੱਕ ਸਕੂਲ ਦੀ ਪਾਲਿਸੀ ਨੇ ਧਿਆਨ ਖਿੱਚਿਆ ਅੱਜ ਸਵੇਰ ਦਾ ਪਿਛਲੇ ਦਿਨੀ ਇਹ ਸੋਮਵਾਰ ਦੀ ਪਿਛਲੇ ਸ਼ੁੱਕਰਵਾਰ ਦੀ ਗੱਲ ਹੈ ਸੋ ਇਹ ਤੁਸੀਂ ਕੀ ਸੋਚਦੇ ਹੋ ਕਿ ਸਾਡੇ ਇਹਨਾਂ ਸਕੂਲ ਚ ਜਾਂਦੇ ਬੱਚੇ ਜਿਹੜੇ ਹਾਈ ਸਕੂਲ ਚ ਜਾਂਦੇ ਉਹਨਾਂ ਨੂੰ ਸੈਲਫੋਨ ਦੀ ਜ਼ਰੂਰਤ ਹੈ ਮੈਨੂੰ ਨੀ ਲੱਗਦਾ ਵੀ ਕੋਈ ਮਾਪਾ ਪਿਛੇ ਹੋ ਜੀ ਨੇ ਨਹੀਂ ਲੈ ਕੇ ਦਿੱਤੇ ਹੋ ਬੱਚਿਆਂ ਇਹ ਚੰਗਾ ਰਜੂਆਨਾ ਜਮਾੜਾ 1844 247 1550 ਦੱਸੋ ਫੋਨ ਕਰਕੇ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਸੈੱਲ ਦੀ ਜ਼ਰੂਰਤ ਹੈ 88 ਰਕਬੋਡੀ ਐਂਡ ਪੇਂਟ 604 940 1080 ICICI BC ਦੀ ਐਕਸਪ੍ਰੈਸ ਸ਼ਾਪ ਐਕਸਪ੍ਰੈਸ ਗਲਾਸ ਸ਼ਾਪ ਐਟ ਰਕ ਕੰਟਰੋਲਿੰਗ ਰਿਪੇਅਰ ਵੱਡੇ ਟਰੱਕਾਂ ਦਾ ਬੋਡੀ ਵਰਕ ਤੇ ਪੇਂਟ ਦਾ ਕੰਮ ਕੀਤਾ ਜਾਂਦਾ ਏਟੀ 8 ਟਰੱਕ ਬੋਡੀ ਐਂਡ ਪੇਂਟ ਤੇ 604 940 10 80 ਟੱਟ ਬ੍ਰਦਰਸ ਦੀ ਫੈਸਿਲਿਟੀ ਆਈਸੀਬੀਸੀ ਨਾਲ ਸਾਰਾ ਕੁਝ ਆਪ ਨਿਵੇੜਦੇ ਕੰਮ ਉਹਨਾਂ ਦਾ ਜਿਮਾ ਛੱਡਦੇ ਪੀਲ ਫਾਈਨੈਂਸ਼ੀਅਲ ਦੇ ਕੁਲਦੀਪ ਸਿੰਘ ਗਿਲ ਰੂਮੀ ਦੇ ਟਰੱਕ ਪੁਰਾਣਾ ਜਾਂ ਨਵਾਂ ਲੈਣਾ ਜਾਂ ਡੰਪ ਟਰੱਕ ਨਵਾਂ ਜਾਂ ਪੁਰਾਣਾ ਟਰਾਂਸਫਰ ਜਾਂ ਪੋਨੀ ਤੇ ਜਾਂ ਫਿਰ ਰੀਫਰ ਲੈਣਾ ਡਰਾਈਵ ਵੈਨ ਲੈਣੀ ਹੈ ਲੋ ਬੈਡ ਹਾਈ ਬੈਡ ਟ੍ਰੇਲਰ ਲੈਣਾ ਹੈ ਤੇ ਜਾਂ ਟਰੱਕ ਖਾਰ ਮੈਂ ਤੁਹਾਡਾ ਉਹਦੇ ਲਈ ਮਸ਼ੀਨਰੀ ਚਾਹੀਦੀ ਹੈ ਤੇ ਜਾਂ ਕੋਈ ਐਕਸਕੇਵੇਟਿੰਗ ਦੀ ਕੰਪਨੀ ਹੈ ਸੜਕਾਂ ਬਣਾਉਂਦੇ ਹੋ ਪੇਵਿੰਗ ਕਰਦੇ ਹੋ ਉਹਦੇ ਲਈ ਮਸ਼ੀਨਾਂ ਚਾਹੀਦੀਆਂ ਦਿਹਾੜੀਆਂ ਦੋ ਦਾ ਕੰਮ ਲੋਨ ਤੁਹਾਨੂੰ ਕਰਕੇ ਦੇਣਗੇ ਤੇ ਸਸਤਾ ਕਰਕੇ ਦੇਣਗੇ ਅੱਜ ਤੇ ਇਕਲਦੀਪ ਸਿੰਘ ਗਿਲ ਰੂਮੀ ਨਾਲ ਕਰਿਓ ਮਿਸਟਰ ਆਲਾਈਨ ਨੰਬਰ 2 ਤੁਸੀਂ ਇਹ ਤੇ ਹੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਭਾਈ ਆਪਣੇ ਨਹੀਂ ਲੈ ਕੇ ਦੇਣੇ ਚਾਹੀਦੇ ਕਿਉਂਕਿ ਬੱਚਿਆਂ ਦੇ ਅੱਗੇ ਡਿਸਪਲਿਨ ਦੀ ਬਹੁਤ ਘਾਟ ਆ। ਹੂੰ ਚਲੋ ਤੁਸੀਂ 'ਚ ਹੋਗੇ ਥੋੜੇ ਬੱਚੇ ਮੈਚੂਰ ਹੋ ਜਾਂਦੇ ਉਦੋਂ ਲੈ ਲਓ। ਬਾਕੀ ਯੂਨੀਫਾਰਮ ਗੱਲ ਸਾਹਿਬ ਚਾਹੀਦੀ ਹੈ ਗ੍ਰੇਟ ਡਵੈਲਪਸ ਆ ਕਿਉਂਕਿ ਇਸ ਉਮਰ 'ਚ ਬੱਚੇ ਹੁੰਦੇ ਟੀਨੇਜ 8ਵੀਂ ਤੋਂ 12ਵੀਂ ਤੱਕ। ਉਹਨਾਂ 'ਚ ਬ੍ਰਾਂਡ ਨੇਮ ਦੀ ਏਨੀ ਰੇਸ ਲੱਗਦੀ ਹੈ ਨਾ 2-2 ਟਾਈਟਲਸ ਉਹਦਾ ਸ਼ੂਰ ਦਾ ਜੋੜਾ ਮੰਗਦੇ ਆ। ਸੈਲਫੋਨ ਬ੍ਰਾਂਡ ਨੇ ਮੰਗਦੇ ਆ ਕੱਪੜੇ ਬਹੁਤ ਜਣੀ ਕਿ ਰੇਸ ਲੱਗਦੀ ਆ ਆਪਸ ਵਿੱਚ ਆ ਉਹਨਾਂ ਦੇ ਉਹਨਾਂ ਨਾਲ ਕੰਪੀਟੀਸ਼ਨ ਕਰਦੇ ਆ ਦਿੰਦੇ ਫਿਰ ਚਾਹੀਦੀ ਆ ਕਿ ਹੀ ਨਹੀਂ ਚਾਹੀਦਾ ਦੱਸ ਵੀ ਸਕੂਲ ਚ ਹਰੇਕ ਦੇ ਰੂਮ ਦੀ ਫੋਨ ਲੱਗੇ ਹੋਏ ਆ ਆਪਾਂ ਟੀਚਰ ਪੂਰਾ ਖਿਆਲ ਰੱਖਦੇ ਆ ਜਦ ਹੀ ਉਹ ਤੁਹਾਡੇ ਬੱਚੇ ਨੂੰ ਕੋਈ ਮਾੜੀ ਹੋਵੇ ਜਦ ਹੀ ਤੁਹਾਨੂੰ ਫੋਨ ਕਰਦੇ ਆ ਕਰਦਾ ਜਾਂ ਕੁਝ ਬਿਮਾਰ ਆ ਜਾਂ ਕੁਝ ਇਹ ਸਾਲ ਫੋਨ ਨਹੀਂ ਚਾਹੀਦਾ ਜੀ ਬਿਲਕੁਲ ਇਹ ਤਾਂ ਬਹੁਤ ਵਧੀਆ ਵੀ ਕਰਨਾ ਚਾਹੀਦਾ ਗੱਲ ਸਾਬ ਸਾਰਿਆਂ ਨੂੰ ਥੈਂਕ ਯੂ ਭਾਈ ਜੀ ਚੰਡੀਗੜ੍ਹ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਫੋਨ ਤਾਂ ਵੈਸੇ ਮੈਂ ਹੱਕ 'ਚ ਨਹੀਂ ਹੈਗਾ ਪਰ ਜਿਨ੍ਹਾਂ ਨੂੰ ਹੁਣ ਘਰੇ ਲੈ ਕੇ ਦਿੱਤੇ ਹੋਏ ਉਹ ਹਰਦੇ ਨਹੀਂ ਬਚੇ ਪਰ ਮੇਰੇ ਹਿਸਾਬ ਨਾਲ 5ਵੀਂ 6ਵੀਂ 7ਵੀਂ ਤੱਕ ਆਲੇ ਨੂੰ ਦੇ ਦੇਣਾ ਚਾਹੀਦਾ ਕਿਉਂਕਿ ਉਹ ਬੱਚੇ ਐਨੇ ਮੈਚੋਰ ਨਹੀਂ ਹੁੰਦੇ 11ਵੀਂ ਤੋਂ 10ਵੀਂ ਤੋਂ ਬਾਅਦ ਇਹਨਾਂ ਦੇ ਕੋਲ ਫੋਨ ਨਹੀਂ ਹੋਣੇ ਚਾਹੀਦੇ ਜੀ ਕਿਉਂਕਿ ਅਸਲੀ ਇਹ ਜਿਹੜੀ ਪੌੜੀ ਚੜਦੇ ਆ ਜੀ ਇਹ 9ਵੀਂ ਕਲਾਸ ਤੋਂ ਬਾਅਦ ਚੜਦੇ ਥੈਂਕ ਯੂ ਥੈਂਕ ਯੂ ਕੁਲਜੀਤ ਕੌਰ ਬਾਜਵਾ ਜੀ ਤੀਰ ਹਾਂਜੀ ਫੋਨ ਹੋਣੇ ਨਹੀਂ ਚਾਹੀਦੇ ਜੀ ਬੱਚਿਆਂ ਕੋਲ ਬੱਚਿਆਂ ਨੂੰ ਸਕੂਲ ਨੂੰ ਲੈ ਕੇ ਜਾਣਾ ਲਾਊਡ ਨਹੀਂ ਹੋਣਾ ਚਾਹੀਦਾ ਬੰਦ ਹੋਣੇ ਚਾਹੀਦੇ ਦੂਜਾ ਯੂਨੀਫਾਰਮ ਵੀ ਹੋਣੀ ਚਾਹੀਦੀ ਆ ਕਿਉਂਕਿ ਦੀ ਆਦਤ ਤਾਂ ਬਹੁਤ ਜ਼ਿਆਦਾ ਵਿਗੜਦੀ ਆ ਸਾਨੂੰ ਲੱਗਦਾ ਆ ਕਿ ਵਾਈਫਾਈ ਨਾਲ ਕਨੈਕਸ਼ਨ ਨੇ ਇਹ ਜੀ ਇਹ ਫੋਨ ਕਰਨਗੇ ਪਰ ਬੱਚੇ ਪਤਾ ਨਹੀਂਗਾ ਵੀ ਕਦੋਂ ਕਿਹੜੇ ਵਕਤ ਕਿਹੜੇ ਜਾਂਦੇ ਆ ਜੀ ਹੋਣੇ ਨਹੀਂ ਚਾਹੀਦੇ ਥੈਂਕ ਯੂ ਸੋ ਮੱਚ ਜਾਂ ਵੇਖਿਆ ਹੁਣੇ ਪਹਿਲਾਂ ਬੱਚੇ ਨਹੀਂ ਮੰਗਦੇ ਸੀ ਅੱਜ ਤੋਂ ਚਾਰ ਸਾਲ 5 ਸਾਲ ਪਹਿਲਾਂ ਗ੍ਰੇਡ 12 ਦੇ ਵਿੱਚ ਜਾ ਕੇ ਬੱਚੇ ਕਹਿੰਦੇ ਵੀ ਹੁਣ ਤਾਂ ਦੇ ਦਿਓ ਕੋਈ ਦੋਸਤਾਂ ਨੇ ਵੀ ਆਪਣੇ ਘਰ ਦੇ ਵਿੱਚ ਵੀ ਨਹੀਂ ਮੰਗਿਆ ਬੱਚਿਆਂ ਪਰ ਹੁਣ ਦਾ ਰੁਝਾਨ ਹੁਣ ਬੱਚਾ ਬੱਚੀ ਆ ਕੇ ਉਹਦੀ ਸਕੂਲ ਕਾਲਜ ਦੇ ਵਿੱਚ 50 ਬੱਚੇ ਤੇ 49 ਲਈ ਫਿਰਦੇ ਤੇ ਉਹ ਕਹਿੰਦੀ ਕਹਿੰਦੀ ਜਾਂ ਕਹਿੰਦਾ ਬੱਚਾ ਉਹ ਕਹਿੰਦੇ ਸਾਨੂੰ ਨਾਲ ਦੇ ਹੱਸਦੇ ਆ ਸਾਡੇ ਤੇ ਤੇ ਤੂੰ ਕਿਹੜੇ ਜੁਗ ਚ ਰਹੇ ਨਾ ਜਾਂ ਰਹੇ ਨਹੀਂ ਆ ਤੇਰੇ ਕੋ ਫੋਨ ਨਹੀਂ ਇਹ ਪਰ ਰੁਝਾਨ ਉਹ ਜੀ ਫਿਰ ਜ਼ਰੂਰਤ ਪੈ ਜਾਂਦੀ ਆ ਬੱਚਾ ਫਿਰ ਘਰੇ ਫੋਨ ਕਰ ਲਉ ਮੈਨੂੰ ਦੱਸਿਓ ਕਿ ਉਹ ਪਹਾੜੀ ਇਲਾਕੇ ਚ ਰਹਿੰਦਾ ਜਾ ਕੇ ਪੜਨ ਜਾਣਾ ਵੀ ਜਿਹੜਾ ਇਥੋਂ 10 ਘੰਟੇ ਦੀ ਰਸਤਾ ਤੇ 5 ਘੰਟੇ ਦਾ ਰਸਤਾ ਛੱਡਣ ਲੈਣ ਲਈ ਹਾਂ ਚਲੋ ਜੇ ਦੂਰ ਵੀ ਆ ਬੱਚਾ ਸਾਡੇ ਪ੍ਰਾਈਵੇਟ ਸਕੂਲਾਂ ਚ ਆਪਾਂ ਬੱਚਿਆਂ ਨੂੰ ਪੜ੍ਹਾਉਨੇ ਇਹ ਪੁੱਛਤਾ ਲੱਗਦਾ ਆਪਣਾ ਕੋਈ ਟਵਾਸਨ ਕੋਈ ਸੋਸਰੀ ਹੈ ਕੋ ਬਿਆਨ ਆ ਪਰ ਉੱਥੇ ਦੇ ਫੋਨ ਸਕੂਲ ਦੇ ਵਿੱਚ ਲੱਗੇ ਹੋਏ ਕੁਲਵਰਨ ਜੀ ਲਾਈਨ ਨੰਬਰ 3 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਹਿਬ ਸਤਿ ਸ੍ਰੀ ਅਕਾਲ ਬਾਈ ਜੀ ਹਾਂਜੀ ਪਹਿਲੀ ਗੱਲ ਤਾਂ ਮੈਂ ਇਹ ਕਹੂੰਗਾ ਬਿਲਕੁਲ ਫੋਨ ਨਹੀਂ ਲੱਗ ਜਾਣੇ ਚਾਹੀਦੇ ਮੇਰਾ ਮੁੰਡਾ ਜੂਵੀ ਸੀ ਪੜਿਆ ਡਾਕਟਰ ਬਣਿਆ ਮੈਂ ਉਹਨੂੰ ਫੋਨ ਨਹੀਂ ਲਾ ਕੇ ਦਿੱਤਾ ਸਿਰਫ ਉਸ ਰੋਜ਼ ਜਿੱਥੇ ਉਹਨੂੰ ਕਮਣਾ ਲੈ ਕੇ ਦਿੱਤਾ ਸੀ ਕਿਰਾਏ ਤੇ ਜੋ ਵੀ ਸੀ ਦਾ ਟੈਂਪ ਦੇ ਵਿੱਚ ਉਹਨੂੰ ਲੈਂਡ ਲਾਈਨ ਦਾ ਫੋਨ ਸੀਗਾ ਨਾ ਉਹਨੂੰ ਮੈਂ ਕਾਰ ਲੈ ਕੇ ਦਿੱਤੀ ਆ ਤੁਰ ਕੇ ਜਾਂਦਾ ਕਰੋਗੇ ਉਹਨੇ ਸਪੋਇਲ ਹੁੰਦੇ ਆ ਨਾ ਫੋਨ ਤੇ ਨਾ ਮਹਿੰਗੀ ਕਾਰ ਲੈ ਕੇ ਦੇਖੋ ਜੇ ਤੁਸੀਂ ਨਿਆਣੇ ਪੜਾਣੇ ਧੰਨਵਾਦ ਜੀ ਪ੍ਰੋਗਰਾਮ ਦੇ ਸਪான்ਸਰ ਨੇ ਧਾਮੀਨ ਆਰਗੇਨ ਕੰਪਨੀ 600 864 61 31 ਅਮਰੀਕ ਨਾਰਿੰਗ ਤੇ ਰਾਜ ਧਾਮੀ ਧਾਮੀ ਨਾਰਿੰਗਾਂਡ ਕੰਪਨੀ ਆਈਸੀਬੀਸੀ ਦੇ ਕੇਸ ਲੜਦੇ ਆ 6048646131 ਅੱਠ ਵਕੀਲ ਦੋ ਦਸਤਰ ਆਈਸੀਬੀਸੀ ਦੇ ਕੇਸਾਂ ਵਿੱਚ ਬੜੀ ਮਹਾਰਤ ਆ ਆਈਸੀਬੀਸੀ ਵਾਲੇ ਪਾਸੇ ਬਹਿ ਕੇ ਆਈਸੀਬੀਸੀ ਦੇ ਵਕੀਰ ਰਹੇ ਆ ਦੋਨੇ ਇਹਨਾਂ ਨੂੰ ਪਤਾ ਕਿ ਇਥੋਂ ਨੱਪਦੇ ਆ ਸਾਡੇ ਬੰਦੇ ਹੁਣ ਨਹੀਂ ਕਹਿੰਦੇ ਅਸੀਂ ਨੱਪਣ ਦਿੰਦੇ ਤਾਂ ਹੀ ਕੇਸ ਲੜਦੇ ਤੇ ਜਿੱਤਦੇ ਆ 6048646131 ਇੰਦਰਪ੍ਰੀਤ ਟਵਾਣਾ ਜੀ ਮੌਂਟਰੀਅਲ ਤੋਂ ਲਾਈਨ ਨੰਬਰ 3 -1 ਸਵਾਨਾ ਜੀ ਹਲੋ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਮੈਂ ਤਾਂ ਇਹੀ ਗੱਲ ਕਰਨਾ ਚਾਹੁੰਦਾ ਸੀਗਾ ਕਿ ਜਿਹੜੀ ਫੋਨ ਹੈ ਇਹ ਤਾਂ ਬਿਲਕੁਲ ਬੰਦ ਚਾਹੀਦੇ ਨੇ ਪਰ ਜਿਨ੍ਹਾਂ ਨੇ ਮਤਲਬ ਮਜਬੂਰੀ ਲੈ ਕੇ ਵੀ ਦੇ ਬੱਚਿਆਂ ਨੂੰ ਤੇ ਦੇ ਵਾਸਤੇ ਇੱਕ ਹੱਲ ਹੈ ਮੈਂ ਤੁਹਾਨੂੰ ਦੱਸਦਾ ਕੱਲ ਟੋਰਾਂਟੋ ਦੀ ਇੱਕ ਸਟੱਡੀ ਆਈ ਹੈ ਮਾਂ ਨੇ ਸ਼ਿਕਾਇਤ ਕੀਤੀ ਉਹ ਕਹਿੰਦੇ ਵੀ ਜਿਹਦੇ ਬੱਚਿਆਂ ਦੀ ਗੇਮਿੰਗ ਮਤਲਬ ਸੀਗਾ ਸੌਫਟਵੇਅਰ ਉਹ ਕਹਿੰਦੀ ਵੀ ਕੁਦਰਤੀ ਰਾਤ ਨੂੰ ਬੱਚਾ ਮੇਰਾ ਸੌਂ ਗਿਆ ਤੇ ਮੈਂ ਉਹ ਕੁਦਰਤੀ ਸੌਫਟਵੇਅਰ ਚਲਾ ਲਿਆ ਜਿਵੇਂ ਕੋਈ ਗੇਮਿੰਗ ਹੋਣੀ ਹੈ ਬੱਚਿਆਂ ਦੀ ਕੋਈ ਗੇਮਾ-ਗੁਮਾ ਖੇਡਣ ਵਾਲੀ ਸਾਈਟ ਹੋਊਗੀ। ਉਹ ਕਹਿੰਦੀ ਹੋ ਕੇ ਬੱਚੇ ਆਪਸ ਵਿੱਚ ਗੱਲਾਂ-ਬਾਤਾਂ ਕਰਦੇ ਨੇ ਛੋਟੇ ਬੱਚੇ ਕਿਉਂਕਿ ਹੁਣ ਐਡਵਾਂਸ ਬਹੁਤ ਹੈ ਵਰਲਡ ਤੇ ਉਹ ਕੀ ਕੀਤਾ ਕਹਿੰਦੀ ਉਹ ਚੈਟ ਤੇ ਦੇਖਿਆ ਕੋਈ ਬੰਦਾ ਆਇਆ ਕੋਈ ਇਸ ਪਰਸਨ ਅਡਲਟ ਤੇ ਕਹਿੰਦੇ ਵੀ ਸਟਾਰਟ ਪਲੇਇੰਗ ਵਿਦ ਹਿਸ ਜੈਨੇਟਰਸ ਐਂਡ THEN I WAS SHOCKED ਸੀ ਤੇ ਉਹ ਮਤਲਬ ਲੇਡੀ ਕਹਿੰਦੀ ਮੈਂ ਸ਼ੌਕ ਹੋ ਗਈ ਤੇ ਮੈਂ ਰਾਤ ਨੂੰ ਡਿਲੀਟ ਕੀਤਾ ਤੇ ਫਿਰ ਮੈਂ ਗੂਗਲ ਤੇ ਸਰਚ ਕੀਤੀ ਤੇ ਅੱਡ ਦੇਸ਼ਾਂ ਚ ਉਹ ਸਾਈਟ ਬਾਰੇ ਲੋਕਾਂ ਫੇਸਬੁੱਕ ਤੇ ਪਾਇਆ ਵੀ ਜਿਨ੍ਹਾਂ ਜਿਨ੍ਹਾਂ ਕੋਲੇ ਹੈਗੀ ਸਰਵਿਸ ਡਿਲੀਟ ਕਰ ਦੋ ਤੇ ਸਵੇਰੇ ਮੈਂ ਆਪਣੇ ਬੱਚੇ ਨੂੰ ਸਮਝਾਇਆ ਕਿ ਉਦਾਂ ਵੀ ਡਾਇਰੈਕਟ ਤਾਂ ਹੁਣ ਬੱਚੇ ਇੰਨੇ ਛੋਟੇ ਇਨੋਸੈਂਸ ਵੀ ਹੈਗੀ ਇਹਨਾਂ ਦੀ ਚਾਈਲਡਹੂਡ ਹੈ ਉਹਨਾਂ ਕਰ ਸਕਦੇ ਪਿਆਰ ਨਾਲ ਸਮਝਾਇਆ ਕਿ ਇਹ ਚੀਜ਼ ਤੁਹਾਡੇ ਵਾਸਤੇ ਨਹੀਂ ਹੈਗੀ ਤੇ ਇਹ ਜ਼ਰੂਰ ਚੀਜ਼ ਹੈ ਜੇ ਕਿਸੇ ਕੋਲ ਹੈਗਾ ਵੀ ਇਹ ਮੋਬਾਈਲ ਚਲੋ ਹੁਣ ਜੇ ਕਿਸੇ ਨੇ ਕਰ ਵੀ ਲਿਆ ਤੇ ਇਹ ਚੀਜ਼ਾਂ ਜ਼ਰੂਰ ਚੈੱਕ ਕਰੋ ਤੁਹਾਡਾ ਫਰਜ ਬਣਦਾ ਇਹਦੇ ਨਾਲ ਕੋਈ ਸੀਕਰੈਸੀ ਨਹੀਂ ਹੈਗੀ ਬੱਚਾ ਜੇ ਭਟਕਦਾ ਤਾਂ ਉਹਨੂੰ ਸਰਾਹ ਤੇ ਲਿਆਉਣਾ ਵੀ ਆਪਣਾ ਫਰਜ ਹੈ ਪਰ ਫੋਨ ਦੀ ਕੋਈ ਜ਼ਰੂਰਤ ਨਹੀਂ ਹੈ ਜੀ ਅੱਜ ਕੱਲ੍ਹ ਦੇ ਵਰਡ ਚ ਉਹਨਾਂ ਨੂੰ ਚਲੋ ਆਈਪੋਡ ਕੋਈ 뮤직 ਸੁਣਨਾ ਉਹ ਤੇ ਸਾਨੂੰ ਬੜਾ ਫਿਰ ਰੇਸ 'ਚ ਪੈਣਾ ਪੈਂਦਾ ਅਸੀਂ ਇਹ ਰੇਸ ਤੋਂ ਬਾਹਰ ਰਹਿਣਾ ਚਾਹੁੰਦੇ ਆ ਜੀ ਜਿਹੜੇ ਸ਼ੋਰ ਸ਼ੌਕਤ ਧੰਨਵਾਦ ਜੀ ਜੀ ਸੋਮੋਹਨ ਸਿੰਘ ਜੀ ਲਾਈਨ ਨੰਬਰ 4 ਰੋਸਾ ਸਤਿਕਾਲ ਜੀ ਸਤਿਕਾਲ ਜੀ ਕਿਨ ਸਰ ਜੇ ਤਾਂ ਵੀ ਪਹਿਲਾਂ ਤੋਂ ਨੂੰ ਰੋਕ ਕੇ ਰੱਖਾਂਗੇ ਫੋਨ ਤੋਂ ਫੇਰ ਉਹ ਬੈਠ ਸਕਦੇ ਆ ਜੇ ਪਹਿਲਾਂ ਸੀਗਾ ਜੀ 7 ਮਿੰਟ ਤੱਕ ਲੈ ਜਾਈਏ ਫੇਰ ਨਿਆਣਾ ਕਿਤੇ ਹਟਦਾ ਹੁੰਦਾ ਕਿ ਜਦੋਂ ਆਤ ਪੈ ਗਈ ਤੋ ਇਸ ਕਰਕੇ ਮੈਂ ਤਾਂ ਇਹ ਕਹਾਂ ਪਹਿਲਾਂ ਤੋਂ ਪੂਨੋ ਤੋਂ ਲੈਣੇ ਚਾਹੀਦੇ ਦੇਖੋ ਅੱਜ ਤੋਂ 5-7 ਸਾਲ ਪਹਿਲਾਂ ਜਦੋਂ ਨਹੀਂ ਸੀਗੇ ਤਾਂ ਜਦੋਂ ਨਿਆਣੇ ਕੋ ਚੱਲਦਾ ਨਹੀਂ ਸੀ ਕੰਮ ਕਿ ਨਿਆਣਾ ਦੀ ਗੱਲ ਕਰਦਾ ਸੀ ਇਸ ਕਰਕੇ ਇੱਥੇ ਸਕੂਲ ਬਹੁਤ ਸੇਫ ਹੈ ਇੱਥੇ ਸਾਰੀ ਮੁੰਡਾ ਕੋਈ ਨਹੀਂ ਹੈਗਾ ਮੈਂ ਤਾਂ ਇਹ ਕਹਾਂਗਾ ਘਟੂ ਘਾਟਾ ਪਲੱਸ 2 ਤੱਕ ਵੀ ਟੈਲੀਫੋਨ ਨਹੀਂ ਦੇਣ ਚਾਹੀਦੇ ਸਾਰੇ ਆਪਣੇ ਆਪਣੇ ਘਰ ਹੀ ਕੇ ਰੱਖਣ ਇਹ ਅਨਿਆਣੇ ਨੂੰ ਜੇ ਇਹ ਘਰ ਦੇ ਤੋਂ ਹੋਵੇ ਕੋਲ ਕਿਉਂ ਜਦੋਂ ਕੋਈ ਗੱਲ ਹੁੰਦੀ ਆ ਕੋਈ ਸਕੂਲ ਜ਼ਿੰਮੇਵਾਰ ਹੈ ਕਾਲਜ ਜ਼ਿੰਮੇਵਾਰ ਹੈ ਸਾਨੂੰ ਕਹਿੰਦਾ ਬਾਅਦ ਫੇਰ ਦੇ ਵੀ ਇਹਨਾਂ ਨੇ ਫੇਰ ਸਦਾ ਹੀ ਬੰਦ ਰੱਖਿਆ ਜਾਵੇ ਜਿੰਨ ਗੱਲ ਕਰ ਵੀ ਆਪਣੇ ਘਰ ਆਣ ਫੋਨ ਕਰੇ ਜਿੰਨ ਮਰਜ਼ੀ ਕਰੇ ਫੋਨ ਸਰ ਗਗਨ ਸਿੰਘ 604391313 8140120 ਸੀਟ 109 ਨੰਬਰ ਯੂਨਿਟ ਡਾਲਰ ਦੇ ਰੁਪਏ ਤੇ ਰੁਪਈਆ ਦੇ ਡਾਲਰ ਗਗਨ ਸਿੰਘ ਤੁਹਾਨੂੰ ਕਰਕੇ ਬਣਾ ਕੇ ਦਿੰਦੇ ਆ ਪੰਜਾਬ ਫੋਰੈਕਸ ਪ੍ਰੋਸੈਸ ਦਾ ਦੂਜਾ ਨੰ 1 ਵੀ ਕੰਪਲੇਂਟ ਨਹੀਂ ਅੱਜ ਤੱਕ ਗਗਨ ਸਿੰਘ ਦੀ ਪ੍ਰੋਸੈਸ ਦਾ ਦੂਸਰਾ ਨਾਮ ਗਗਨ ਸਿੰਘ 604391313 ਇਧਰ ਉਧਰ ਗੇੜੇ ਨਾਲ ਕੱਢੇ ਨੰਬਰ 1 ਤੇ ਕਰਿਓ ਫੋਨ 3591313 ਤੇ ਕੰਮ ਦੱਸ ਦਿਓ ਜਿਹੜਾ ਦਿਨ ਕਹਿਤਾ ਰੁਪਈਏ ਉੱਥੇ ਹੋਣਗੇ ਇੱਕ ਦਿਨ ਨਹੀਂ ਲੇਟ ਹੋ ਸਕਦੇ ਜੇ ਲੇਟ ਹੋਏ ਤਾਂ ਮੈਨੂੰ ਦੱਸਿਓ ਫਾਲਨ ਕਰ ਲਿਆਂਗੇ ਜਦੀ 604 349 13 13 ਫਾਲਾਨੇ ਬਜ਼ੁਰਗ ਕਹਿੰਦੇ ਹੁੰਦੇ ਫਾਰਨ ਕਰੋ ਫਲਾਣੇ ਫੌਜੀ ਵਾਲੀ ਗੱਲ ਸੀ ਓਏ ਸਸ ਵਿੰਡੋਜ਼ ਘਰ ਜਾਂ ਬਣਾਉਣਾ ਹੈ ਕਰ ਲਿਆ ਤਾਂ ਐਕਸਪੀਰੀਅன்ஸ் ਜਿਹੜਾ ਉੱਥੋਂ ਫਿਰ ਘਰ ਦਾ ਪਤਾ ਲੱਗਦਾ ਜਿਵੇਂ ਪਿੰਡ ਦਾ ਪਤਾ ਘੀਰਿਆਂ ਤੋਂ ਲੱਗਦਾ ਉਹ ਜਿਹੜੀਆਂ ਵਧੀਆ ਐਕਸਟੀਰੀਅਰ ਨਾਲ ਰਲਦੀ ਜਿਹੜੀ ਵਿੰਡੋ ਹੈ ਉਹ ਤੁਹਾਨੂੰ ਫਰੇਮ ਬਣਾ ਕੇ ਦੇਣਗੇ ਅਵਾਰਡ ਵਿਨਿੰਗ 26 ਸਾਲ ਹੋ ਨਾ ਸੜੀ ਚ ਬਣਦੀਆਂ ਤੇ ਸੜੀ ਚ ਵਿਕਦੀਆਂ ਸਾਰੇ ਲੋਰ ਮੈਨ ਲਾਈਨ ਦੇ ਵਿੱਚ ਜਿਹੜੀ ਕਸਟਮਰ ਸਰਵਿਸ ਹੈ ਨੰਬਰ 1 ਹੈ ਜਿਸ ਦਿਨ ਕਹਿਤਾ ਵਿੰਡੋਸ ਤੁਹਾਨੂੰ ਮਿਲਣਗੀਆਂ ਤੇ ਅਵਾਰਡ ਵਿਨਿੰਗ ਵਿੰਡੋਸ osswindows.com ਤੇ ਵੇਖੋ ਤੇ ਆਰਡਰ ਕਰੋ 604 597 5033 ਡਾਂਡੀ ਮੰਗਤਾ ਜੀ ਲਾਈਨ ਨੰਬਰ 5 ਸੰਦੀ ਮੰਗਤਾ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੇਖੋ ਜੀ ਇਹ ਹੱਕ ਤੇ ਨਹੀਂ ਹੋਂ ਵੀ ਨਿਆਣਿਆਂ ਦੇ ਹੱਥ ਦੇ ਵਿੱਚ ਫੋਨ ਬੰਦ ਕਰ ਦੇਣਾ ਚਾਹੀਦਾ ਵੀ ਜਿੱਦਾਂ ਹੁਣ ਤੁਹਾਡੀ ਸਪੌਂਸਰਬਿਲਟੀ ਇਹ ਬਣਦੀ ਆ ਜੇ ਇੰਡੀਆ 'ਚ ਹੁੰਦਾ ਸੀ ਵੀ ਸਾਰਾ ਹੀ ਟੱਬਰ ਇਕੱਠੇ ਹੀ ਸੌਂਦੇ ਹੁੰਦੇ ਸੀਗੇ ਮੰਜੇ ਚਾ ਕੇ ਉਹ ਸਾਰੇ ਬੱਚੇ ਵੀ ਸਟੋਰੀਆਂ ਵੀ ਸੁਣਦੇ ਜੇ ਤਾਂ ਤੁਸੀਂ ਇਹਨਾਂ ਨੂੰ ਠਾਉਣਾ ਚਾਹੁੰਦੇ ਆ ਫੇਰ ਤਾਂ ਇਹ ਆ ਵੀ ਇੱਕ ਬੈਠਕ ਬਣਾਓ ਇਹ ਘਰ ਉਦਾਂ ਦੇ ਹੈ ਨਹੀਂ ਉਹ ਤੇ ਬਈ 8 ਵਜੇ ਪੱਤੀ ਸਾਰੀ ਬੰਦ ਕਰ ਦੇ ਤੁਸੀਂ ਵੀ ਨਹੀਂ ਟੀਵੀ ਦੇਖਣਾ ਕਿਸੇ ਨੇ ਵੀ ਨਹੀਂ ਫੋਨ ਕਰਨਾ ਫੇਰ ਤਾਂ ਬੱਚੇ ਠੀਕ ਹੋ ਸਕਦੇ ਆ ਤੇ ਜੇ ਉਦਾਂ ਜੇ ਤੁਸੀਂ ਕਹਿੰਦੇ ਵੀ ਬੱਚਿਆਂ ਤੇ ਕੰਟਰੋਲ ਮੈਂ ਨਹੀਂ ਇਹਦੇ ਹੱਕ ਦੇ ਵਿੱਚ ਕਿਉਂਕਿ ਬੱਚਿਆਂ ਨੂੰ ਸਾਰਾ ਕੁਝ ਦਿਖਾ ਲ ਫੋਨ ਦੇ ਜੋ ਵੀ ਹੈਗਾ ਜੋ ਵੀ ਹੈਗਾ ਨਾ ਉਹ ਬੱਚਿਆਂ ਨੂੰ ਦਿਖਾ ਦੇ ਬੱਚੇ ਫੇਰ ਕੁਝ ਤਾਂ ਲੈ ਲ ਲੈਣਗੇ ਨਹੀਂ ਤਾਂ ਨਹੀਂ ਤਾਂ ਬਈ ਕੰਮ ਖਰਾਬ ਹੀ ਆ ਜਿੱਦਾਂ ਹੁਣ ਤੁਸੀਂ ਨਹੀਂ ਲੈ ਕੇ ਦੋਗੇ ਤੇ ਉਹਨਾਂ ਦੇ ਫਰੈਂਡਾਂ ਨੇ ਲੈ ਜਾਣਾ ਮੁੰਡੇ ਕੁੜੀਆਂ ਨੂੰ ਫੋਨ ਲੈ ਕੁੜੀ ਤੋਂ 7-7 ਫੋਨ ਮੁੰਡਾ ਲੈ ਕੇ ਦੇਈ ਜਾਂਦੇ ਇੱਕ ਦੂਜੇ ਨੂੰ ਫੇ ਤੁਹਾਡਾ ਤਾਂ ਬੱਚਾ ਦੂਜੇ ਪਾਸੇ ਨੂੰ ਚੱਲ ਪਊਗਾ ਉਹਨੇ ਤੁਹਾਡੇ ਚੀਜ਼ ਨਹੀਂ ਲੈਣਾ ਬਾਹਰੋਂ ਲੈ ਲਊਗਾ ਉਹ ਤੇ ਇਸ ਕਰਕੇ ਬੱਚਿਆਂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਤੁਸੀਂ ਕਰ ਸਕਦੇ ਆ ਜਾਂ 8-9 ਵਜੇ ਬੱਤੀ ਸਾਰੀ ਬੰਦ ਹੋ ਜਾਵੇ ਘਰ ਦੀ ਤੁਸੀਂ ਕਿਸੇ ਨੂੰ ਫੋਨ ਨਾ ਕਰਨ ਦਾ ਉਹ ਤੇ ਨਾ ਆਪ ਕਰੋ ਜਾਂ ਇਦਾਂ ਦੇ ਸਕੂਲ ਖੁੱਲਣ ਵੀ ਜਿਹਦੇ ਵਿੱਚ ਉਹ ਫੋਨ ਗੇਟ ਤੇ ਲੈ ਲੈਣ ਵੀ ਸਾਰਾ ਇਹ ਦੇ ਫੋਨ ਨਹੀਂ ਕਰਨਾ ਉਹਨਾਂ ਕੋ ਕੰਟਰੋਲ ਰਹਿ ਸਕਦਾ ਜੇ ਇਹ ਚੀਜ਼ ਇਦਾਂ ਦੀ ਆਈ ਇੰਟਰਨੈਟ ਇਹਦੇ ਤੇ ਬੱਚੇ ਕੀ ਬੁੱਢੇ ਕੀ ਸਾਰੇ ਮਤਲਬ ਹੈਗੇ ਬੁੱਢੇ ਆਪ ਤਾਂ ਦੇਖੀ ਜਾਂਦੇ ਸਾਰਾ ਕੁਝ ਉਡ ਪਤੰਗ ਇਸ ਕਰਕੇ ਬੱਚਿਆਂ ਨੂੰ ਵੀ ਦਿਖਾ ਲ ਇੱਕ ਵਾਰੀ ਜੋ ਪੁੱਛ ਹੈਗਾ ਤੇ ਸਾਹਮਣੇ ਬਹਾਲ ਕੇ ਦਿਖਾ ਦੋ ਜਿੱਦਾਂ ਕਹਿ ਲਓ ਬਈ ਉਹ ਜੋ ਕੁਝ ਵੀ ਹੈਗਾ ਤਾਂ ਫੇਰ ਕੋਈ ਤੇ ਗੱਲ ਤੁਹਾਡੀ ਬਣ ਠਾਕਦੀ ਕਿਉਂਕਿ ਬੱਚੇ ਹਟ ਜਾਂਦੇ ਆ ਜਿਹੜੇ ਛੋਟੇ ਛੋਟੇ ਬੱਚੇ ਲੱਗੋ ਨਾ ਆਈਫੋਨ ਲੈ ਕੇ ਇਹ ਵੀ ਹਟ ਜਾਂਦੇ ਆ ਜੇ ਤੁਸੀਂ ਉਹਦੇ ਨਾਲ ਟਾਈਮ ਸਪੈਂਡ ਕਰੋ ਫੇਰ ਹਟਦੇ ਆ ਉਹ ਜੇ ਤੁਸੀਂ ਆਪ ਮਾਤੇ ਕਰਨੇ ਆ ਉਹਨੂੰ ਟਾਈਮ ਨਹੀਂ ਦੇਣਾ ਤਾਂ ਫੇਰ ਨਹੀਂ ਇਹ ਹਟਣਾ ਕੰਮ ਤੇ ਏਦਾਂ ਬੱਚਿਆਂ ਨੂੰ ਜ਼ਬਰਦਸਤੀ ਨਹੀਂ ਕਰਨਾ ਚਾਹੀਦਾ ਬੱਚਿਆਂ ਦੇ ਨਾਲ ਇਹ ਟੱਕਾ ਹੋਊਗਾ ਜੀ ਸੱਸਰੀ ਘਾਲ ਜੀ ਹਰਜਿੰਦਰ ਸਿੰਘ ਜੀ ਲਾਈਨ ਨੰਬਰ 2 ਜੋ ਸੱਸਰੀ ਘਾਲ ਜੀ ਸਸੀ ਕਾਲ ਜੀ ਗੱਲਬਾਤ ਉਹ ਇੱਕ ਕੰਪਲਿਕੇਟਡ ਵਿਸ਼ਾ ਬਹੁਤ ਹੈਗਾ ਤੇ ਇਹ ਇਹ ਦੀ టు ਆ ਥਾਕ ਬਟ ਵੈਰੀ ਹਾਰਡ టు ਕੰਟਰੋਲ ਜਿਹੜੀ ਸਿਚੁਏਸ਼ਨ ਆ ਗਈ ਹੈ ਹੁਣ ਕਿਉਂਕਿ ਇਹ ਵਿੱਚ ਆਪਾਂ ਵੇਖੋ ਵੱਡੇ ਆ ਮਚੂਰ ਆ ਸਾਰੇ ਆਪਾਂ ਗੱਲਾਂ ਕਰੀ ਜਾਂਦੇ ਆ ਤੇ ਆਪਾਂ ਨੂੰ ਸੌਖਾ ਬੜਾ ਲੱਗਦਾ ਵੀ ਐ ਕਰ ਜੀ ਬੰਦ ਹੋਣੇ ਚਾਹੀਦੇ ਆ ਪਰ ਇਹ ਜੇ ਬੰਦ ਹੋ ਗਏ ਜੇ ਆਪਾਂ ਮੰਨ ਲਓ ਨਹੀਂ ਵੀ ਲੈ ਕੇ ਦਿੰਦੇ ਕਿਸੇ ਬੱਚੇ ਨੂੰ ਮੰਨ ਲਓ ਜਿਵੇਂ ਆਪਾਂ ਆਮ ਡਿਸਕਸ ਕਰ ਰਹੇ ਹੁਣ ਉਹ ਜਿਵੇਂ ਕੀ ਹੁੰਦਾ ਸੀ ਪੁਰਾਣੇ ਆਪਾਂ ਇੰਡੀਆ 'ਚਵੇਂ ਇਹਨੇ ਹੁੰਦੇ ਸੀ ਕਿ ਜਿਹਦੇ ਕੋਲ ਇੱਕ ਕਾਲਜ ਸਕੂਟਰ ਹੋਣਾ ਨਾ ਉਹ ਦੂਜੇ ਵਿਚਾਰੇ ਐਵੇਂ ਉਹਦੀ ਉਹ ਟਾਕੀ ਮਾਰੀ ਜਾਣੀ ਉਹਨਾਂ ਨੇ ਵੀ ਇੱਕ ਹੂਟਾ ਹਟਾ ਲੈ ਲਾਂਗੇ ਇਹਦੇ ਤੇ ਉਹਦੇ ਨਾਲ ਬੱਚਿਆਂ ਨੂੰ ਮੈਸਯੂਜ਼ ਵੀ ਬੱਚੇ ਹੋ ਸਕਦੇ ਜਿਹੜੇ ਇੱਕ ਅੱਦੇ ਕੋਲੇ ਨਾ ਹੋਊਗਾ ਜਾਂ ਲੈ ਕੇ ਦੇਵਾਂਗੇ ਉਹਨੂੰ ਵੀ ਦੂਜਿਆਂ ਕੋਲੇ ਹੈਗਾ ਤੇ ਉਹ ਮੈਸਯੂਜ਼ ਵੀ ਕਰ ਸਕਦੇ ਉਹ ਬੱਚੇ ਨੂੰ ਵੀ ਤੈਨੂੰ ਅਸੀਂ ਵਰਤਨ ਨੂੰ ਦੇਵਾਂਗੇ ਤੇ ਤੂੰ ਸਾਡਾ ਆ ਕੰਮ ਕਰ ਜਾ ਉਹ ਕਰ ਇਹਦੇ ਨਾਲ ਤਾਂ ਹੁਣ ਇਹ ਹੈ ਹੱਲ ਕੋਈ ਨਹੀਂਗਾ ਕਿਉਂਕਿ ਜਿਹੜੇ ਸਾਰੇ ਜਿਹੜੀ ਉਹਨਾਂ ਦੇ ਬੈਠੇ ਆ ਦੇ ਜਦੋਂ ਤੇ ਨਾਲ ਨਾਲ ਇਹ ਵੀ ਉਹਦਾ ਬਾਏ ਲਾਏ ਕੋਈ ਗਵਰਨਮੈਂਟ ਵੱਲੋਂ ਬਣੇ ਕਿ ਜਿਹੜਾ ਸਟ੍ਰੈਕਟਲੀ ਬੈਨ ਹੋਵੇ ਤੇ ਫੇਰ ਦਾ ਕੋਈ ਹੱਲ ਹੈ ਸਕਦਾ ਆਦਰਵਾਇਸ ਮੇਰੇ ਹਿਸਾਬ ਕਿਤਾਬ ਨਾਲ ਕੋਈ ਕੰਟਰੋਲ ਨਹੀਂ ਇੱਥੇ ਹੋ ਸਕਦਾ ਜੀ ਥੈਂਕ ਯੂ ਠੀਕ ਹੈ ਫਰਕ ਹੈ ਬਾਈ ਜੀ ਪਰ ਬਹੁਤ ਚੀਜ਼ਾਂ ਜਿਹੜੀਆਂ ਸਾਡੇ ਪੁਰਖਿਆਂ ਨੇ ਸਾਨੂੰ ਸਮਝਾਈਆਂ ਆ ਕਰਨਾ ਆ ਕਰਨਾ ਠੀਕ ਹੈ ਸੋਸਾਇਟੀ ਦੀ ਮੁਸ਼ਕਲ ਹੈ ਬੱਚੇ ਹੀਣਤਾ ਚ ਜਾਣਗੇ ਚੰਡੀ ਮੰਗਤੇ ਉਹਨਾਂ ਦਾ ਸਕੂਲ ਆਫ ਆ ਕਿ ਸਾਰੀ ਖੁੱਲੀ ਗੱਲ ਉਹਨਾਂ ਨਾਲ ਕਰਨੀ ਚਾਹੀਦੀ ਹੈ ਓਬਵੀਅਸਲੀ ਖੁੱਲੀ ਗੱਲ ਕਰਨੀ ਚਾਹੀਦੀ ਹੈ ਪਰ ਫੋਨ ਦਾ ਖੁੱਲੀ ਗੱਲ ਨਾਲ ਕੋਈ ਸਬੰਧ ਨਹੀਂ ਖੁੱਲੀ ਗੱਲ ਜਿਹੜੀ ਫੇਸ ਟੂ ਫੇਸ ਬਹਿ ਕੇ ਗੱਲ ਕਰਨੀ ਚਾਹੀਦੀ ਹੈ ਪੀ ਪੁੱਤ ਨਾਲ ਕਿ ਉਹ ਇੰਨੇ ਵਿਸ਼ਵਾਸ ਚ ਆਤਮ ਵਿਸ਼ਵਾਸ ਚ ਵੀ ਮੈਂ ਕੁਝ ਵੀ ਹੋਇਆ ਸਕੂਲ ਦੇ ਕੋ ਬਾਹਰ ਮੈਂ ਆਪਣੇ ਮਾਪੇ ਨੂੰ ਦੱਸਣਾ ਉਹ ਆ ਸਵਾਦ ਪਰ ਫੋਨ ਦੇ ਉੱਪਰ ਜੇ ਤੁਸੀਂ ਬੱਚੇ ਨੂੰ ਦਿਨੇ ਆ ਦੇ ਦੇਈ ਰਹੇ ਆਪਾਂ ਸਾਰੇ ਹਟਾਉਣਾ ਵੀ ਨਹੀਂ ਕਿਸ ਨੇ ਪਾਲਿਸੀ ਇੱਕ ਬਣਾਈ ਹੈ ਟਵਾਂਟੋ ਦੇ ਸਕੂਲ ਨੇ ਕਈ ਵਾਰ ਹੁਣ ਭੋਲ ਉਮਰ ਹੁੰਦੀ ਹੈ ਪਤਾ ਨਹੀਂ ਹੁੰਦਾ ਉਹਨਾਂ ਨੂੰ ਭੋਲ ਉਮਰ ਦੇ ਵਿੱਚ ਕੋਈ ਚੀਜ਼ਾਂ ਜਈਆਂ ਹੋ ਜਾਂਦੀਆਂ ਜਿਹੜੀਆਂ ਔਖਾ ਕਰਦੀ ਬਾਕੀ ਵੀ ਤੁਸੀਂ ਸਾਰੇ ਸੋਚਦੇ ਆਈ ਏਮ ਵਿਦ ਯੂ ਗਾਇਜ਼ ਜਿਵੇਂ ਵੀ ਤੁਸੀਂ ਚਾਹੁੰਦੇ ਆ ਉਹ ਗੱਲ ਠੀਕ ਆ ਤੁਹਾਡੀ ਪਰ ਤੇ ਠੀਕ ਆ ਸਾਡੀ ਸੋਚਣੀ ਤੇ ਬੱਚੇ ਦੀ ਸੋਚਣੀ ਦਾ ਫਰਕ ਆ ਪਰ ਫੇਰ ਵੀ ਤੇ ਹੁੰਦਾ ਟੀਸਰ ਅੱਜ ਅੱਜ ਵੱਡੇ ਦਾ ਬਜਟ ਦੇਖ ਸਵਾ ਦੋ ਅਰਬ ਡਾਲਰ ਆਥਣੇ ਦੇਖੋ ਕਿਸੇ ਚ ਕਿੰਨੇ ਪੈਂਦੇ ਆ ਸ਼ਬਦਾਂ ਦੇ ਜਾਦੂਗਰ ਨੇ ਇਹ ਨਾਲ ਮੁਸਕਰਾਹਟ ਬਹੁਤਿਆਂ ਦਾ ਸੂਤ ਤੇ ਹਾਸੇ ਨਾਲ ਹੀ ਕਈ ਤਾ ਲੀਡਰ ਬਣ ਗਏ ਇੱਕ ਜਫੀ ਇੱਕ ਹਾਸਾ ਚੱਕ ਮੇਰੇ ਭਾਈ ਤਾਂ ਹੀ ਤਾਂ ਮੁੰਦਰਾ ਚਾੜਦੇ ਹਾਂ ਜਦੋਂ ਦਾ ਹਾਰ ਪਾਈ ਜਾਂਦਾ ਸੀ ਮੈਨੂੰ ਤਾਂ ਡਰ ਸੀ ਵੀ ਕਿਤੇ ਸਰਜਰੀ ਵਾਲਾ ਕੰਮ ਨਾ ਹੋ ਜਵੇ ਬੁਰਕ ਦਾ ਵੀ ਡਰ ਸੀ ਮੈਨੂੰ ਕੁਲਵੰਤ ਸਿੰਘ ਜੀ ਲਾਈਨ ਨੰਬਰ 4 ਹਾਂ ਜੀ ਸਤਿ ਸ੍ਰੀ ਅਕਾਲ ਜਨਾਬ ਜੀ ਮੈਂ ਹਾਕਾ ਮਾਰੀ ਜਨਾ ਮੈਂ ਵੀ ਮਾਰਾਂ ਤੁਹਾਨੂੰ ਬਾਈ ਦੀ ਕਹੀ ਜਨਾਵ ਚਲੋ ਗੱਲ ਐਦਾ ਹੈ ਕਿ ਫੋਨ ਜਿਹੜਾ ਆ ਕੰਪਲਸਰੀ ਕਿੱਦਾਂ ਆ ਕਿ ਇਹਦੇ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਆ ਔਰ ਅੱਜ ਸਾਡੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਅਸੀਂ ਕਿਸੇ ਚੀਜ਼ ਦਾ ਆਨਸਰ ਲੈਣਾ ਤੇ ਲਾਇਬ੍ਰੇਰੀ ਜਾਈਏ ਫਿਰ ਬੁੱਕ ਲਭੀਏ ਫਿਰ ਉਤੇ ਰਜਿਸਟਰ ਕਰਾਈਏ ਫਿਰ ਉਹਨੂੰ ਪੜ੍ਹੀਏ ਫਿਰ ਉਹਨੂੰ ਹਾਈਲਾਈਟ ਕਰੀਏ ਸੋ ਇਹ ਜਿਹੜੀਆਂ ਚੀਜ਼ਾਂ ਨੇ ਬਹੁਤ ਲੰਮਾ ਪ੍ਰੋਸੈਸ ਹੈ ਪਰ ਇੰਟਰਨੈਟ ਜਿਹੜਾ ਵੇ ਜਿਹੜਾ ਵੀ ਤੁਹਾਡੇ ਦਿਮਾਗ ਕੋਈ ਕੁਐਸਚਨ ਆਉਂਦਾ ਉਹ ਰਾਈਟ ਵੇ ਤੁਸੀਂ 5 ਮਿੰਟ ਦੇ ਅੰਦਰ ਉਹਦਾ ਆਨਸਰ ਲੱਭ ਸਕਦੇ ਹੋ ਔਰ ਜੇ ਤੁਹਾਨੂੰ ਨੀ ਆਂਦਾ ਜ ਕੋਈ ਬੁੱਕ ਚ ਨਹੀਂ ਆਂਦਾ ਹੋਰ ਕਿੰਨੇ ਉਹ ਐਕਸਪਰਟ ਬੈਠੇ ਹੁੰਦੇ ਜਿਹੜੇ ਆਨਸਰ ਦੇਣ ਵਾਸਤੇ ਤਿਆਰ ਬੈਠੇ ਹੁੰਦੇ ਆ ਸੋ ਕਹਿੰਦਾ ਮੇਰਾ ਮਤਲਬ ਇਹ ਹੈ ਜਿਹੜਾ ਹੈ ਬੱਚਿਆਂ ਵਾਸਤੇ ਮਰਸਤ ਆ ਇਹ ਲਾਇਬ੍ਰੇਰੀ ਹੈ ਦੁਨੀਆ ਦੀ ਸਭ ਤੋਂ ਵੱਡੀ ਔਰ ਨੰਬਰ 2 ਹੁਣ ਗੱਲ ਇਹ ਹੈ ਕਿ ਇਹਦਾ ਮਿਸਯੂਜ਼ ਹੋ ਰਿਹਾ ਉਹਦੇ ਚ ਕੱਲਾ ਪੜ੍ਹਾਈ ਲਿਖਾਈ ਨਹੀਂ ਆ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਨੇ ਪਾ ਰੱਖੀਆਂ ਨੇ ਬੱਚੇ ਉਹਨਾਂ ਨੂੰ ਵੀ ਦੇਖਦੇ ਆ ਇਹ ਜਿਹੜੀ ਚੀਜ਼ ਆ ਅਸੀਂ ਉਹਨਾਂ ਤੋਂ ਵਾਂਝਿਆ ਕਰਨਾ ਚਾਹੁੰਦੇ ਆ ਜੇ ਬਈ ਉਹ ਚੀਜ਼ ਨਾ ਪੜਨ ਜਾਓ ਦੇਖਣ ਨਾ ਬਾਕੀ ਦੇ ਚੀਜ਼ਾਂ ਸਾਰੀਆਂ ਦੇਖਣ ਤਾਂ ਕੀ ਕਰ ਸਕਦੇ ਆ ਅਸੀਂ ਇਹਦਾ ਹੱਲ ਕੀ ਆ ਹੱਲ ਇਹਦਾ ਬਾਈ ਜੀ ਇੱਕੋ ਹੀ ਆ ਕਿ ਜਿਸ ਤਰੀਕੇ ਨਾਲ ਪ੍ਰਾਪਰਟੀ ਡੀਲਰਾਂ ਕੋਲ ਇੱਕ ਕੈਲਕੂਲੇਟਰ ਹੁੰਦਾ ਡਿਫਰੈਂਟ ਟਾਈਪ ਦਾ ਉਹ ਜਿਹਦੇ ਵਿੱਚ ਮੌਰਗੇਜ ਦੀ ਕੈਲਕੂਲੇਸ਼ਨ ਕਰਦੇ ਆ ਜਾਂ ਜਦੋਂ ਰੀਅਲਟਰ ਬੰਦੇ ਆ ਇੱਕ ਸਪੈਸ਼ਲ ਟਾਈਪ ਦਾ ਕੈਲਕੂਲੇਟਰ ਹੁੰਦਾ ਸਾਨੂੰ ਖਰੀਦਣਾ ਪੈਂਦਾ ਉਸੇ ਤਰੀਕੇ ਦੀ ਨੇ ਇੰਨੇ ਨੇ ਚੀਜ਼ਾਂ ਬਣਾ ਰੱਖੀਆਂ ਐ ਤਾਂ ਕਿਉਂ ਨਾ ਹੋ ਜੇ ਇੱਕ ਸੈੱਲਫੋਨ ਬੰਦੇ ਜਿਹਦੇ ਵਿੱਚ ਸਿਰਫ ਇਹ ਆਪਣਾ ਜਿਹੜੀ ਪੜਾਈ ਲਿਖਾਈ ਦਾ ਜ਼ਮਾਨਾ ਹੈ ਉਹ ਹੀ ਪਾਇਆ ਜਾਵੇ ਵਿੱਚ ਦੂਜੇ ਨਹੀਂ ਇਹ ਚੀਜ਼ਾਂ ਉਹਨਾਂ ਤੋਂ ਨਾ ਮਤਲਬ ਉਹਨਾਂ ਵਿੱਚ ਨਾ ਐਡ ਕੀਤੀਆਂ ਜਾਣ ਇਹੋ ਜਿਹੇ ਸੈੱਲਫੋਨ ਜਿਹੜੇ ਆ ਡਿਫਰੈਂਟ ਟਾਈਪ ਦੇ ਉਹ ਤਿਆਰ ਕੀਤੇ ਜਾਏ ਚਾਹੀਦੇ ਆ ਔਰ ਉਹੀ ਬੱਚਿਆਂ ਨੂੰ ਲੈ ਕੇ ਦੇਣੇ ਚਾਹੀਦੇ ਆ ਇਹਦੇ ਜਿਹੜੀਆਂ ਸੈੱਲਫੋਨ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਯਾ ਦੀ ਆ ਇਲੈਕਟ੍ਰੋਨਿਕ ਤੇ ਆਪਣਾ ਜਿਹੜਾ ਇੰਟਰਨੈਟ ਆ ਜਿੱਥੇ ਉਹ ਰਿਕਾਰਡਿੰਗ ਹੁੰਦੀ ਆ ਉੱਥੇ ਕੋਈ ਜ਼ਿਆਦਾ ਜ਼ਿਆਦਾ ਸਿਸਟਮ ਕੀਤਾ ਜਾਵੇ ਕਿ ਜਿਹੜਾ ਬੱਚਿਆਂ ਨੂੰ ਤੁਸੀਂ ਸੈੱਲਫੋਨ ਦੇਣਾ ਉਹਦੇ ਵਿੱਚ ਜਿਹੜਾ ਪੜ੍ਹਾਈ ਲਿਖਾਈ ਦਾ ਦਿੱਤੀ ਜਾਵੇ ਜਿਹੜਿਆਂ ਕੋਈ ਅਲਟ ਰਿਜ਼ਲਟਿਲਦਾ ਹੈ ਉਹਨਾਂ ਤੋਂ ਉਹਨਾਂ ਨੂੰ ਐਡ ਨਾ ਕੀਤਾ ਜਾ ਸੋ ਇਹੋ ਜਿਹੇ ਸੈੱਲਫੋਨ ਡਿਫਰੈਂਸ ਟਾਈਪ ਦੇ ਜਿਹੜੇ ਆ ਉਹ ਤਿਆਰ ਕੀਤੇ ਜਾਣੇ ਚਾਹੀਦੇ ਆ ਮੇਰਾ ਇਹ ਸੁਝਾਅ ਸਾਡਾ ਬੇਟਾ ਆ ਨਮੀ ਡੌਲਾਜੀ ਸਕੂਲੋਂ ਆ ਰਿਹਾ ਸੀ ਉਹ ਕਹਿੰਦਾ ਸਾਡੇ ਤੇ ਤਵਾ ਲੱਗਦਾ ਤੇ ਉਹ ਕਹਿੰਦਾ ਵੀ ਟਾਈਮ ਸਾਡੇ ਮੇਰਾ ਥੀ ਵਯੂ ਆ ਵੀ ਟਾਈਮ ਨਾਲ ਟੈਕਨੋਲੋਜੀ ਵੀ ਬਦਲ ਗਈ ਤੇ ਸਾਨੂੰ ਵੀ ਨਾਲ ਬਦਲਣਾ ਪੈਣਾ ਤੁਸੀਂ 올ਡ ਸਕੂਲੋਂ ਤੇ ਤੁਹਾਡੇ ਥੌਟਸ ਨੇ ਜਿਹੜੇ ਪੁਰਾਣੇ ਸਨ 올ਡ ਸਕੂਲੋਂ ਤੁਸੀਂ ਤੇ ਇਹਦੇ ਨਾਲ ਵੀ ਸਾਨੂੰ ਫੋਨ ਚਾਹੀਦਾ ਜੋਤ ਸਿੰਘ ਨੂੰ ਆਲਰੇਡੀ ਫੋਨ ਮਿਲਿਆ ਹੈ થેન્ક યુ એ જસપર્દਾજી લાઈન નંબર 5 હેલો જી હેલો નમસ્કારજી સસ્કારજી ਮੇਰਾ ਮੇਰਾ ਆਈਡੀਆ ਤਾਂ ਹੈਗਾ ਕਿ ਉਹਨਾਂ ਨੂੰ ਦੇਣਾ ਚਾਹੀਦਾ ਫੋਨ ਕਿਸੇ ਬਹੁਤ ਵੱਡੀ ਸਿਕਿਉਰਿਟੀ ਆ ਜਿਹੜਾ ਨਾਲ ਕੰਟੈਕਟ ਰਹਿੰਦੇ ਆ ਉਹਨਾਂ ਨੂੰ ਤੁਹਾਨੂੰ ਮਾਨੀਟਰ ਕਰਨਾ ਪੰਦਾ ਬਸ ਵੇ ਜਾਂ ਕੋਈ ਵੀ ਚੀਜ਼ ਇਦਾਂ ਬਹਿਮ ਤੱਕ ਨਹੀਂ ਸ਼ਾ ਦੇ ਕੋਈ ਵੱਡਾ ਜੂਗਾ ਉਹ ਦੇ ਸਟੂਡੈਂਟਸ ਉਹਦਾ ਲਈ ਜਿੰਨੇ ਵੀ ਸਾਰੇ ਆ ਮੇਰੇ ਖਿਆਲ ਆ ਆਈਪੋਡ ਆਈਪੋਡ ਗ੍ਰਾਪਸ਼ਨ ਹੈ ਛੋਟੇ ਬੱਚਿਆਂ ਲਈ ਮੈਂ ਇਹ ਹੀ ਸੋਚਦਾ ਵੀ 11ਵੀਂ ਤੱਕ ਆਈਪੋਡ ਦਿੱਤਾ ਜਾਵੇ ਵਿਦਆਊਟ ਸਿਮ ਉਹ ਤੁਹਾਡੇ ਕਰ ਸਕਦੇ ਆ ਤੇ ਕਈ ਵਾਰ ਫੋਨ ਕਾਲ ਵੀ ਕਰ ਦਿੰਦੇ ਆ ਹੋਰੇ ਨੰਬਰ ਹੁੰਦਾ ਪਤਾ ਨਹੀਂ ਕਿੱਥੇ ਦਾ ਤੇ ਬਾਕੀ ਬੱਚੇ ਘਰੇ ਵੀ ਖੈਰ ਜੇ ਚੈਟਿੰਗ ਉਹਨਾਂ ਨੇ ਕਰਨੀ ਹੈ ਘਰੇ ਕੰਪਿਊਟਰ ਤੇ ਬੈਠੇ ਵੀ ਉਹ ਕਰ ਲੈਂਦੇ ਆ ਇਰ ਫੇਰ ਤਾਂ ਤੁਹਾਨੂੰ ਪਤਾ ਨਹੀਂ ਲੱਗਣ ਦਿੰਦੇ ਤੁਸੀਂ ਉਹਨੂੰ ਟੋਕ ਨਹੀਂ ਸਕਿਆ ਉਹਨਾਂ ਨੂੰ ਪਰ ਕਰਨਾ ਪੈਣਾ ਕਿੰਨੀ ਜਦ ਤੁਸੀਂ ਨੂੰ ਆਪਾਂ ਉਹ ਪੋਡਕਾਸਟ ਪੁੱਛ ਥੈਂਕ ਯੂ ਤੇ ਇੱਕ ਹੋਰ ਕਹਿੰਦੇ ਆ ਹਾਂ ਜੀ ਠੀਕ ਆ ਬਾਈ ਜੀ ਥੈਂਕ ਯੂ ਇੱਕ ਹੋਰ ਵੀ ਕਹਿੰਦੇ ਜਵਾਕ ਮੈਂ ਕਹਿੰਦਾ ਵੀ ਯਾਰ ਰਹਿਣ ਦੇ ਸਕੂਲ ਦੇ ਤਾਂ ਹੀ ਤਾਂ ਕਹੀਦਾ ਕਿੰਨੇ ਹੁੰਦੇ ਨੇ ਉਹ ਕਹਿੰਦੇ ਵੇਟ ਮੈਂ ਕਿਹਾ ਵੀ ਤੈਨੂੰ ਉਂ ਨਹੀਂ ਪਤਾ ਸਿਆ ਨਾ ਉਹ ਜਾਂ ਮੇਰੇ ਕੋਲ ਕੈਲਕੂਲੇਟਰ ਆ ਭਾਈ ਆਈ ਹੈਵ ਟੂ ਜੂਲ ਜੂਲ ਬਾਈ ਬ੍ਰੇਨ ਬਹੁਤ ਤਿੱਖੇ ਜਵਾਬ ਦੇ ਮੈਂ ਆਹ ਤੋਂ 7 ਕਿੰਨੇ ਹੁੰਦੇ ਨੇ ਵੇਟ 8 7 ਇਸ 56 ਮੈਂ ਕਿਹਾ ਮੈਂ ਤੈਨੂੰ ਦੱਸ ਰਿਹਾ 56 ਤੂੰ ਕੈਲਕੂਲੇਟਰ ਦੋ ਮੈਨੂੰ ਦੱਸ ਰਹੀ ਹੈ ਉਹ ਕਹਿੰਦਾ ਵੀ ਜ਼ਰੂਰਤ ਆ ਹਰ ਜਗ੍ਹਾ ਥੋੜਾ ਕਸਾਈ ਜਾਣਾ ਦਿਮਾਗ ਨੂੰ ਇਹਨਾਂ ਦੀ ਅਲੱਗ ਦੁਨੀਆ ਪਰ ਬਹੁਤ ਜ਼ਿਆਦਾ ਇੱਕ ਹੋਰ ਪੰਗਾ ਜਦ ਬੱਚੇ ਖਾਂਦੇ ਪੀਂਦੇ ਵੀ ਆ ਜਦ ਵੀ ਫੋਨ ਜਿਹੜੇ ਟੂਟੀਆਂ ਕੰਨ ਦੇ ਵਿੱਚ ਉਹ ਕਹਿੰਦੇ ਵੀ ਤੂੰ ਰੋਟੀ ਖਾਣ ਵੇਲੇ ਕੰਨਾਂ 'ਚ ਟੂਟੀਆਂ ਲਾਈਆਂ ਇਹ ਠੀਕ ਨਹੀਂ ਹੈ ਕੰਸੈਂਟਰੇਸ਼ਨ ਹੀ ਤੁਸੀਂ ਕਰਦਾ ਹੁਣ ਇਹਨਾਂ ਕੋਲ ਜਵਾਬ ਸਾਰਾ ਤੁਸੀਂ ਇੱਥੇ ਫੈਮਿਲੀ ਰੂਮ ਦੇ ਵਿੱਚ ਸੋਫਿਆਂ ਤੇ ਬੈਠੇ ਹੋ ਮੂਹਰੇ ਏਟੀਐਨ ਚੱਲ ਰਿਹਾ ਤੇ ਰੋਟੀ ਵਾਲੀਆਂ ਥਾਲੀਆਂ ਤੁਹਾਡੇ ਪੱਟਾਂ ਤੇ ਰੱਖੀਆਂ ਤੇ ਤੁਸੀਂ ਕੀ ਕਰਦੇ ਹੋ ਬਹੁਤ ਅਗਲੀ ਜਿਹੜੀ ਜਿਹੜੀ ਅਗਲੀ ਨਸਲ ਹੈ ਨਾ ਕੰਟਰੋਲ ਹੈ ਪਰ ਮੈਂ ਮੈਂ ਥੋੜਾ ਜਿਹਾ ਮੇਰਾ ਕੰਸਰਨ ਹੈ ਇਹ ਜੇ ਦੇਖੋ ਬੱਚਿਆਂ ਨੂੰ ਦੱਸਿਆ ਜਾਵੇ ਮਾੜਾ ਚੰਗਾ ਅਲੱਗ ਹੈ ਮੇਰਾ ਕੰਸਰਨ ਹੈ ਛੋਟੀ ਉਮਰ ਦੇ ਫੋਨ ਜਿਹੜੇ ਨਾ ਗ੍ਰੇਡ 12 11ਵੀਂ ਤੇ 12ਵੀਂ ਤੋਂ ਥੱਲੇ ਥੋੜੀ ਜਿਹੀ ਮੈਨੂੰ ਮੁਸ਼ਕਲ ਮੈਨਜੀ ਤੌਰ ਤੇ ਲੱਗਦਾ ਬਾਕੀ ਤੁਹਾਡੀਆਂ ਔਰ ਜ਼ਿਆਦਾ ਅਧੀਆਂ-ਅਧੀਆਂ ਰਹੀਆਂ ਆਦੀ ਕਹਿੰਦੇ ਦੇ ਦਿਓ ਆਦੀ ਵਪਾਰਕ ਸੰਦੇਸ਼ ਦੋ ਕਾਲਰ ਅਡਿਕ ਰਹੇ ਨੇ ਜੀ 30-30 ਸੈਕਿੰਡ ਮਿਲਣਗੇ ਗੁਰਿੰਦਰ ਸਿੰਘ ਜੀ ਲਾਈਨ ਨੰਬਰ 2 ਸ੍ਰੀ ਗੁਰਨਾਮ ਸਿੰਘ ਜੀ ਲਾਈਨ ਨੰਬਰ 3 ਹਾਂਜੀ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਰ ਜੀ ਮੇਰੇ ਖਿਆਲ ਨਾਲ ਤੇ ਫੋਨ ਹੋਣਾ ਚਾਹੀਦਾ ਜਰੂਰ ਆ ਪਰ ਬੱਚੇ ਨੂੰ ਜਰੂਰ ਸਮਝਾਓ ਜੇ ਤੁਸੀਂ ਬੱਚੇ ਨਾਲ ਗੱਲਾਂ ਨਹੀਂ ਨਾ ਕਰਦੇ ਤੇ ਅਸੀਂ ਇੱਥੇ ਰੇੜੀ ਰਾਨ ਕੇ ਗੁੱਸਾ ਕੱਢਦੇ ਆ ਵੀ ਨਹੀਂ ਚਾਹੀਦਾ ਮੈਂ ਤੁਹਾਨੂੰ ਛੋਟਾ ਜਿਹਾ ਇੰਸੀਡੈਂਟ ਦੱਸਣ ਲੱਗਾ ਵੀ ਕਿਵੇਂ ਕਿਵੇਂ ਨਹੀਂ ਚਾਹੀਦਾ ਜਰੂਰ ਆ ਕਈ ਸਕੂਲਾਂ 'ਚ ਪਾਬੰਦੀ ਵੀ ਬੱਚੇ ਕਲਾਸ ਦੇ ਵਿੱਚ ਫੋਨ ਨਹੀਂ ਯੂਜ਼ ਕਰ ਸਕਦੇ ਨਹੀਂ ਐਜ ਇਦਾਂ ਵੀ ਨਹੀਂ ਹੋਣਾ ਚਾਹੀਦਾ ਬ੍ਰੇਕ ਟਾਈਮ 'ਚ ਨਹੀਂ ਹੋਣਾ ਚਾਹੀਦਾ ਸਾਡਾ ਬੱਚਾ ਵਾ ਸਕੂਲ ਜਾਣ ਰਿਹਾ ਸਕੂਲ ਗੱਡੀ ਨਿਕਲੀ ਸਾਈਡ ਤੋਂ ਤੇ ਬੱਚੇ ਦੇ ਹਿੱਟ ਕਾ ਕੇ ਮਗਲੇ ਟਾਇਰ 'ਚ ਨਿਕਲ ਗਈ। ਉਹਨ ਸਟਾਪ ਨਹੀਂ ਲਿਆ ਕਿਉਂਕਿ ਉਹਨੂੰ ਪਤਾ ਆ ਵੀ ਉੱਤੇ ਐਕਸ਼ਨ ਉੱਤੇ ਬਹੁਤ ਵੱਡਾ ਆਟਕਦਾ ਤੁਹਾਨੂੰ ਪਤਾ ਹਰ ਇੱਕ ਨੂੰ। ਉਹ ਬੱਚੇ ਨੇ ਫੋਨ ਕੀਤਾ ਕਹਿੰਦਾ ਪਾਪਾ ਮੇਰੇ ਕੋ ਗੱਡੀ ਦਾ ਨੰਬਰ ਨੋਟ ਨਹੀਂ ਹੋਇਆ ਪਰ ਮੇਰੇ ਟਾਇਰ ਵਹਿਗਾ ਹੋ ਗਿਆ ਪਰ ਮੈਂ ਸੇਫ ਆ। ਐਸ ਕੇਜ ਵਾਸਤੇ ਫੋਨ ਜ਼ਰੂਰ ਬੱਚੇ ਕੋ ਚਾਹੀਦਾ ਹਾਂ। ਬਾਕੀ ਕਮਿਊਨੀਕੇਸ਼ਨ ਕਰੋ ਬੱਚੇ ਦੇ ਨਾਲ ਕਿ ਹਾਂ ਵੀ ਆਜ YouTube, Facebook, WhatsApp ਨਹੀਂ ਹੋਣੀ ਚਾਹੀਦੀ। ਪਰ ਆਪ ਤੇ ਮਾਂ ਪਿਓ ਸਾਰਾ ਕੁਝ ਕਰਦੇ ਭਾਜੀ ਤੇ ਫੋਨ ਨਾਲ ਦਿੱਸੋ ਸੋ ਪੈਂਦਾ ਤੁਹਾਡੇ ਕੋ ਕਿਤੇ ਮਿਲਣਾ ਅਗਲੇ ਆਪਾਂ ਉਹਨੇ ਠੀਕ ਹੈ ਜੀ ਗਨਪ ਸਿੰਘ ਜੀ ਗੱਲ ਠੀਕ ਹੈ ਮੈਂ ਵੱਡਿਆਂ ਨੂੰ ਜਦੋਂ ਗੱਡੀ ਚਲਾਉਣ ਜੋਗਿਆ ਫਿਰ ਤਾਂ ਲੈਣਾ ਹੀ ਆਉਦਾ ਇਹ ਸੀ ਅੱਜ ਦਾ ਪ੍ਰੋਗਰਾਮ ਜੀ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਹਿੱਸਾ ਪਾਇਆ ਬਹੁਤ ਇਨਪੁੱਟ ਸੀ ਤੁਹਾਡੀ ਬਟ ਹੈਲਥ ਕੇਅਰ ਦੇ ਸਿਸਟਮ ਤੇ ਰਾਜਨੀਤਿਕ ਪੈਂਤੜੇ ਦੇ ਵਿੱਚੋਂ ਦੂਸਰਾ ਤੇ ਤੀਸਰਾ ਹੈ ਸੈਲ ਫੋਨ ਪਰ ਕੱਲ ਨੂੰ ਬੁੱਧਵਾਰ ਦਾ ਦਿਨ ਕਹਾਣੀ ਦਾ ਦਿਨ ਦੂਰੋ ਜਿਨ੍ਹਾਂ ਨੇ ਮੈਸੇਜ ਕਰਕੇ ਵੀ ਇਸਨੇ ਭੇਜੇ ਬਾਈ ਡਾਂਸ ਸਿੱਧੂ ਜੀ ਧੰਨਵਾਦ ਤੁਹਾਡਾ ਥੈਂਕ ਯੂ ਅਖੀਰ ਚ ਅਮਰਿੰਦਰ ਗਿੱਲ ਰਬ ਰੱਖਾ